ਕੇਆਰਪੀ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਹਰਜੀਤ ਸਿੰਘ ਗਿੱਲ 11:13 ਹੋਏ ਨੇ 12 ਸਤੰਬਰ ਦਾ ਦਿਨ ਹੈ ਵਰਾ 2017 ਦਾ ਥਾਈਪਾ ਦੋ ਨਾਨਕਸ਼ੇ ਸਮਤ 549 ਨਿਗਾ ਹਾਰਦਿਕ ਸਵਾਗਤ ਹੈ ਅੱਜ ਵੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੀਤ ਸੂਲਕ ਦੇ ਮਸਲੇ ਤੇ ਗੱਲਬਾਤ ਕੀਤੀ ਜਾਵੇਗੀ ਪਹਿਲੇ ਹਿੱਸੇ 'ਚ ਖਬਰਾਂ ਦੂਸਰੇ ਹਿੱਸੇ 'ਚ ਅੱਜ ਤੋਂ 21 120 ਬਰੇ ਪਹਿਲਾਂ ਸਾਰਾ ਗੜੀ ਦੀ ਲੜਾਈ ਦੇ ਵਿੱਚ 21 ਸ਼ਹੀਦ ਹੋਏ ਸਿੱਖਾਂ ਦੀ ਅੱਜ ਗੱਲਬਾਤ ਤੁਹਾਨੂੰ ਸੁਣਾਵਾਂਗਾ ਕਿ ਕਿਸ ਤਰ੍ਹਾਂ 10000 ਪਸ਼ਤੂਨ ਤੇ ਅਫਗਾਨੀ ਰਲ ਕੇ ਤੇ 21 ਸਿੱਖ ਜਿਨ੍ਹਾਂ ਦੀ ਜ਼ਿੰਮੇਵਾਰੀ ਇੱਕ ਛੋਟੀ ਜੀ ਪੋਸਟ ਸਾਰਾ ਗੜੀ ਤੇ ਸੀ ਜਿਹੜੀ ਦੋ ਕਿਲਿਆਂ ਦੇ ਸਨੱਚ ਸੀ ਗੁਲਸਤਾਨ ਤੇ ਲੋਕ ਹਾਰਟ ਦੇ ਵਿੱਚ ਫਿਰ ਕਿਵੇਂ ਇਹ ਲੜਾਈ ਲੜੀ ਗਈ ਤੇ ਕਿਸ ਤਰ੍ਹਾਂ ਆਊਡਰ ਆਫ ਮੈਰਿਟ ਜਿਹੜਾ ਅੱਜ ਦੇ ਵਿਕਟੋਰੀਆ ਕ੍ਰਾਸ ਦੇ ਬਰਾਬਰ ਆਇਆ ਮਿਲਿਆ ਤੇ 600 ਵੈਰੀਆਂ ਦੇ ਆਹੂ ਕਿਵੇਂ ਲਾਏ ਉਸ ਛੋਟੀ ਜੀ ਚੌਂਕੀ ਦੇ ਵਿੱਚ ਇਸ ਸ਼ੁਰੂ ਹੋਈਆਂ ਨੇ ਇਸ ਲੋਕਾਂ ਦੇ ਸਲਮੋ ਕੀਤਾ ਜਾਵਗਾ ਕਿਉਂਕਿ ਭੁੱਲ ਗਏ ਅਸੀਂ ਪੰਜਾਂ ਦਸਾਂ ਸਾਲਾਂ ਪਹਿਲਾਂ ਇੱਥੇ ਗੱਲ ਸਾਰਾ ਗੜੀ ਦੀ ਚੱਲਣ ਲੱਗੀ ਕਿਸੇ ਨੂੰ ਯਾਦ ਨਹੀਂ ਸੀ ਅਸੀਂ ਨਾ ਹੀ ਇਹਨਾਂ ਸਿੱਖਾਂ ਨੂੰ ਯਾਦ ਕੀਤਾ ਤੇ ਨਾ ਹੀ ਅੱਗੇ ਤੇ ਪ੍ਰਚਾਰ ਸਕੇ ਹੁਣ ਇਸ ਤੇ YouTube ਫਿਲਮਾਂ ਤੇ ਹੋਰ ਫਿਲਮਾਂ ਬਾਲੀਵੁੱਡ ਦੀਆਂ ਬਣ ਰਹੀਆਂ ਤੇ ਬੈਟਲ ਆਫ ਸਾਰਾ ਗੜੀ ਸਾਰਾ ਗੜੀ ਦੀ ਲੜਾਈ ਤੇ ਅੱਜ 12 ਤੋਂ 1 ਵਜੇ ਤੱਕ ਗੱਲ ਤੇ 1 ਤੋਂ ਤੇ ਹੋਵੇਗੀ 18442471550 ਆਨ-ਏਅਰ ਨੰਬਰ ਹੈ kearperiod.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ ਜਿੱਥੇ ਵੀ ਤੁਸੀਂ ਬੈਠਿਓ ਦੁਨੀਆਂ ਦੇ ਵਿੱਚ ਸੁਣ ਸਕਦੇ ਹੋ ਐਪ ਡਾਊਨਲੋਡ ਤੁਸੀਂ ਕੀਤੀ ਹੈ ਉਸ ਤੇ ਵੀ ਸੁਣਦੇ ਹੋ ਰਹਿ ਜਵੇ ਤਾਂ ਲੋਕ ਸਾਥ ਹੈ ਲੋਕੇ ਐਸ ਐ ਟੀ ਐਚ ਲੋਕ ਸੱਤ ਤੇ ਤੁਸੀਂ ਇਸ ਸੁਣ ਸਕਦੇ ਹੋ ਕੋਸ਼ਿਸ਼ ਕਰਦੇ ਆਂ ਇਹ ਪੋਡਕਾਸਟ ਇੱਕ ਬਣਾਇਆ ਜਾਵੇ ਤੇ ਜਿੱਥੇ ਤੁਸੀਂ ਇਸ ਨੂੰ ਫਿਰ ਹੋਰ ਸੌਖਿਆਂ ਸੁਣ ਲਓ ਡਾਟਾ ਤੁਹਾਡਾ ਘੱਟ ਲੱਗੇ ਪਹਿਲਾਂ ਤਿੰਨਾ ਤੋਂ 1.5 ਘੰਟੇ ਪਵਨਦੀਪ ਜਵੰਦੇ ਨੇ ਕਰ ਦਿੱਤੇ ਨੇ ਤੇ ਹੁਣ ਅਸਲ ਤਾਂ ਇਹ ਰੇਡੀਓ ਜਿਹੜੇ ਨੇ ਇਹ ਸੀਰੀਅਸ ਤੇ ਸਾਰੇ ਜਾਣੇ ਚਾਹੀਦੇ ਨੇ ਹੁਣ ਜਿਹੜਾ ਉਹ ਰੇਡੀਓ ਆ ਉਸ ਤੇ ਨੈਕਸਟ ਫੇਸ ਤੇ ਇਹ ਪ੍ਰੋਗਰਾਮ ਸਾਰੇ ਉੱਥੇ ਚੱਲਣੇ ਚਾਹੀਦੇ ਨੇ ਮਿੱਥੇ ਵੀ ਦੁਨੀਆ ਚ ਤੁਰੇ ਫਿਰਦੇ ਹੋ ਤੁਸੀਂ ਸੈਟਲਾਈਟ ਰਾਹੀਂ ਸੁਣ ਸਕੋਂ ਉਸ ਨੂੰ ਟਿਊਨਿੰਗ ਕਰਕੇ ਸਵਾਦ ਬਹੁਤ ਆਉਂਦਾ ਉਸ ਦਾ ਗੱਡੀ 'ਚ ਹੋਮ ਹੋ ਜਾਂ ਬਾਹਰ ਹੋਮ ਕਿਤੇ ਵੇਖਦੇ ਆ ਉਹ ਵੀ ਛੇਤੀ ਹੀ ਜੋ ਵੱਡੇ ਵੱਡੇ ਰੇਡੀਓ ਸਭ ਉਸ ਨੇ ਲੋਕਲ ਜਿਹੜੇ ਰੇਡੀਓ ਨੇ ਜਿਹੜੇ ਹੁਣ ਨੈਕਸਟ ਫੇਸ ਤੇ ਜਾਣ ਉੱਥੇ ਪਹੁੰਚਣਗੇ ਤੇ ਹੁਣ ਹਾਲ ਦੀ ਘੜੀ YouTube ਤੇ ਏ lok sat eh nimidawala ji da number 6044406462 hai harjit singh gill da facebook da page te account jithe tusi mashwre kal deon dhanwad hai tohada samay kad ke tusi likhde ho naal email harjit.g@krpradio.com host harjit gill twitter te tusi naal naal chal sakte ho ਜਿੱਥੇ ਹਾਂ ਗਲਤ ਉੱਥੇ ਅੱਖ ਨੀਵੀਂ ਰਹਿ ਜਿੱਥੇ ਸੱਚੇ ਉੱਥੇ ਤਾਂ ਚਿਟਾਨਾ ਨਾਲ ਖਹਿ ਜਿੱਥੇ ਹਾਂ ਗਲਤ ਉੱਥੇ ਅੱਖ ਨੀਵੀਂ ਰਹੇ ਜਿੱਥੇ ਸੱਚੇ ਉੱਥੇ ਤਾਂ ਚਿਟਾਨਾ ਨਾਲ ਖਹਿ ਜੇ ਲੈ ਲਿਆ ਸਟੈਂਡ ਪੂਰਾ ਖੜ ਦੇ ਨਾ ਇਹ ਦਿਲ ਚ ਸਵਾਲ ਰੱਖਿਆ ਸੋਚ ਉੱਚੀ ਹੈ ਪਹਾੜਾਂ ਵਰਗੀ ਮਨ ਨੀਵਾ ਜਿਉ ਪਤਾਲ ਰੱਖਿਆ ਸਦਾ ਵੈਰੀ ਦਾ ਵੀ ਭਲਾ ਏ ਕਰਦੇ ਸੋਨਾ ਤੀਰਾ ਮੂਹਰੇ ਲਾਸੀ ਜੰਗ ਲੜਦੇ ਕਿ ਨਾ ਇਹ ਪਾਣੀ ਵਾਲੀ ਗਗਰ ਸੀ ਚੱਕ ਲਈ ਜਦ ਜ਼ਖਮੀ ਦਾ ਹਾਲ ਤੱਕਿਆ ਸੱਚ ਸੋਚ ਉੱਚੀ ਹੈ ਪਹਾੜਾਂ ਵਰਗੀ ਮਨ ਨੀਵਾ ਜਿਉ ਪਤਾਲ ਰੱਖਿਆ ਪੈਸਾ ਹੱਥਾਂ ਦੀ ਇਹ ਮੈਲ ਨਾਹੀ ਲਾਲਚ ਚਾਏ ਕਰ ਫੂਕ ਕੇ ਤਮਾਸ਼ਾ ਦੇਖ ਯਾਰ ਹੀ ਕਮਾਏ ਮਨ ਰਹੇ ਭਾਣੇ ਵਿੱਚ ਕਦੇ ਬੋਤ ਨਾ ਭੁਲਾਏ ਕਿ ਹਸਤੀ ਤੂਫਾਨ ਦੀ ਜੋ ਜਗ੍ਹਾ ਤੋਂ ਹਲਾਏ ਵੈਰੀ ਕਰੇ ਬਜ਼ਾ ਜਦੋਂ ਕਿਸੇ ਗੱਲ ਤੇ ਤਏ ਉੱਥੇ ਮੁੱਛ ਦਾ ਸਵਾਲ ਰੱਖਿਆ ਸੋਚ ਉੱਚੀ ਹੈ ਪਹਾੜਾਂ ਵਰਗੀ ਮਨਨੀਵਾ ਜੋ ਪਤਾਲ ਰੱਖਿਆ ਲੈ ਬਾਣ ਵਾਲੇ ਮੰਜੇ ਤੇ ਖੁਆਬ ਨਹੀਂ ਉਹ ਭੁੱਲੇ ਭਾਵੇਂ ਰਹਿੰਦੇ ਪਰਦੇਸ ਪਰ ਪੰਜਾਬ ਭੁੱਲੇ ਅਰਦਾਸ ਕੱਖ ਓੱਖੇ ਦਾ ਰਬਈ ਕਰੇ ਅਰਦਾਸ ਕੱਖ ਉੱਗੇ ਦਾ ਉੱਗੇ ਨਾ ਕੋਈ ਚੁੱਲੇ ਅੱਲੇ ਵੜੇ ਨੇ ਜ਼ਖਮੀ ਖੂਨੀ ਦਾਗ ਨਹੀਂ ਉਹ ਤੁੱਲੇ ਕੋਈ ਬੱਚਿਆਂ ਦਾ ਮੌਤ ਖਿੱਚ ਲੈ ਗਈ ਭਾਵੇਂ ਬੰਨ ਪਾਵੇ ਨਾਲ ਕਾਲ ਰੱਖਿਆ ਸੋਚ ਉੱਚੀ ਹੈ ਪਹਾੜਾਂ ਵਰਗੀ ਮਨ ਨੀਵਾ ਜਿਉ ਪਤਾਲ ਰੱਖਿਆ ਮਨ ਨੀਵਾ ਜਿਉ ਪਤਾਲ ਰੱਖਿਆ ਰਵੀ ਗਰੇਵਾਲ ਆਲਮਗੀਰ ਹੂੰ 11:21 ਹੋਏ ਆ ਜੀ ਸਾਰਾ ਘੜੀ ਦੀ ਲੜਾਈ ਦੇ ਉਹਨਾਂ ਸਮੂਹ ਸ਼ਹੀਦਾਂ ਦਾ ਅੱਜ ਦਿਨ ਹੈ 12 ਸਤੰਬਰ 1897 ਨੂੰ ਇਹ ਲੜਾਈ ਲੜੀ ਗਈ 36 ਸਿੱਖ ਦੇ ਇਹਨਾਂ 21 ਸੂਰਵੀਰ ਯੋਧਿਆਂ ਨੇ ਇਹ ਲੜਾਈ ਲੜੀ ਇਹ ਦਾਸ ਇਸ ਦੀਆਂ ਗੱਲਾਂ ਸੁਣ ਕੇ ਵਿਕੈਸਰ ਆਪਣੇ ਕਰਨਲ ਨੂੰ ਸੁਨੇਹਾ ਭੇਜਦਾ ਸਰਦ ਗੁਰਮਖ ਸਿੰਘ ਹਿਲੀਓਗ੍ਰਾਫੀ ਦੇ ਨਾਲ ਉਹ ਕਹਿੰਦਾ ਵੀ ਇੰਨਾ ਛੇਤੀ ਤਾਂ ਪਹੁੰਚ ਨਹੀਂ ਹੋਣਾ ਤਿੰਨ ਜਦ ਹੱਲੇ ਪਸ਼ਤੂਨਾਂ ਨੇ ਮਾਰੇ ਤੇ ਉਹਨਾਂ ਨੂੰ ਪਛਾਰ ਤਾਂ ਧੂਏ ਦੀ ਆੜ ਦੇ ਵਿੱਚ ਕੰਧ ਭੰਨ ਕੇ ਅੰਦਰ ਆਵੜੇ ਫਿਰ ਸਿੱਧਿਆਂ ਹੱਥੋਂ ਹੱਥ ਜਿਹੜੀ ਲੜਾਈ ਹੋਈ ਉਹ ਚ 600 ਦੇ ਕਰੀਬ ਲਾਸ਼ਾਂ ਦੁਸ਼ਮਣ ਦੀਆਂ ਪਈਆਂ ਸੀ ਜਦ ਆ ਕੇ ਕਰਨਲ ਨੇ ਵੇਖਿਆ ਤੇ 21 ਉਹਦੇ ਰੈਜiment ਦੇ ਸ਼ਹੀਦ ਪੈਸਾ ਇਸ ਬੈਟਲ ਆਫ ਸਾਰਾ ਗੜੀ ਸਾਰਾ ਗੜੀ ਦੀ ਲੜਾਈ ਦੀਆਂ ਗੱਲਾਂ ਜਿਹੜੀਆਂ ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਮੀਡੀਏ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਚ ਕੁਝ ਨਹੀਂ ਮਿਲਦਾ ਪਰ 10 ਸਾਲ 12 ਸਾਲ 15 ਸਾਲ ਪਹਿਲਾਂ ਰਾਦਰ 15 ਕੀ 10 ਸਾਲ ਪਹਿਲਾਂ ਸਾਰਾ ਗੜੀ ਦਾ ਕੋਈ ਨਾਉ ਨਹੀਂ ਸੀ ਜਾਣਦਾ ਕੁਸ਼ਕ ਬਹਾਦਰ ਸੂਰਬੀਰ ਜਿਹੜੇ ਲੜਕੇ ਆਏ ਨੇ ਉਹਨਾਂ ਰੈਜੀਮੈਂਟਾਂ ਚ ਉਹਨਾਂ ਨੂੰ ਪਤਾ ਯਾਦ ਕਰਦੇ ਹੋਣਗੇ ਪਰ ਆਮ ਲੋਕਾਈ ਨੂੰ ਸਾਰਾ ਗੜੀ ਕੀ ਹੈ ਇਸ ਦਾ ਪਤਾ ਨਹੀਂ ਸੀ। ਉਹਨਾਂ ਯੋਧਿਆਂ ਦੀ ਤਾਸ ਜਿਹੜੀ ਅੱਜ ਪੈਣੀ ਹੈ ਜਿਹਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਅਥਣ ਦੇ 4-5 ਵਜੇ ਤੱਕ ਹਵਾਲਦਾਰ ਇਸ਼ਤ ਸਿੰਘ ਦੀ ਕਮਾਨ ਥੱਲੇ ਹੀ ਯੋਧੇ ਲੜੇ ਬਹੁਤ ਵੱਡੀ ਗੱਲ ਹੈ ਕਿ 10000 ਬੰਦਾ ਤੇ 21 ਪਹਿਲੀ ਵਾਰ ਥੋੜਾ ਹੋਇਆ ਸਾਹਿਬ ਨੇ ਜੀਨੇ ਕੌਮ ਬਣਾਈ ਉਹ ਤਾਂ 10-10 ਲੱਖ ਦੇ ਘੇਰੇ ਚਮਕੌਰ ਪਏ ਨੇ ਉਹਨੇ ਕਿਤੇ ਪ੍ਰਵਾਹ ਮੰਗੀ ਬਣੀ ਬੜਾਈ ਮਿਲਟਰੀ ਦੇਸ਼ ਦੀ 100 ਬੰਦਿਆਂ ਤੇ ਚੜ ਕੇ ਆ ਗਈ 84 ਕਿਤੇ ਉਹਨਾਂ ਨੇ ਲਤ ਲਾਈ ਹੈ ਟੈਂਕ ਤੰਕ ਦਾਰ ਦਾੜ ਕਰਦੇ ਭੱਜੇ ਆਉਂਦੇ ਸੀ ਛਾਤੀਆਂ ਨਾਲ ਬੰਦ ਕੇ ਸੂਰਵੀਰ ਯੋਧੇ ਟੈਂਕਾਂ ਦੇ ਥੱਲੇ ਵੜ ਗਏ ਪਰ ਮੁੱਲ ਨਹੀਂ ਪਾਇਆ ਕਿਸੇ ਨੇ ਦੁੱਖ ਆ ਅੱਜ ਆਪ ਯਾਦ ਕਰੋ ਵਪਾਰਕ ਸੰਦੇਸ਼ 11 ਵਜੇ ਕੇ 27 ਮਿੰਟ ਹੋਇਆ ਜੀ ਲੋਕ ਸੱਤ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਦੇ ਲੋਕ ਜਿਹੜੇ ਛੋਟੀਆਂ-ਛੋਟੀਆਂ ਆਈਲੈਂਡਸ ਜਿਹੜੀਆਂ ਸੇਂਟ ਮਾਰਟਨ ਸੇਂਟ ਮਾਰਟਿਨ ਵੀ ਉਹਨੂੰ ਕਹਿੰਦੇ ਆ ਇੱਕ ਆਈਲੈਂਡ ਆ ਜਿਹੜੀ ਦੋ ਹਿੱਸਿਆਂ 'ਚ ਵੰਡੀ ਹੋਈ ਐ ਇੱਕ ਬੰਨੇ ਡੱਚ ਨੇ ਇੱਕ ਬੰਨੇ ਫ੍ਰੈਂਚ ਨੇ ਉਸ ਦੇਸ਼ ਦੇ ਵਿੱਚ ਤੇ ਹੋਰ ਛੋਟੀਆਂ ਆਈਲੈਂਡ ਦੇ ਵਿੱਚ ਜਿੱਥੇ ਕੈਨੇਡੀਅਨ ਲੋਕ 8 ਹਜਾਰ ਦੇ ਕਰੀਬ ਵਸੇ ਹੋਏ ਨੇ ਕੋਈ ਪੜਨ ਗਿਆ ਹੋਇਆ ਉਹਨਾਂ ਦਾ ਕਿਊਬਾ ਚ ਬੈਠਿਆਂ ਦਾ ਕੋਈ ਵਾਲੀ ਵਾਰਸ ਨਹੀਂ ਸਰਕਾਰ ਜਿਹੜੀ ਸੇਂਟ ਜੋਨਸ ਦੇ ਵਿੱਚ ਰਿਟਰੀਟ ਕਰ ਰਹੀ ਹੈ ਟਰੂਡੋ ਤੇ ਸੈਲਫੀਆਂ ਇਹ ਗੱਲਾਂ ਚੱਲ ਰਹੀਆਂ ਅਗਲੇ ਹਾਊਸ ਦੇ ਵਿੱਚ ਕਿਵੇਂ ਲੜਨਾ ਕਿਹੜੀਆਂ-ਕਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਬੈਠ ਕੇ ਆਪਣੇ ਆਪ ਨੂੰ ਘੜਦੀਆਂ ਕਿ ਹੁਣ ਦੁਸ਼ਮਣ ਨੇ اپੋਜੀਸ਼ਨ ਨੇ ਸੌਰੀ ਕੀ ਕਹਿਣਾ ਤੇ ਅਸੀਂ ਕੀ ਕਹਿਣਾ ਪਰ ਕੈਨੇਡੀਅਨ ਦੀ ਕੋਈ ਬਾਤ ਨਹੀਂ ਪੁੱਛ ਰਿਆ ਇਸ ਦੀ ਗੱਲ ਬਹੁਤ ਜ਼ਿਆਦਾ ਚੱਲ ਰਹੀ ਕਿਊਬਾ ਦੇ ਵਿੱਚੋਂ 90 ਮੀਲ 100 ਮੀਲ ਦੂਰ ਫਲੋਰੀਡਾ ਲੋਕ ਅਮਰੀਕਨ ਲੋਕ ਨੇ ਜਿਹੜੇ ਹੈਲੀਕਾਪਟਰਾਂ ਦੇ ਰਾਹੀਂ ਆਪਣੇ ਬੰਦੇ ਲੈ ਕੇ ਚੱਕ ਕੇ ਅੰਬੈਸੀਆਂ ਬੰਦ ਪਈਆਂ ਨਾ ਬਿਜਲੀ ਨਾ ਉੱਥੇ ਟੈਲੀਫੋਨ ਨਾ ਕੁਝ ਹੋਰ ਕੋਈ ਸਹੂਲਤ ਨੀ ਮਿਲ ਰਹੀ ਇਸ ਤਰ੍ਹਾਂ ਹੀ ਦੇ ਵਿੱਚ ਜਿਹੜਾ ਛੋਟੀਆਂ-ਛੋਟੀਆਂ ਆਈਲੈਂਡਸ ਨੇ ਇਹ ਵਰਜਨ ਤੇ ਉਸ ਤੋਂ ਬਾਅਦ ਡੋਮਿਨਿਕਨ ਰਿਪਬਲਿਕ ਦੇ ਵਿੱਚ ਹੈਤੀ ਦੇ ਵਿੱਚ ਨਾਲ ਹੋਏ ਬਰਬਾਦੀ ਕਰਕੇ ਹਲੇ ਬਹੁਤ ਚੈਰਿਟੀਜ਼ ਨੇ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਹੈ ਤੇ ਬਹੁਤ ਗੁੱਸੇ ਦੇ ਵਿੱਚ ਕੈਨੇਡੀਅਨ ਲੋਕ ਇੰਟਰਵਿਊਆ 에ਰਪੋਰਟ ਤੇ ਉਤਰ ਕੇ ਕੱਲ ਕੁਝ ਉਤਰੇ ਟਵਾਂਟੋ ਉਹਨਾਂ ਜੇ ਦੱਸਿਆ ਕਿ ਆ ਹਾਲਤ ਨੇ ਉੱਥੇ ਕੋਈ ਨੀ ਪੁੱਛ ਰਿਆ ਉੱਥੇ ਤੇ ਦੂਜੇ ਦੇਸ਼ ਫਰਾਂਸ ਤੇ ਨਦਰਲੈਂਡਸ ਆਪਣੇ ਬੰਦਿਆਂ ਨੂੰ ਕੱਢ ਰਹੇ ਨੇ ਉੱਥੋਂ ਜਿੰਨੇ ਜਿੰਨੀਆਂ ਉੱਥੇ ਜਿੰਨਾਂ ਜਿੰਨੀਆਂ ਦੀ ਹਕੂਮਤ ਹੈ ਪਰ ਕੈਨੇਡੀਅਨ ਮਨਿਸਟਰ ਨੇ ਜਿਹੜੇ ਕੈਨੇਡੀਅਨ ਸਰਕਾਰ ਇਸ ਗੱਲ ਨੂੰ ਨਹੀਂ ਮੰਨ ਰਹੀ ਉਹ ਕਹਿ ਜਿਹੜੇ ਸਾਨੂੰ ਜਿਨ੍ਹਾਂ ਨੇ ਕੰਟੈਕਟ ਕੀਤਾ ਉਹਨਾਂ ਦੀ ਲੈ ਰਹੇ ਹਾਂ ਸਾਰ ਕੀ ਲੈ ਰਹੇ ਨੂੰ ਤੋਂ ਕੱਢਿਆ ਗਿਆ ਨਹੀਂ ਕਿਊਬਾ ਦੇ ਵਿੱਚੋਂ ਫੋਨ ਆ ਰਹੇ ਹਨ ਛੁੱਟੀਆਂ ਕੱਟਣ ਗਏ ਬੰਦੇ ਫਸ ਗਏ ਉੱਥੇ ਕੋਈ ਬਾਲੀਵਾਰਸ ਨਹੀਂ ਕਿਤੇ ਅੰਬੈਸੀ ਬੰਦ ਪਈ ਹੈ ਫਿਰ ਇਹ ਤਾਂ ਗੱਲਾਂ ਹੀ ਰਹਿ ਗਈਆਂ ਨਾ ਫਿਰ ਇਹ ਸਹੂਲਤਾਂ ਮਿਲਣਗੀਆਂ ਆ ਮਿਲੇਗੀ ਉਹ ਮਿਲੇਗੀ ਇਹ ਤਾਂ ਦੇਸ਼ ਨੇੜੇ ਨੇ ਦੋ ਦੋ ਤਿੰਨ ਤਿੰਨ ਘੰਟੇ ਦੀ ਫਲਾਈਟ ਹੈ ਕੱਲ ਮੈਂ ਜੇ ਆਪਾਂ ਗੱਲ ਕਰਦੇ ਜੇ ਦੂਰ ਕੋਈ ਦੇਸ਼ ਹੈ ਆਪਣੇ ਅਰਗੇ ਪੰਜਾਬ ਗਏ ਨੇ ਉੱਥੇ ਕੋਈ ਹਲਝਲ ਹੋਰ ਜੂਵੇ ਬਸ ਚੱਕਲੋ ਚੱਕਲੋ ਇਹ ਕਿਹਨੂੰ ਪੁੱਛਣਾ ਉੱਥੇ ਤਾਂ ਇਹ ਇਹ ਜਿਹੜੀਆਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਤਾਂ ਹੀ ਸਰਦਾਰੀਆਂ ਦੁਨੀਆ ਤੇ ਹੁੰਦੀਆਂ ਅਮਰੀਕਨ ਲੋਕ ਐਵੇਂ ਨਹੀਂ ਹੈ ਗੱਲਾਂ ਐਵੇਂ ਨਹੀਂ ਕੋਈ ਮੰਨਦਾ ਉਹ ਮਨਾਉਂਦੇ ਆ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਬੰਦੇ ਸਾਡੇ ਕਿੱਥੇ ਆ ਦੀ ਹਿਫਾਜ਼ਤ ਕਿਵੇਂ ਕਰਨੀ ਅਰਬਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਸਾਰਾ ਫਲੋਰੀਡਾ ਡੁੱਬਿਆ ਪਾ ਫਲੋਰੀਡਾ ਕੀ ਜਿਹੜੀ ਥੱਲੇ ਨੂੰ ਛੋਟੀ ਜੀ ਕਾਥਰ ਜੀ ਆਉਂਦੀ ਹੈ ਉੱਥੇ ਬਹੁਤ ਬੰਦਾ ਹਾਲ ਮਿਆਮੀ ਸਾਰੀ ਫੋਰਟ ਲਾਫਰ ਡੇਲ ਤੇ ਜੈਕਸਨ ਹਾਈਟਸ ਦਿ ਨੇਪਲਸ ਸਭ ਤੋਂ ਖੂਬਸੂਰਤ ਜਿਹੜਾ ਸੂਬਾ ਉਹ ਲੋਕ ਬਿਜਲੀ ਤੋਂ ਸੌਰੀ ਹਾਂ ਬਿਜਲੀ ਤੋਂ ਬਿਨਾਂ ਪਾਣੀ ਕਰ ਰਹੇ ਨੇ ਪਾਣੀ ਚੱਲ ਰਹੇ ਨੇ ਅੱਧਿਆਂ ਦੇ ਪਾਣੀ ਸੋਧ ਸੋਧ ਕੇ ਪੀ ਰਹੇ ਨੇ ਲੱਖ ਲੱਖ ਪਾਣੀ ਤੁਰਿਆ ਫਿਰਦਾ ਚਾਰੇ ਪਾਸੇ 25% ਦੇ ਕਰੀਬ ਘਰਾਂ ਦਾ ਸਤਿਆਨਾਜ਼ਾ ਜਿਹੜੀਆਂ ਆ ਆਇਲੈਂਡਜ਼ ਛੋਟੀਆਂ ਸੀ ਡੋਮਿਨਿਕਨ ਤੇ ਇਹ تھی ਤਸੱਲੇ ਉਹਨਾਂ ਤਰ੍ਹਾਂ ਹੀ ਕੱਖ ਸੈਂਟ ਮਾਰਟਿਨ ਤੇ ਮਾਰਟਿਨ ਇਹਨਾਂ ਦਾ ਬਹੁਤ ਮੰਦਾ ਹਾਲ ਘਰਾਂ ਦੀਆਂ ਛੱਤਾਂ ਕਿਸੇ ਵੀ ਘਰ ਤੇ ਲੋਕ 에ਅਰਪੋਰਟ ਤੇ ਉੱਤਰ ਕੇ ਤਾਂ ਰੋਂਦੇ ਨਾਲ ਦੇ ਨੂੰ ਗਲਵਕੜੀਆਂ ਪਾ ਕੇ ਲੇਰਾ ਮਾਰਦੇ ਵਿਖੇ ਗਏ ਸਾਨੂੰ ਪੁੱਛਿਆ ਹੀ ਨਹੀਂ ਕਹਿੰਦੇ ਕਿਸੇ ਨੇ ਕਿ ਅੱਜ ਮੰਗਲਵਾਰ ਹੋ ਗਿਆ ਇਸ ਬਾਅਰ ਨੂੰ ਫਲੋਰੀਡਾ ਚ ਆਇਆ ਬਾਅਰ ਐਤਵਾਂ ਸੋਮਾ ਚਾਰ ਦਿਨ ਤੇ ਬੁੱਧਵਾਰ ਵੀਰਵਾਰ ਨੂੰ ਇਹਨੇ ਉਹਨਾਂ ਆਈਲੈਂਡਸ ਦੇ ਵਿੱਚ ਇਹ ਤੂਫਾਨ ਨੇ ਜਿਹੜਾ ਕੱਢਿਆ ਸੋ ਆਲਮੋਸਟ ਵੀਕ ਹੋ ਗਿਆ। ਇਹ ਰਿਟਰੀਟ ਤਾਂ ਹੁੰਦੀ ਜਹਾਜ਼ ਸਾਡੇ ਕੋਲ ਨੇ ਪਰ ਉੱਤਾਂ ਸਰਕਾਰ ਫੇਲ ਹੋਈ ਹੈ ਔਰ ਇਸ ਦੀ ਵੱਡੀ ਗੱਲ ਹੋਏਗੀ। ਜਿਹੜੇ ਵਿਰੋਧੀ ਨੇ ਉਹ ਇਸ ਬਾਰੇ ਬਹੁਤ ਜ਼ਿਆਦਾ ਰੌਲਾ ਪਾ ਰਿਹਾ ਤੇ ਨਾਲ ਦੂਸਰੀ ਜਿਹੜੀ ਖਬਰ ਹੈ ਹੋਇਆ ਕਿ ਸੁੱਖਾ ਜਿਹੜਾ ਲੀਗਲ ਕਰਨਾ ਹੈ ਅਗਲੇ ਸਾਲ ਪੱਪਾਂ ਪਾਰ ਹੋਏ ਪੈਨੇ ਰਾਜਨੀਤਿਕ ਤੇ ਉਹਨਾਂ ਦੇ ਗਾਂ ਜਿਹੜੇ ਕਰਿੰਦੇ ਰੱਖੇ ਹੋਇਆ ਤੇ ਇਹਦੇ ਚ ਜੀ ਇਹ ਲੈ ਲਓ ਜੀ ਖਰੀਦ ਲਓ ਜੀ ਇਹਦੇ ਸ਼ੇਅਰ ਖਰੀਦ ਲਓ ਜੀ ਸਰੀ ਦੇ ਵਿੱਚ ਵੀ ਰਾਜਨੀਤਿਕ ਬੰਦਿਆਂ ਨੇ بڑے ਪੈਂਤੜੇ ਫਿਟ ਕੀਤੇ ਹੋਨੇ ਮੂਰੇ ਬੰਦੇ ਲਾ ਕੇ ਇਨਵੈਸਟਮੈਂਟ ਕਹਿੰਦੇ ਕਰ ਲੋ ਕਾਦੇ ਚ ਕਰਨੀਆਂ ਸੁੱਖਾ ਗਾਉਣ ਚ ਮੈਂ ਕਿਹਾ ਹੋਰ ਤਾਂ ਨਹੀਂ ਬਚਿਆ ਕੁਛ ਆ ਕੰਮ ਕਰੋ ਪਹਿਲਾਂ ਅਗਲੇ ਸਾਲ ਇਸ ਨੂੰ ਲੀਗਲ ਕਰਨ ਦਾ ਬਿੱਲ ਜਿਹੜਾ ਉਹ ਪੇਸ਼ ਕਰਨ ਦੀ ਗੱਲ ਹੈ ਤੇ 18 ਦੇ ਵਿੱਚ ਜੁਲਾਈ ਦੇ ਵਿੱਚ ਤੇ ਪੁਲਿਸ ਚੀਫ ਨੇ ਜਿੰਨੇ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਵਿੱਚ ਰੈਡੀ ਨਹੀਂ ਹੀਰਿੰਗ ਜਿਹੜੀ ਇਹਦੀ ਚੱਲ ਰਹੀ ਹੈ BC 45 ਦੀ ਤੇ ਲੀਗਲਾਈਜ਼ ਇਸ ਨੂੰ ਕਰਨ ਦੀ ਜਿਹੜਾ ਬਿਲ ਪੇਸ਼ ਹੈ ਲੀਗਲ ਇਸ ਨੂੰ ਕਰਨ ਦੀ ਗੱਲ 1 ਜੁਲਾਈ 2018 ਪਰ ਪੁਲਿਸ ਦੀ ਜਿਹੜੀ ਕਮੇਟੀ ਆ ਉਹ ਕਹਿੰਦੇ ਅਸੀਂ ਇਸ ਲਈ ਰੈਡੀ ਨਹੀਂ ਸਾਨੂੰ ਹੋਰ ਸਮਾਂ ਚਾਹੀਦਾ ਬਾਕੀ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਸੜਕਾਂ ਦੇ ਉੱਪਰ ਡਰਾਈਵਰਾਂ ਨੂੰ ਸੁੱਖਾ ਪੀ ਕੇ ਉਹ ਗੱਡੀਆਂ ਚਲਾਉਂਦੇ ਫਿਰਨ ਉਸ ਨੂੰ ਕੰਟਰੋਲ ਕਰਨ ਦੇ ਲਈ ਹੁਣ ਪੁਲਿਸ ਚੀਫ ਜਿਹੜੇ ਨੇ ਉਹਨਾਂ ਨਾਲ ਗੱਲਾਂ ਚੱਲ ਰਹੀਆਂ ਉਹਨਾਂ ਨੇ ਜਵਾਬ ਦਿੱਤਾ ਵੀ ਸਾਨੂੰ ਹੋਰ ਸਮਾਂ ਚਾਹੀਦਾ ਲੀਗਲਾਈਜ਼ ਜਿਹੜਾ ਇਸ ਕਰਨਾ ਮੇਰਾ ਵੋਨਨ ਨੂੰ ਉਸ ਦੀ ਜਿਹੜੀ ਡੇਟ ਅਗਲੇ ਸਾਲ 1 ਜੁਲਾਈ ਹੈ ਉਦੋਂ ਪਹਿਲਾਂ ਹੁਣ ਹੋਰ ਕਮੇਟੀਆਂ ਨਾਲ ਗੱਲ ਇਸ ਤੇ ਪੈਸੇ ਸਰਕਾਰ ਮਾਲੋ ਮਾਲ ਹੋ ਸੈਂਟਰ ਦੀ ਸਰਕਾਰ ਤੇ ਉੰਨੀ ਆਲੀਆਂ ਇਲੈਕਸ਼ਨਾਂ ਨੂੰ ਜਿੰਤਨੀ ਸੌਖੀਆਂ ਹੋ ਜਾਣਗੀਆਂ ਜਨਰੇਟ ਹੋਏਗਾ ਬਲੈਕ ਮਾਰਕੀਟ ਬੰਦ ਹੋ ਜਾਏਗੀ ਸੁੱਖਾ ਆਵੇਗਾ ਨਹੀਂ ਤੇ ਨਾਸ ਸਟਰੀਟਾਂ ਤੇ ਵਿਕੂਗਾ ਜਿੱਥੋਂ ਵਿਕੂਗਾ ਰੀਅਲ ਡਿਸਪੈਂਸਰੀਆਂ ਹੋਣਗੀਆਂ ਤੇ ਉਹ ਟੈਕਸ ਦੇਣਗੇ ਟੈਕਸ ਸਰਕਾਰ ਨੂੰ ਜਾਓ ਇਹ ਕਰਦਾ ਹੈ ਹੁਣ ਵੀ ਚੀਜ਼ ਵੇਚ ਕੇ ਤੁਸੀਂ ਤੇ ਅੜੇ ਬੈਠਿਆ ਅਦੇਸ ਤੇ ਹੱਕ ਚ ਨੇ ਅਦੇਸ ਤੇ ਅਗੇਂਸਟ ਨੇ ਨੈਕਸਟ ਕੀ ਹੋਏਗਾ ਇਸ ਤੋਂ ਸੁੱਖੇ ਤੋਂ ਅੱਗੇ ਕੀ ਲੀਗਲ ਹੋਏਗਾ ਕਦੇ ਸੋਚਿਆ ਸੀ ਕਿਸੇ ਦਿਮਾਗ ਦੇ ਕਿਸੇ ਕਿਨਾਰੇ ਦੇ ਵਿੱਚ ਉਹਨਾਂ ਦੇ ਵਿੱਚ ਕਦੇ ਸੋਚਿਆ ਸੀ ਜਿਹੜੇ ਦੇਸ਼ ਦੇ ਵਿੱਚ ਇਸ ਚੀਜ਼ ਤੇ ਪੰਦੀ ਸੀ ਉਹ ਲੀਗਲ ਹੋ ਗਈ ਉਹਨਾਂ ਦੇਸ਼ਾਂ 'ਚ ਵੀ ਹੈ ਇਸ ਦੀਆਂ ਓਪਨ ਇਸ ਆ ਨਦਰਲੈਂਡਸ ਦੇ ਵਿੱਚ ਐਮਸਟਰਡਮ ਐਮਸਟਰਡਮ ਦੇ ਵਿੱਚ ਜਿੱਥੇ ਉਹਨਾਂ ਦਾ ਮੇਨ ਰਹਿਣ ਲਈ ਤੇ ਜਿੱਥੇ ਰੈੱਡ ਏਰੀਆ ਜਿਹੜਾ ਰੈੱਡ ਡਿਸਟ੍ਰਿਕਟ ਨੇ ਜਿਹੜੇ ਉੱਥੇ ਸ਼ਰਿਆਮ ਇਹਨਾਂ ਦੀਆਂ 12 ਨੇ ਲੋਕ ਸੁਖੇ ਪੀਂਦੇ ਨੇ ਅਸ਼ੀਸ਼ ਪੀਂਦੇ ਨੇ ਤੇ ਦੁਨੀਆ ਉੱਧਰ ਨੂੰ ਜਾ ਰਹੀ ਪਰ ਇਸਤੇ ਅਲੱਗ-ਅਲੱਗ ਵਿਚਾਰ ਨੇ ਲੋਕਾਂ ਦੇ ਕਿ ਇਹ ਸਟੈਪ ਗਲਤ ਹੋਏਗਾ ਅੰਡਰੇਜ ਬੱਚੇ ਇਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਤੇ ਖਰਾਬ ਹੋਊਗਾ ਲੀਗਲ ਲਿਆ ਕੇ ਬੰਦਾ ਕਿਹਨੂੰ ਪੁਲਾਈ ਜਾਂਦਾ ਹੁਣ ਘਰੇ ਸ਼ਰਾਬ ਲਿਆ ਕੇ ਬੰਦਾ ਅੰਦਰ ਬਾੜ ਕੇ ਕਿਹਨੂੰ ਪੁਲਾਈ ਜਾਂਦਾ ਕੌਣ ਕੌਣ ਪੁੱਛੂਗਾ ਕੌਣ ਚੈੱਕ ਕਰੂਗਾ ਜਦ ਤੱਕ ਛੋਟੀ ਉਮਰ ਦਾ ਕੋਈ ਡਿਗਦਾ ਨਹੀਂ ਪੁਲਿਸ ਤੇ ਹਰਕਤ ਚ ਨਹੀਂ ਹੁੰਦੀ ਜਦ ਤੱਕ ਤਾਂ ਪਤਾ ਹੀ ਨਹੀਂ ਲੱਗਣਾ ਕੁਕੀਜ਼ ਤੇਲ ਤਾਲੂ ਵਿੱਚ ਕਹਿੰਦੇ ਚੱਸ ਲੋ ਇਹਦਾ ਕੱਢ ਕੇ ਉਹ ਇਹ ਬਹੁਤ ਵਿਕ ਰਹੀਆਂ ਨੇ ਲੀਗਲ ਤਾਂ ਚੱਲ ਅਗਲੇ ਸਾਲ ਹੋਣਾ ਹੁਣ ਧੜਾ ਧੜ ਪਿਛਲੇ 2 ਸਾਲਾਂ ਤੋਂ ਵਿਕੇ ਰਿਹਾ ਯੂਵੀਸੀ ਤੋਂ ਸ਼ੁਰੂ ਹੋ ਜੋ ਬ੍ਰਾਡਵੇ ਤੇ ਤੇ 4th ਤੇ ਤੇ ਦੇਖੋ ਦੁਕਾਨਾਂ ਗ੍ਰੀਨ ਰੈਵੋਲੂਸ਼ਨ ਹੋਇਆ ਪਿਆ ਇੱਕ ਗੀਤ ਤੁਹਾਡੇ ਸਾਹਮਣੇ ਤੇ ਵਾਪਸ ਹੋਣਾ ਸਰਬਲਵੀਰ ਸਿੰਘ ਜੀ ਤੁਹਾਡੇ ਨਾਲ ਗੱਲ ਕਰ ਲਈਏਗੀ ਗੀਤ ਤੋਂ ਪਹਿਲਾਂ ਲਾਈਨ ਨੰਬਰ 2 ਸਰਵੀਰ ਸਿੰਘ ਜੀ ਸਰਕਲਦੀਪ ਸਿੰਘ ਸੇਖੋਂ ਜੀ ਤੁਸੀਂ ਏਅਰ ਤੋਂ ਲਾਈਵ ਆ ਵਾਜੂ ਜੀ ਛੋਟੇ ਵੀਰ ਗਿੱਲ ਸਾਹਿਬ ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਬਹੁਤ ਹੀ ਪ੍ਰੀਤ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਂਤੀ ਆ ਵੀ ਬਹੁਤ ਹੀ ਟਕਮਾਂ ਤੇ ਲੋਕਨ ਤੱਕ ਜਿਹੜਾ ਦੇਣਾ ਅੱਜ 12 ਤਰੀਕ ਸਾਰਾ ਗਿੱਦੜਾਂ ਕੁਲਦੀਪ ਸਿੰਘ ਬਰਗਡੀਆਂ ਆਏ ਸੀ ਫੈਡਰੇਸ਼ਨ ਦੇ ਕੋਈ ਨਿੰਦਰ ਸੀ ਤੇ ਥੋੜਾ ਧੰਨਵਾਦ ਕਰਦੇ ਆ ਕਲਮ ਨੇ ਜੋ ਲਿਖੇ ਅੱਖਰ ਤੁਹਾਡੇ ਨਾਮ ਕਰਦੇ ਆ ਛੀਦੋ ਤੁਹਾਡੀ ਯਾਦ ਨੂੰ ਪ੍ਰਣਾਮ ਕਰਦੇ ਆ ਬੜੇ ਮਾਣ ਕਹਿੰਦੇ ਆ ਜੀ ਗੱਲ ਸਾਹਿਬ ਮੈਂ ਸਿੱਧਾ ਦੀ ਲੜੀ ਚੱਲੀ ਹੈ ਜਾਂ ਸਿੱਧਾ ਦੇ ਜਾਂ ਕਿ ਇਹਨੂੰ ਉਹ ਸਾਡੇ ਗੁਰੂਆਂ ਕੇ ਤਦ ਤੱਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਾਂ ਨੇ ਸਖਾਇਆ ਸਾਨੂੰ ਇਹ ਬੜਾ ਸਾਨੂੰ ਮਾਣ ਹੈ ਤੇ ਮੈਨੂੰ ਹੋਰ ਛੋਟਾ ਜਿਹਾ ਮਾਣ ਆ ਵੀ ਇਹਦੇ ਚ ਮੇਰੇ ਨਾਨਾ ਜੀ ਦਾ ਬਾਪ ਚੜੱਕ ਤੋਂ ਵੀ ਇੱਕ ਸਾਹਮਲ ਸੀ ਉਹਦਾ ਨਾਮ ਉਦਮ ਉਦਮ ਸਿੰਘ ਸੀ ਤੇ ਅਸੀਂ ਮਤਲਬ ਉਹਨਾਂ ਨੂੰ ਬੜੇ ਪਿਆਰ ਨਾਲ ਉਹ ਸਿਰਸਾਲ ਮਨਾਨਾ ਜੀ ਦੱਸਦੇ ਹੁੰਦੇ ਸੀ ਸਾਨੂੰ ਥੋੜਾ ਥੋੜਾ ਜਾਂਦੇ ਸੀ ਬਹੁਤ ਸੇਵਾ ਕਰਦੇ ਦੋ ਦੋ ਬੰਦੇ ਤਿੰਨ ਤਿੰਨ ਬੰਦੇ ਮਤਲਬ ਸਾਨੂੰ ਸਾਡੀ ਮਤਲਬ ਰੱਖਿਆ ਵਾਸਤੇ ਸਾਡੀ ਸੇਵਾ ਲਾਉਂਦੇ ਸੀਗੇ ਹੁਣ ਤਾਂ ਹੀ ਲਾਉਂਦੇ ਪਤਾ ਨਹੀਂ ਉਹ ਹਟ ਗਿਆ ਕਿ ਨਹੀਂ ਇਹਨਾਂ ਨੂੰ ਗਿੱਲ ਸਾਬ ਮਾਫ ਕਰਨਾ ਮਰੱਬੇ ਵੀ ਮਿਲਦੇ ਸੀ ਕਿ ਮਿਲਦੇ ਜਿੰਦੇ ਸੀ ਉਹਨਾਂ ਨੇ ਦਿੱਤੇ ਉਹਨਾਂ ਨੇ ਪੰਜ ਪੰਜ ਮਰੱਬੇ ਲਾੜ ਕਰਦੇ ਸੀ ਪਰ ਸਾਡੇ ਮਨਾਨਾ ਜੀ ਨੇ ਨਹੀਂ ਲਏ ਤੇ ਦੋ ਮਰੱਬੇ ਫੇਰ ਵੀ ਛੱਟ ਕੇ ਇਹਨਾਂ ਦੇ ਦਿੱਤੇ ਸੀ ਇਹ ਗੱਲ ਅਸੀਂ ਗੱਲ ਸਾਹਿਬ ਸਤਿ ਪੁੱਛਣੀ ਚਾਹੁੰਦੇ ਆਂ ਵੀ ਇਹਨਾਂ ਨੇ ਇਹ ਲੜੇ ਕਿਹਦੇ ਵਿਰੁੱਧ ਸੀਗੇ ਤੁਹਾਨੂੰ ਨਹੀਂ ਹਜੇ ਤੇ ਦੂਜੇ ਨੰਬਰ ਤੇ ਇਹਨਾਂ ਹੋਰ ਵੀ ਆ ਆ ਉਹ ਜਿਹੜਾ ਉਤਮ ਸਿੰਘ ਫਿਦ ਹੋਇਆ ਸੀਗਾ ਤੇ ਅਸੀਂ ਤੁਹਾਨੂੰ ਮਾਣ ਆ ਵੀ ਅਸੀਂ ਵੀ ਕਦੇ ਸ਼ੀਦਾ ਦੇ ਹਿਸਾਬ ਚ ਅਸੀਂ ਸਾਡੇ ਵੀ ਕੁਲ ਚੋਂ ਹੈਗੇ ਅਸੀਂ ਤੇ ਸਾਰੀ ਸੰਗਤ ਨੂੰ ਤੇ ਸਾਰੇ ਲੋਕ ਮਤਲਬ ਤੇ ਦਿਨੀਆ ਬੀਆਂ ਨੂੰ ਤੇ ਸਿੱਖਾਂ ਨੂੰ ਮਾਣ ਇਹਨਾਂ ਤੇ ਇਹ ਇਹਨਾਂ ਨੇ ਮਤਲਬ ਜਿੱਥੇ ਵੀ ਖੜਦੇ ਆ ਇਹ ਵਚਨ ਤੇ ਖੜਦੇ ਸਿੱਖ ਇਹ ਨਹੀਂ ਵੀ ਇਹ ਜਿੱਥੇ ਮਤਲਬ ਇਹ ਨਹੀਂ ਕਹਦੇ ਵੀ ਮਤਲਬ ਇਹ ਅੰਗਰੇਜ਼ਾਂ ਦੇ ਕਹਿੰਦੇ ਅਸੀਂ ਹੁਣ ਨਾ ਕਰੀਏ ਅਸੀਂ ਤਾਂ ਜਿੱਥੇ ਇਹਨਾਂ ਨੇ ਸੌਂਹ ਖਾੜੀ ਆ ਉਹ ਸੌਂਹ ਦੇ ਪੂਰੇ ਉੱਤਰਦੇ ਆ ਹੁਣ ਵੀ ਉੱਤਰਦੇ ਆ ਜਿਹੜੇ ਹੈਗੇ ਆ ਸੰਤ ਬਾਵਾ ਜਨੈਸ਼ ਸਿੰਘ ਭਿੰਡਰਾਵਾਲੇ ਵੀ ਤੁਹਾਡੇ ਸਾਹਮਣੇ ਆ ਤੇ ਇਹਨਾਂ ਦੇ ਇਹ ਮਤਲਬ ਗੁਰੂ ਗਵਰ ਸਾਹਿਬ ਦੇ ਲਈ ਤੇ ਚੱਲ ਕੇ ਉਰੇ ਉਤਰਿਆ ਤੇ ਹੋਰ ਵੀ ਉਤਰਦੇ ਰਹਿਣ ਅਸੀਂ ਇਹਨਾਂ ਦੇ ਨਾਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਨਾਲ ਸਰਕਾਰ ਕਰਦੀ ਆ ਅਦੇ ਇਹਨਾਂ ਦੀ ਫਾਊਂਡੇਸ਼ਨ ਨੂੰ ਅੱਗੇ ਵੀ ਕਹਾਂ ਵੀ ਇੱਥੇ ਆਓ ਤੇ ਅਸੀਂ ਇਹਨਾਂ ਨੂੰ ਚੰਗਾ ਜੀ ਬਸ ਹੁਣ ਹੋ ਗਿਆ ਬਹੁਤ ਗੱਲਾਂ ਬਹੁਤ ਹੋਗੀਆਂ ਮੇਰੇ ਖਿਆਲ ਹਾਂ ਬਸ ਸਬਰ ਕਰੋ ਤੇ ਮੈਂ ਗੱਲ ਅਗਲੇ ਹਿੱਸੇ 'ਚ ਕਰਦਾ ਜੀ ਤੁਹਾਨੂੰ ਸਾਰੀ ਜਿੰਨੀ ਕੁ ਮੇਰੀ ਸੋਝੀ ਹੈ ਉਸ ਹਿਸਾਬ ਨਾਲ ਮੈਂ ਦੱਸਦਾ ਸਾਰੀ ਗੱਲ ਤੇ ਖਬਰਾਂ ਤੁਹਾਨੂੰ ਦੱਸਦਿਆਂ ਕੁਝ ਅਹ ਹੋਰ ਦੁਨੀਆ ਦੀ ਜਿਹੜੀਆਂ ਖਬਰਾਂ ਐ ਦਰਲੇ ਪਾਸੇ ਜਿਉਂ ਨੌਰਥ ਕੋਰੀਆ ਵਾਲੇ ਨੇ ਪਰਮਾਣੂ ਪ੍ਰੀਖਣ ਕੀਤਾ ਜਾਪਾਨ ਦੇ ਵਿੱਚ ਬੰਕਰ ਬਣਨੇ ਸ਼ੁਰੂ ਹੋ ਗਏ ਜਿਹੜਾ ਤਾਂ ਨਵਾਂ ਘਰ ਬਣਦਾ ਉਹਦੇ ਤੇ 110 ਹਜ਼ਾਰ ਡਾਲਰ ਲੱਗਦਾ ਜਿਹੜੇ ਪਹਿਲੇ ਬਣੇ ਤੇ 2.5 ਲੱਖ ਡਾਲਰ ਲੱਗਦਾ ਕਿ ਜਿੱਥੇ ਬਾਹਰ ਧਮਾਕੇ ਹੋ ਜਾਣ ਤੇ ਉੱਥੇ ਬਚਤ ਰਹਿ ਜ ਇਦੇ ਤੇ ਦੋ ਹਿੱਸਿਆਂ ਦੇ ਵਿੱਚ ਗੱਲ ਖੜੀ ਆ ਹੁਣ ਇੱਕ ਗੱਲ ਇਹ ਖੜੀ ਐ ਕਿ ਉਹ ਪਰਮਾਣੂ ਬੰਬ ਕਿਉਂ ਬੜਾਈ ਬੈਠਾ ਲੋਕ ਉਹਦੇ ਭੁੱਖੇ ਮਰਦੇ ਦੂਜੇ ਬੰਨੇ ਮੇਰੀ ਹੂ ਦੇ ਤਾਂ ਮੇਰੇ ਕੋਲ ਪਰਮਾਣੂ ਬੰਬ ਐ ਨਹੀਂ ਹੁਣ ਨੂੰ ਮੈਨੂੰ ਕੂਕਿਆਂ ਦੇ ਡੋਲ ਵਾਂਗੂ ਅਮਰੀਕਾ ਨੇ ਮਾਜ ਦੇਣਾ ਸੀ ਗੱਲ ਪੱਕੀ ਐ ਜੇ ਉਹਦੇ ਕੋਲ ਟੂਈ ਵਾਲਾ ਬੰਬ ਨਾ ਹੁੰਦਾ ਹੁਣ ਤਾ ਫਿਰ ਖਾਤੀ ਵਰਦੀਆਂ ਫਿਰਦੀਆਂ ਹੋਣੀਆਂ ਸੀ ਬੰਦ ਕੇ ਪਤਾ ਨਹੀਂ ਕਿੱਥੇ ਨੂੜਿਆ ਹੋਣਾ ਸੀ ਗਵੰਤਨਾਮੋਂ ਲਿਆਉਣਾ ਸੀ ਕਿਤੇ ਲਿਆਉਣਾ ਸੀ ਜਾਂ ਇਹ ਗੱਲ ਠੀਕ ਹੈ ਉਹ ਆਪਣੀ ਹੋਂਦ ਨੂੰ ਬਚਾਈ ਤੇ ਬਹੁਤ ਚੀਜ਼ਾਂ ਬਣਾਈਆਂ ਹੁਣ ਜਦ ਉਸਨੇ ਇੰਟਰਕੌਂਟੀਨੈਂਟ ਮਿਸਲ ਦਾ ਪ੍ਰੀਖਣ ਕਰ ਦਿੱਤਾ ਵੀ ਮੈਸਾਚੂਸੈਟਸ ਤੇ ਅਲਾਸਕਾ ਮੇਰੀ ਹੱਦ ਚ ਆਉਂਦੇ ਨੇ ਖਿਆਲ ਰੱਖਿਓ ਤਾਂ ਹੀ ਸਭ ਕੋ ਟਿਕਿਆ ਬੈਠਾ ਤਾਂ ਹੀ ਸਰਪੰਚ ਬਬਕ ਜੀ ਮਾਰਦਾ ਫੇਰ ਟਿਕ ਜਾਂਦਾ ਤੇ ਇਹ ਗੱਲਾਂ ਠੀਕ ਨੇ ਪਰ ਹੁਣ ਗੱਲ ਇਹ ਹੈ ਵੀ ਕਿ ਮਾੜਾ ਜਿਹੜਾ ਇੱਕ ਪਰਮਾਣੂ ਬੰਬ ਬਣਾ ਲੈਂਦਾ ਉਹਦਾ ਰੋਲਾ ਪੈ ਜਾਂਦਾ ਤਕੜਿਆਂ ਕੋਲ ਪਤਾ ਹੀ ਨਹੀਂ ਕਿੰਨੇ ਨੇ ਵੱਡੇ ਦੇਸ਼ ਨੇ ਜਿਹੜੇ ਕੀ ਕੁਝ ਲਈ ਬੈਠੇ ਕਿਤੇ ਪਤਾ ਥੋੜਾ ਹੁਣ ਅੱਗੇ ਕੀ ਕੀ ਬਣਾ ਦਿੱਤਾ ਇਹ ਤਾਂ 50-50 ਸਾਲ ਅੱਗੇ ਤੁਰੇ ਫਿਰਦੇ ਆ ਉਹਦੇ ਗੁਆੜ ਦੇ ਵਿੱਚ ਰਸ਼ੀਆ ਦੇ ਕੋਲ ਪਤਾ ਹੀ ਨਹੀਂ ਕੀ ਕੁਛ ਹੈ ਚੀਨ ਬਣਾਈ ਬੈਠਾ ਤੇ ਉਹ ਕਹਦਾ ਵੀ ਮੈਂ ਜੇ ਬਣਾ ਲਿਆ ਫੇਰ ਬਿੱਲੀ ਮਰ ਗਈ ਉਸ ਦਾ ਰੌਲਾ ਬੜਾ ਪੈ ਰਿਆ ਤੇ ਉਹ ਗੱਲ ਇਹ ਹੈ ਵੀ ਬਣਾਏ ਤਾਂ ਸਾਰਿਆਂ ਨੇ ਪਰ ਬੰਦਾ ਉਹ ਵਿਗੜਿਆ ਪਰ ਉਸ ਨੂੰ ਨੇੜੇ ਵੇਖਣ ਵਾਲੇ ਕਹਿੰਦੇ ਨੇ ਵੀ ਉਹ ਬਹੁਤ ਜ਼ਿਆਦਾ ਨੀਤੀ ਘਾੜਾ ਤੇ ਬਹੁਤ ਸਿਆਣਾ ਰੂਲਰ ਹੈ। ਲੋਕਾਈ ਇਹ ਕਹਿੰਦੀ ਆ ਵੀ ਉਹਦੇ ਬੰਦੇ ਭੁੱਖੇ ਮਰਦੇ ਆ ਬੰਦੇ ਉਹਦੇ ਇਹ ਕਹਿੰਦੇ ਵੀ ਸਾਨੂੰ ਭੁੱਖੇ ਮਰਨਾ ਮਨਜ਼ੂਰ ਹੈ ਪਰ ਅਸੀਂ ਕਿਸੇ ਦੀ ਈਨ ਨਹੀਂ ਮੰਨਣੀ। ਜਵਾਲੇ ਦੀ ਕੀ ਸ਼ਾਹ ਹੋ ਜਾਣਾ ਜਿਹੜਾ ਕੋ ਬਣਿਆ ਹੈ ਉਹੀ ਠੀਕ ਹੈ ਗੁਆੜ ਚ ਸਾਊਥ ਕੋਰੀਆ ਵਿੱਚ ਦੁਨੀਆ ਭਰ ਦਾ ਬਿਜ਼ਨਸ ਹੋ ਰਿਹਾ ਸਿਓਲ ਦੀਆਂ ਜਿਹੜੀਆਂ ਗਗਨ ਚੁੰਮੀਆਂ ਮਾਰ ਤਾਂ ਸ਼ੀਸ਼ੇ ਦੀਆਂ ਤੁਸੀਂ ਵੇਖਿਆ ਹੀ ਹੈ ਜਦ ਤੁਸੀਂ ਉਸ ਕਿਤੇ ਉਤਰਦੇ ਹੋ ਸਿਓਲ ਦੇ ਵਿੱਚ ਜਾਂ ਸਾਇਵਾਨ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿੰਨਾ ਦੁਨੀਆ ਦਾ ਬਿਜ਼ਨਸ ਜਿਹੜਾ ਉਹਨਾਂ ਨੇ ਵਪਾਰ ਜਿਹੜਾ ਹੋਲਡ ਕੀਤਾ ਹੈ ਸੋ ਇਹ ਬਹੁਤ ਵੱਡਾ ਇੱਕ ਵਿਸ਼ਾ ਹੈ ਔਰ ਇਸ ਗੱਲ ਤੋਂ ਤਾਂ ਲੋਕ ਦੁਖੀ ਨੇ ਕਿ ਉਸ ਨੇ ਪਰਮਾਣੂ ਬੰਬ ਬਣਾ ਲਏ ਪਰ ਇਸ ਗੱਲ ਤੋਂ ਸਿਆਣੇ ਇਹ ਵੀ ਕਹਿੰਦੇ ਨੇ ਕਿ ਟਿਕਿਆ ਵੀ ਅਮਰੀਕਾ ਹੁਣ ਨੂੰ ਤਾਂ ਹੀ ਬੈਠਾ ਨਹੀਂ ਇਹਨਾਂ ਨੂੰ ਜਾਣਾ ਕਿਸੇ ਦੇਸ਼ ਤੇ ਚੜ੍ਹਨਾ ਕਿਸੇ ਨੂੰ ਪੁੱਛਣਾ ਥੋੜਾ ਇਹਨਾਂ ਨੇ ਕੱਲ ਸਤੰਬਰ ਵਾਲਾ ਵਾਲੀ ਗੱਲ ਜੀ ਉਹ ਤਾਂ ਜੀ ਆਪਣੇ ਇਹਨਾਂ ਨੇ ਸਟਲਟ ਟਾਵਰ ਫੇਅਰ ਜਾਣ ਲਈ ਇਹਨਾਂ ਨੇ ਈਰਾਨ ਤੇ ਇਰਾਕ ਤੇ ਅਫਗਾਨਿਸਤਾਨ ਤੇ ਬਹਾਨਾ ਬੰਨੇ ਬਹਾਨਾ ਬੰਨਣ ਦੀ ਕੀ ਲੋੜ ਹੈ ਇਹਨਾਂ ਨੂੰ ਕੁਝ ਲੋੜ ਨਹੀਂ ਜਿਹੜਾ ਕੁਝ ਇਹਨਾਂ ਨੇ ਕਰਨਾ ਉਹ ਕਰੇ ਹੀ ਦੇਣਾ ਡੱਡੇ ਦਾ ਸਿੰਘ ਪਿੰਡ ਚ ਵੇਖਦੇ ਹਾਂ ਤਖੜੇ ਲਾਣੇ ਚ ਘਰ ਪੰਜ ਸੱਤ ਤੋਂ ਦੇ ਘਰ ਚ ਮੁੰਡੇ ਨੇ ਜਿਹਦੇ ਮਰਦੀ ਘਰਾਂ ਦੇ ਮੁੰਰੇ ਲਲਕਦਾ ਮਾਰੇ ਆਉਂਦੇ ਆ ਦੇ ਵਿੱਚ ਦੇ ਹਰ ਖਿੱਤੇ ਦੇ ਵਿੱਚ ਇਹਨਾਂ ਦੇ ਨੈਵਲ ਵੇਸ ਨੇਅਰ ਫੋਰਸ ਤੇ ਬੇਸ ਨੇ ਮਾੜਾ ਜੀ ਕੋਈ ਆਈਲੈਂਡ ਮਿਲਦੀ ਆ ਉਹਦੇ ਤੇ ਹਵਾਈ ਪੱਟੀ ਬਣਾ ਕੇ ਤੇ ਬੰਕਰ ਬਣਾ ਕੇ ਉਹਦੇ ਵਿੱਚ F18 ਖੜੇ ਐ B52 ਦੇ ਜਿਹੜੇ ਵੱਡੇ ਬੌਂਬਰ ਨੇ ਜਿਹੜੇ ਇਕ ਬੰਨੇਉ ਉਡਾਨ ਭਰਦੇ ਹਤ ਜਾ ਕੇ ਚੰਨਾ ਦੇ ਹਿਸਾਬ ਨਾਲ ਕਾਰਪਟ ਬੋਮਬਿੰਗ ਕਰਦੇ ਆ ਥੱਲੇ ਪੂਰਾ ਘਾ ਦਾ ਇੱਕ ਡੱਕਾ ਨਹੀਂ ਛੜਦੇ ਉਹ ਸੋ ਸਨਾਮ ਦੇ ਦੇਸ਼ ਚੋਂ ਤਾਂ ਕੋਈ ਵੀ ਨਹੀਂ ਸੀ ਉਹਦੇ ਚ 사우ਦੀ ਅਰਬ ਦੇ ਜ਼ਿਆਦਾ ਧਾਵੀ ਸੀ ਤੇ ਉਹਨਾਂ ਨੂੰ ਕਿਹਾ ਕੱਖ ਨਹੀਂ ਉਹਨਾਂ ਦੇ ਤਾਂ ਟੱਬਰ ਨੂੰ ਲਾ ਦਿੰਦੇ ਨੂੰ ਇੱਥੇ ਉਡਣ ਦੇ ਤਾਂ ਇਹ ਤਾਂ ਆਪਣੀਆਂ ਆਪਣੀਆਂ ਹੁਣ ਆਲਾ ਤਾਂ ਬੋਸ਼ਦਾ ਵੀ क्रूरਾ ਤਿੱਖਾ ਸੀ ਥੋੜਾ ਜਿਹਾ ਗਬਲੇ ਬੰਦੇ ਨੇ ਆਰਾਮ ਰੱਖਿਆ ਜਿਹੜਾ ਆਇਆ ਜਿਹੜਾ ਹੌਣ ਵਾਲਾ ਹੈ ਇਹਦੀ ਤਾਂ ਬਾਡੀ ਲੈਂਗੁਏਜ ਅੱਜ ਮਲੇਸ਼ੀਆ ਦੇ ਰਾਸ਼ਟਰਪਤੀ ਨੂੰ ਜੱਫੀਆਂ ਪਾਈ ਜਾ ਰਿਆ ਸੀ ਓਵਲ ਆਫ ਆਪਣੇ ਵਾਈਟ ਹਾਊਸ ਦੇ ਬਾਹਰ ਮੈਂ ਕਿਹਾ ਜਦ ਹੱਥ ਮਿਲਾ ਕੇ ਜੱਫੀ ਪਾਈ ਖੜਾ ਮੈਂ ਮਨ ਚ ਸੋਚਿਆ ਮੂੰਹ ਚ ਮਨ ਚ ਕਹਿੰਦਾ ਤਾਂ ਉਹ ਵੀ ਤੇਰੇ ਆਰਗੂਮੈਂਟਾਂ ਮੈਂ ਕੋਲ ਦੀ ਨਾ ਲੰਘਣ ਦਵਾਂ گا ਗਾਉਂ ਆ ਤੇਰੇ ਦੇਸ਼ ਚ ਤੇਲ ਬਹੁਤਾ ਤਾਂ ਤੈਨੂੰ ਅੱਜ ਚਾਹ ਪਲਾਉਣੀ ਇਸ ਵਾਈਟ ਹਾਊਸ ਹੀਂ ਤੈਨੂੰ ਤਾਂ ਮੈਂ ਕੋਲ ਦੀ ਨਾ ਲੰਘਣ ਦਵਾਂ ਮੈਂ ਹਾ ਦਿਲ 'ਚ ਏਉਂ ਵੀ ਕਹਿੰਦਾ ਬੋੜੀ ਲਗੇ ਤੇ ਹੱਸਣ ਤੋਂ ਉਹਦਾ ਪਤਾ ਲੱਗ ਜਾਂਦਾ ਬੇ ਹੁਣ ਦਿਲ ਇਹਦਾ ਕੀ ਕਹਿੰਦਾ ਬਾਹਲਾੜ ਬੜਾ ਕੇ 58 ਮਿੰਟ ਹੋਏ ਐ ਉਧਰੋਂ ਤਾਂ ਪਤਛੜ ਦੀ ਤਿਆਰੀ ਐ ਉਧਰੋਂ ਲਬਰਟਾ ਦੇ ਵਿੱਚ ਲੈਥਬ੍ਰਿਜ ਦੇ ਏਰੀਏ ਦੇ ਵਿੱਚ ਬਹੁਤ ਵੱਡੀ ਅੱਗ ਜਿਹੜੀ ਜੰਗਲੀ ਅੱਗ ਹੈ ਲੱਗੀ ਹੋਈ ਹੈ ਵਾਟਰਟਨ ਲੇਕਸ ਨੈਸ਼ਨਲ ਪਾਰਕ ਹੈ ਸਾਡੇ ਸੂਬੇ ਨਾਲ ਉਸ ਦੀ ਲੱਗਦੀ ਹੈ ਤੇ ਅੱਗ ਵੀ ਇਧਰੋਂ ਹੀ ਲੱਗੀ ਹੈ ਬੀਸੀ ਵਾਲੇ ਪਾਸਿਓ ਤੇ ਉਧਰ ਜਾ ਬੜੀ we're listening to 1550 a.m. KRPI Ferndale the views expressed are not necessarily those of the staff management or ownership of this station 50000 ਕਿਲੇ ਦੇ ਵਿੱਚ ਇਹ ਅੱਗ ਫੈਲੀ ਹੋਈ ਹੈ ਤੇ ਰਤੂ ਰਾਤ ਬਹੁਤ ਜ਼ਿਆਦਾ ਇਹ ਫੈਲ ਗਈ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ ਵਾਟਰਟਨ ਦੇ ਵਿੱਚ ਬਹੁਤ ਵਧੀਆ ਇਸ ਨੈਸ਼ਨਲ ਪਾਰਕ ਦੇ ਵਿੱਚ ਹੋਟਲ ਨੇ ਇਹ ਲੈਥਬ੍ਰਿਜ ਦੇ ਨੇੜੇ ਆ ਇਹ ਮੋਂਟਾਨਾ ਵੀ ਨਾਲ ਪੈ ਜਾਂਦਾ ਤੇ ਬੀਸੀ ਵਾਲੇ ਪਾਸਿਓ ਇਹ ਗੱਲ ਗਈ ਹੈ ਤੇ ਬਹੁਤ ਪ੍ਰਿੰਸ ਆਫ ਵੇਲਸ ਹੋਟਲ ਆ ਇਸ ਦੇ ਵਿੱਚ ਇੱਕ ਤੇ ਲੋਕ ਇਸ ਨੈਸ਼ਨਲ ਪਾਰਕ ਦੇ ਵਿੱਚ ਘੁੰਮਣ ਜਾਂਦੇ ਆ ਬਲੱਡ ਰਿਜ਼ਰਵਡ ਜੋ ਜਿਹੜਾ ਹੈ ਉੱਥੇ ਨੇਟਿਵਸ ਜੰਗਲੀ ਅੱਗਾਂ ਨੇ ਬਹੁਤ ਬਰਬਾਦੀ ਇਸ ਵਾਰ ਕੀਤੀ ਹੈ ਬੀਸੀ ਦੇ ਵਿੱਚ ਅ ਅਰਬ ਦੇ ਕਰੀਬ ਅਰਬ ਤੋਂ ਉੱਪਰ ਜਿਹੜਾ ਡਾਲਰ ਨੇ ਇਸ ਦੇ ਵਿੱਚ ਖਰਚ ਸਾਡੇ ਆਗੇ ਪਰਾਣੇ ਸਮਿਆਂ ਦੇ ਵਿੱਚ ਮੂਲ ਵਾਸੀਆਂ ਨੂੰ ਜਿਹੜਾ ਬਹੁਤ ਬਰਬਾਦੀ ਉਹਨਾਂ ਨਾਲ ਹੋਈ ਹੈ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਹੁਣ ਇਹ ਗੱਲਾਂ ਚੱਲ ਰਹੀਆਂ ਮਿਨਿਸਟਰੀਆਂ ਬਣੀਆਂ ਗ੍ਰਾਸੀ ਨੈਰੋਜ਼ ਫਰਸਟ ਨੇਸ਼ਨ ਹੈ ਅਹ ਦੇ ਵਿੱਚ ਇਸ ਰਿਜ਼ਰਵ ਦੇ ਅਪਸਟ੍ਰੀਮ ਵਾਲੇ ਪਾਸੇ ਨੂੰ ਇੱਕ ਵੱਡੇ کارਖਾਨੇ ਨੇ ਧਾਰਨੇ ਆ ਕੇ کارਖਾਨਾ ਲਾਇਆ ਤੇ ਤਨਾਂ ਦੇ ਹਿਸਾਬ ਉਸ ਨੇ ਪਾਰਾ ਇਸ ਪਾਣੀ ਚ ਡੋਲ ਦਿੱਤਾ ਪਾਣੀ ਚ ਸੁੱਟ ਤੇ ਪਾਣੀ ਗਾਂ ਜਾ ਕੇ ਫਰਸਟ ਨੇਸ਼ਨ ਦੇ ਲੋਕਾਂ ਨੇ ਪੀਤਾ ਤੇ ਹੁਣ ਕੀ ਜੀ ਦੇ ਵਿੱਚ ਉਹ ਰੋਗ ਤੁਰਿਆ ਕੌਣ ਪੁੱਛਦਾ ਇੱਥੇ ਮਾੜਿਆਂ ਨੂੰ ਕੋਈ ਨਹੀਂ ਪੁੱਛਦਾ ਇਹ ਪਿਛਲਾ ਦੇਸ਼ ਹੋਵੇ ਚਾਹੇ ਉਰਲਾ ਦੇਸ਼ ਹੋਵੇ ਤੇ ਕੈਮੀਕਲ ਮਿਲ ਦਾ ਜਿਹੜਾ ਤੇ ਉਹਨਾਂ ਨੂੰ 9000 ਕਿਲੋ ਮਤਲਬ 9 ਟਨ ਦੇ ਕਰੀਬ ਮਰਕਰੀ ਹੈ ਜਿਹੜਾ 1960 ਤੇ 70 ਦੇ ਸੰਦੇਵੇ ਸੁਣਤਾ ਹੁਣ 50 ਸਾਲਾਂ ਬਾਅਦ ਵੀ ਬੱਚਿਆਂ ਨੂੰ ਇੱਥੇ ਜਿਹੜੀ ਉਹ ਬਿਮਾਰੀਆਂ ਉਸ ਤਰ੍ਹਾਂ ਲੱਗ ਰਹੀਆਂ ਐ ਮਰ ਰਿਹਾ ਕੋਈ ਸੁਇਸਾਈਡ ਕਰ ਰਿਹਾ ਨਸ਼ੇ ਚ ਪਿਆ 100 ਹੁਣ ਉਸ ਦੀ ਇਨਵੈਸਟੀਗੇਸ਼ਨਾਂ ਹੋਣਗੀਆਂ ਜੀ ਉਹ ਕਮੇਟੀ ਆਜੂ ਜੀ ਤੇ ਕੀ ਉਸ ਫਰਕ ਪਾਇਆ ਚਾਹੇ ਇਹਨਾਂ ਨੇਟਰਸ ਦੇ ਸਕੂਲ ਹੋਣ ਹੁਣ ਬੱਚੇ ਇਹਨਾਂ ਦੇ ਸੰਦਰਵੇ ਦੇ ਵਿੱਚ ਕਿਸ ਤਰ੍ਹਾਂ ਸ਼ਾਲਾ ਮਾਰ ਮਾਰ ਕੇ ਮਰ ਰਹੇ ਨੇ ਆਪਣੇ ਕਲਚਰ ਤੋਂ ਦੂਰ ਪਹਿਲਾਂ ਧੱਕੇ ਨਾਲ ਇਹਨਾਂ ਨੂੰ ਸਕੂਲਾਂ ਦੇ ਵਿੱਚ ਲੈ ਗਏ ਇਹਨਾਂ ਦਾ ਧਰਮ ਬਦਲ ਲਈ ਦੀ ਨਸਲ ਬਦਲ ਲਈ ਤੇ ਵਰਿਆਂ ਬਾਅਦ ਪਰਿਵਾਰਾਂ ਨੂੰ ਬੱਚੇ ਮਿਲ ਰਹੇ ਨੇ ਨਸਲ ਕਿੱਥੇ ਨਹੀਂ ਹੁੰਦੀਆਂ ਦੁਨੀਆ ਦੇ ਵਿੱਚ ਨਸਲ ਕੁਸ਼ੀਆਂ ਸਾਰੀ ਜਗ੍ਹਾ ਹੁੰਦੀਆਂ ਮਾਰੇ ਦੇਸ਼ਾਂ 'ਚ ਉਹਨਾਂ ਦਾ ਰੌਲਾ ਪੈ ਜਾਂਦਾ ਹੈ ਦੇਸ਼ਾਂ ਦਾ ਦੱਬੀਆਂ ਹੀ ਜਾਂਦੀਆਂ ਤਕੜੇ ਦੇਸ਼ਾਂ 'ਚ ਉਹਨਾਂ ਤੇ ਇਨਕੁਆਰੀਆਂ ਬਿਠਾ ਦਿੱਤੀਆਂ ਜਾਂਦੀਆਂ ਬਸ ਇੰਨਾ ਕੰਮ ਹੈ ਬਲਕਿੰ ਨਹੀਂ ਹੈ ਤੇ ਇਹਦੇ ਵਿੱਚ ਹੀ ਸਾਰਾ ਕੁਝ ਲੁਕੋ ਲੈਂਦੇ ਆ ਸੂਰਬੀਰ ਯੋਧਿਆਂ ਬਹਾਦਰਾਂ ਦੀ ਦਾਸਤਾਂ ਸਦਾ ਪੈਂਦੀ ਹੈ ਇਹ ਗੱਲ ਅਲੱਗ ਹੈ ਕਿ ਕੌਮਾਂ ਭੁੱਲ ਜਾਣ ਉਸ ਇਤਿਹਾਸ ਨੂੰ ਤਾਂ ਸੂਰਬੀਰ ਯੋਧਿਆਂ ਦੀ ਕੋਈ ਇਹਦੇ ਵਿੱਚ ਗਲਤੀ ਨਹੀਂ ਪੁਰਾਣੇ ਸ਼ਹੀਦਾਂ ਦੀ ਹੁਣ ਦੇ ਸ਼ਹੀਦਾਂ ਦੀ ਗੱਲ ਇੱਕੋ ਹੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਾ ਸਿੱਖ ਰਾਜ ਕਾਇਮ ਕੀਤਾ ਹੈ ਇਲਾਕਾ ਗੈਰ ਜਿਸ ਨੂੰ ਨਾਰਥ-ਵੈਸਟ ਫਰੰਟੀਅਰ ਕਿਹਾ ਜਾਂਦਾ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਸਰਹੱਦ ਦਾ ਇਹ ਜਿਹੜਾ ਏਰੀਆ ਦਰੱਖ ਹੈਬਰ ਉਸ ਏਰੀਆ ਦੇ ਵਿੱਚ ਸਰਦਾਰ ਨਲਵੇ ਨੇ ਜਦ ਆਪਣਾ ਸਿੱਕਾ ਜਮਾਇਆ ਕਿਉਂਕਿ ਅਫਗਾਨਿਸਤਾਨ ਤੇ ਇਸ ਕਬਾਇਲੀ ਇਸ ਏਰੀਆ ਦੇ ਕਬਾਇਲੀ ਜਿਹੜੇ ਲੋਕ ਸਨ ਪਸ਼ਤੂਨ ਸਨ ਜਿਹੜੇ ਹੁਣ ਵੀ ਬਹੁਤ ਵੱਡੀ ਪਸ਼ਤੂਨਾ ਦੀ ਨਾਰਥ-ਵੈਸਟ ਫਰੰਟੀਅਰ ਦੇ ਵਿੱਚ ਪਸ਼ਾਵਰ ਤੋਂ ਉੱਪਰਲੇ ਬੰਨੇ ਵਸਤੀ ਹੈ ਪਸ਼ਾਵਰ ਚ ਪਾਕਿਸਤਾਨ ਦੇ ਵਿੱਚ ਆਮ ਕਿ ਬੰਦੇ ਲੋਕ ਭਗੌੜੇ ਕਤਲ ਕਰਕੇ ਇਸ ਇਲਾਕੇ ਗੈਰ ਦੇ ਵਿੱਚ ਜਾ ਵਰਦੇ ਸੀ ਇਸ ਜੰਗਲ ਦੇ ਏਰੀਏ ਦੇ ਵਿੱਚ ਜਿੱਥੇ ਵੱਡੀਆਂ ਪਹਾੜੀਆਂ ਇਸ ਇਲਾਕੇ ਦੇ ਉਸ ਦਰਰੇ ਖੈਬਰ ਦੇ ਵਿੱਚ ਦੀ ਤਾੜ ਵੀ ਆਉਂਦੇ ਰਹੇ ਪੰਜਾਬ ਦੇ ਵਿੱਚ ਤੇ ਕਸ ਜਿੰਮਤ ਲੋਕਾਂ ਦੀ ਲੁੱਟ ਕੇ ਜਾਂਦੇ ਰਹੇ ਉਸ ਸਮੇਂ ਵੀ ਸਹਬੇ ਕਮਾਲ ਦੇ ਸਮੇਂ ਤੋਂ ਬਾਅਦ ਖਾਲਸਾ ਵਾਰੀਅਰਸ ਨੇ ਖਾਲਸਾ ਫੌਜ ਨੇ ਇਹਨਾਂ ਜਰਵਾਣਿਆਂ ਦੀਆਂ ਮੁਸ਼ਕਮ ਬੰਨ੍ਹ ਕੇ ਉਹਨਾਂ ਨੂੰ ਲਿਉਂਦੇ ਰਹੇ ਤੇ ਆਪਣੇ ਹਰਿਮੰਦਰ ਦਰਬਾਰ ਸਾਹਿਬ ਨੂੰ ਸਾਫ਼ ਕਰਦੇ ਰਹੇ ਚਾਹੇ ਅਫਦਾਲੀ ਸੀ ਚਾਹੇ ਕੋਈ ਹੋਰ ਸੀ ਜਿਨ੍ਹਾਂ ਨੇ ਵੀ ਜ਼ੁਲਮ ਕੀਤੇ ਉਹਨਾਂ ਨੂੰ ਫੜ ਕੇ ਚਨਾ ਦੇ ਕੰਢਿਆਂ ਤੋਂ ਫੜਫੜ ਲਿਉਂਦੇ ਰਹੇ ਮੁੜ 1801 ਦੇ ਵਿੱਚ ਸਿਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1849 ਦੇ ਵਿੱਚ ਪੂਰਾ ਹੁੰਦਾ ਤੇ ਗੋਰੇ ਜਿਹੜੇ ਉਸ ਸੈਰੀ ਨੂੰ ਟੇਕਓਵਰ ਕਰਦੇ ਐ ਉਸ ਤੋਂ ਬਾਅਦ ਉਹਨਾਂ ਨੂੰ ਸਿੱਖਾਂ ਦਾ ਭੈਅ ਆ ਉਹ ਸਿੱਖਾਂ ਦੇ ਭੈਅ ਤੋਂ ਡਰਦੇ ਉਹਨਾਂ ਨੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਜਲਦ ਸਫੈਦ ਪੋਸ਼ ਤੇ ਨੰਬਰਦਾਰ ਤੇ ਇਸ ਤਰ੍ਹਾਂ ਦੀਆਂ ਆਪਾਧੀਆਂ ਦੇਖ ਕੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਫੌਜ ਚ ਭਰਤੀ ਹੋਣ ਲਈ ਕਸਾਇਆ ਤੇ ਸਿੱਖ ਰੈਜimentਾਂ ਹੋਂਦ ਚਾਹੀਆਂ ਜਿਹਦੇ ਵਿੱਚੋਂ ਇੱਕ 36 ਸਿੱਖ ਰੈਜiment 36 ਸਿੱਖ ਰੈਜiment ਨੂੰ ਇਸ ਏਰੀਏ ਦੇ ਵਿੱਚ ਹੁਣ ਜਦ ਅਫਗਾਨਿਸਤਾਨ ਵੱਲੋਂ ਵੱਧਦਾ ਬ੍ਰਿਟਿਸ਼ ਸਾਮਰਾਜ ਤਾਂ ਦੂਜੇ ਬੰਨੇ ਰਸ਼ੀਅਨ ਐਮਪਾਇਰ ਅਤੇ ਗੱਬੇ ਅਫਗਾਨਿਸਤਾਨ ਦੋਨੇ ਪਾਸੇ ਇਹ ਅੱਜ ਦੇ ਥੋੜਾ ਅਜ਼ਲਾਂ ਦੇ ਅਫਗਾਨੀ ਲੋਕ ਲੜਦੇ ਆਏ ਆ ਜਿਹਦੇ ਵਿੱਚ ਵੱਖ-ਵੱਖ ਕਬੀਲੇ ਨੇ ਕਬੀਲਿਆਂ ਦਾ ਆਪਣਾ ਏਰੀਆ ਤੇ ਉਹ ਦੋਨੇ ਪਾਸੇ ਦੇ ਦੁਸ਼ਮਣਾਂ ਨੂੰ ਉਹ ਬੰਨ ਕੇ ਰੱਖਦੇ ਸੈਂਡਵਿਚ ਸੀ ਬਣੇ ਹੋਏ ਪਰ ਇਹ ਨਹੀਂ ਸੀ ਮੰਦੇ ਬਹੁਤ ਕਰਨੜੇ ਲੋਕ ਨੇ ਜਦ ਗੋਰਿਆਂ ਨੇ ਵਾਦਾ ਕੀਤਾ ਤਾਂ ਉਹ ਆ ਕੇ ਲੜਾਈਆਂ ਲੜਦੇ ਰਹੇ ਉਹਨਾਂ ਨੂੰ ਨਾ ਉਹਨਾਂ ਨੇ ਵਧਨ ਦਿੱਤਾ ਤੇ ਅਸ਼ੀਰ ਉਸ ਦੇ ਵਿੱਚ ਇਹ ਹਿੰਦੂ ਕੁਛ ਦੀਆਂ ਪਹਾੜੀਆਂ ਤੇ ਇਹਦੇ ਵਿੱਚ ਛੋਟੇ-ਛੋਟੇ ਕਿਲੇ ਬਣਾਉਣ ਲੱਗੇ ਇਹ ਜਿਹੜੇ ਕਿਲਾ ਗੁਲਸਤਾ ਕਿਲਾ ਲੋਕਹਾਈਟ 3 ਕਿਲੋਮੀਟਰ ਦੀ ਵਿਥ ਹੈ ਇਹਦੇ ਵਿੱਚ ਤੇ ਉਸ ਦੋਨਾਂ ਦੇ ਵਿੱਚ ਇੱਕ ਆਪਸ ਵਿੱਚ ਉਹ ਦਿਖਦੇ ਨਹੀਂ ਦੋਨੀ ਜਗ੍ਹਾ ਦੇ ਵਿੱਚ ਨਾਰਥ-ਵੈਸਟ ਫਰੰਟੀਅਰ ਦੇ ਇਸ ਏਰੀਆ ਦੇ ਵਿੱਚ ਜਿੱਥੇ ਅਫਗਾਨਿਸਤਾਨ ਨੂੰ ਵੱਧ ਸਕਦੇ ਸੀ ਉਹਨਾਂ ਦੋਨਾਂ ਤੇ ਨਿਗਾਹ ਰੱਖਣ ਲਈ ਸਾਰਾ ਗੜੀ ਦੀ ਇੱਕ ਚੌਂਕੀ ਬਣਾਈ ਗਈ ਗੱਬੇ ਸੰਨ ਚ ਪਹਾੜੀ ਤੇ ਉੱਥੇ 36 ਸਿੱਖ ਰੈਜiment ਦੇ 21 ਨੌਜਵਾਨ ਜਿਹੜੇ ਨੇ 21 ਜਵਾਨ ਹਵਾਲਦਾਰ ਈਸ਼ਰ ਸਿੰਘ ਜੀ ਦੀ ਕਮਾਂਡ ਥੱਲੇ ਸਨ ਹਵਾਲदार ਈਸ਼ਰ ਸਿੰਘ ਦੋਨੇ ਪਹਾੜੀਆਂ ਦੋਨੇ ਇਲਾਕਿਆਂ ਦੇ ਦੋਨਾ ਕਿਲਿਆਂ ਦੇ ਜਿੱਥੇ ਸਲਾਰ ਨਲੂਏ ਨੇ ਕਦੇ ਰਾਜ ਕੀਤਾ ਉਸ ਸਲਾਰ ਨਲੂਏ ਦੇ ਉਹ ਸਾਰੀਆਂ ਹੋਈਆਂ ਚੌਕੀਆਂ ਜਦ ਅੰਗਰੇਜ਼ਾਂ ਦੇ ਕੋਲ ਆਈਆਂ ਤਾਂ ਇਸ ਏਰੀਏ ਦੇ ਵਿੱਚ ਦੋਨੇ ਕਿਲਿਆਂ ਨੂੰ ਗੁਲਸਤਾਨ ਤੇ ਕਿਲਾ ਲੋਕਹਾਰਟ ਨੂੰ ਲੋਕਲ ਪਸ਼ਤੂਨ ਜਿਹੜੇ ਨੇ ਉਹਨਾਂ ਨੇ ਦੱਬਣ ਦੀ ਯਤਨ ਕੀਤਾ ਪਰ ਆਪਸ ਵਿੱਚ ਕਮਿਊਨੀਕੇਸ਼ਨ ਜਿਹੜੀ ਸੀ ਉਹਨਾਂ ਦੀ ਉਹ ਸਾਰਾ ਗੜੀ ਦੀ ਚੌਂਕੀ ਰਾਹੀ ਹੁੰਦੀ ਹਿਲੀਓਗ੍ਰਾਫੀ ਕੀਤੀ ਜਾਂਦੀ ਸ਼ੀਸ਼ੇ ਦੇ ਨਾਲ ਚਮਕਾ ਜਿਹੜਾ ਉਸ ਸ਼ੀਸ਼ੇ ਨੂੰ ਚਮਕਾ ਕੇ ਉਸ ਨਾਲ ਜਿਹੜਾ ਉਹਦਾ ਸਨੇਹਾ ਦਿੱਤਾ ਜਾਂਦਾ ਸਾਰਾ ਗੁਰਮੁਖ ਸਿੰਘ ਦੀ ਡਿਊਟੀ ਸੀ ਅਖੀਰ ਜਦ ਗੱਲ ਨਾ ਬਣੀ ਤਾਂ ਪਸ਼ਤੂਨਾ ਦਾ ਬਹੁਤ ਵੱਡਾ ਇੱਕ ਗਰੁੱਪ 10000 ਦੀ ਫੌਜ ਨੇ 12 ਸਤੰਬਰ 1897 ਨੂੰ ਸਵੇਰੇ 9 ਵਜੇ ਸਾਰਾ ਘੜੀ ਦੇ ਇਸ ਤੇ ਧਾਵਾ ਬੋਲਿਆ ਸਰਦਾਰ ਗੁਰਮਖ ਸਿੰਘ ਨੇ ਸਨਿਹਾ ਦਿੱਤਾ ਕਰਨਲ ਹੌਟਨ ਨੂੰ ਲੋਕਹਾਰਟ ਦੇ ਵਿੱਚ ਉਹ ਕਹਿੰਦਾ ਨਾ ਮੈਨੂੰ ਸਮਾਂ ਲੱਗ ਜਾਣਾ ਇੱਥੇ ਆਉਣ ਨੂੰ ਕਿਹੜਾ ਉੱਥੇ ਸਿੱਧੀਆਂ ਸੜਕਾਂ ਸੀ। ਪਰ ਉਸ ਨੇ ਸਨੇਹਾ ਦੇ ਦਿੱਤਾ ਤੇ ਦਰਵਾਜ਼ਾ ਭੰਨਣ ਦੀ ਦੀ ਕੋਸ਼ਿਸ਼ ਕੀਤੀ ਤੇ ਅੰਦਰੋਂ ਸਿੰਘ ਪਛਾਰਦੇ ਰਹੇ ਅਖੀਰ ਹੱਥ ਨੇ ਜਾ ਕੇ ਉਹਨਾਂ ਨੇ ਕੰਧ ਕੇ ਪਛਤੂਨ ਅੰਦਰ ਜਾ ਵੜਦੇ ਐ ਜਾਨੂ ਫੌਜ ਲੈ ਕੇ ਕਰਨਲ ਹੌਟਨ ਜਿੱਥੇ ਦੂਜੀ ਸਿਕਰੇਜਮੈਂਟ ਬੈਠੀ ਆਵੜ ਮੌਕੇ ਹੁੰਦਾ ਤਾਂ ਆਕੇ 600 ਦੁਸ਼ਮਣ ਦੀਆਂ ਲਾਸ਼ਾਂ ਤੇ 21 ਆਪਣੇ ਉਹਦੇ ਜਵਾਨਾਂ ਦੀਆਂ ਦੇ ਸ਼ਹੀਦਾਂ ਦੇ ਉਸਰੀਰ ਪੈਣੇ ਉੱਤੇ ਸਾਰਾ ਘੜੀ ਦੀ ਇਸ ਲੜਾਈ ਨੇ ਦੁਨੀਆ ਦੀਆਂ ਲੜਾਈਆਂ ਦੇ ਵਿੱਚ ਇੱਕ ਅਜਿਹਾ ਈਸਤੀ ਸਥਾਪਿਤ ਕੀਤਾ ਕਿ ਦੁਨੀਆ ਆਸ਼ਸ਼ ਕਰ ਪਰ ਸਾਨੂੰ ਬੜਿਆਂ ਵੱਧੀ ਇਸ ਦੇ ਬਾਰੇ ਦੱਸਿਆ ਨਾ ਗਿਆ ਦੇਸ਼ ਆਜ਼ਾਦ ਵੀ ਹੋ ਗਿਆ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਰੱਖਿਆ ਗਿਆ ਸਾਨੂੰ ਨਹੀਂ ਪਤਾ ਲੱਗਣ ਦਿੱਤਾ ਹੁਣ ਪਿਛਲੇ ਪੰਜਾਂ ਦਸਾਂ ਸਾਲਾਂ ਤੋਂ ਇਹ ਗੱਲ ਕੀਤੀ ਆਰਡਰ ਆਫ ਮੈਰਿਟ ਇਹਨਾਂ ਨੂੰ ਜਿਹੜਾ ਅੱਜ ਦੇ ਵਿਕਟੋਰੀਆ ਕ੍ਰਾਸ ਦੇ ਬਰਾਬਰ ਹੈ ਇਹ ਪਰਮਵੀਰ ਚੱਕਰ ਦੇ ਬਰਾਬਰ ਹੈ ਉਹ ਇਹ ਆਵਾਰ ਦਿੱਤੇ ਗਏ ਉਸ 10000 ਤੋਂ 14000 ਦੇ ਕਰੀਬ ਜਿਹੜੇ ਐਸਟੀਮੇਟ ਇਸ ਨੂੰ ਇਸ ਦਾ ਲਾਇਆ ਜਾਂਦਾ ਹੈ ਤੇ ਲਾਸਟ ਜਿਹੜਾ ਜਾਂ ਸਾਰੇ ਸ਼ਹੀਦ ਹੋ ਜਾਂਦੇ ਆ ਇਲੀਓਗ੍ਰਾਫੀ ਤੇ ਜੀਸੀ ਡਿਊਟੀ ਸਦਾਰ ਗੁਰਮukh ਸਿੰਘ ਦੀ ਸੀ ਤੇ ਉਸ ਅਖੀਰਲਾ ਸੁਨੇਹਾ ਕਰਨਲ ਹੌਲਟ ਨੂੰ ਭੇਜਿਆ ਕਿ ਮੇਰੇ ਨਾਲ ਦੇ ਸਾਰੇ ਸ਼ਹੀਦ ਹੋ ਚੁੱਕੇ ਨੇ ਤੇ ਹੁਣ ਮੈਂ ਇਕੱਲਾ ਤੇ ਉਸਨੇ ਬੋਲੇ ਸੋਨਿਹਾਲ ਤੇ ਸਸਰੀ ਅਕਾਲ ਦਾ ਜਕਾਰਾ ਲਾ ਕੇ ਅਖੀਰ ਉਸਨੇ ਵੀ ਲੜਾਈ ਕੀਤੀ ਤੇ ਇਸ ਗੜੀ ਨੂੰ ਸਾਰਾ ਗੜੀ ਨੂੰ ਇਸ ਚੌਂਕੀ ਨੂੰ ਉਜਾਰ ਕੇ ਅਫਗਾਨ ਜਿਹੜੇ ਨੇ ਉਹਨਾਂ ਦੇ ਅਗਲੇ ਅਟੈਂਸ਼ਨ ਫੋਰਟ ਗੁਲਸਤਾਨ ਸੀ ਜਦ ਨੂੰ ਉਹਨਾਂ ਨੂੰ ਸਾਰਾ ਦਿਨ ਇਸ ਵਿੱਚ ਲੱਗ ਗਿਆ ਤੇ ਉਸ ਤੋਂ ਬਾਅਦ ਕਰਨਲ ਹਾਊਟਨ ਦਾ ਸਨੇਹਾ ਜਿਹੜਾ ਮਿਲ ਚੁੱਕਿਆ ਸੀ ਉੱਥੋਂ ਸਾਰੀਆਂ ਜਿਹੜੀਆਂ ਬਾਕੀ ਸਿੱਖ ਰਜiment ਬੈਠੀ ਸੀ ਉਹ ਉੱਥੇ ਆ ਗਈ ਤੇ ਕਿਲੇ ਦੋਨੇ ਬਚ ਗਏ ਸੋ ਹਵਾਲ ਦਾ ਸਿੰਘ ਨੈਕ ਲਾਲ ਸਿੰਘ ਲੈਸ ਨੈਕ ਲੈਂਸ ਨੈਕ ਚੰਦਾ ਸਿੰਘ ਸਿਪਾਏ ਸਿਪਾਈ ਜਿਸ ਨੂੰ ਕਹੇ ਸਿਪਾਏ ਸੁੰਦਰ ਸਿੰਘ ਸਿਪਾਏ ਰਾਮ ਸਿੰਘ ਸਿਪਾਏ ਉੱਤਰ ਸਿੰਘ ਸਿਪਾਏ ਸਾਹਿਬ ਸਿੰਘ ਸਿਪਾਏ ਹੀਰਾ ਸਿੰਘ ਸਿਪਾਏ ਦੇਰ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਪੋਲਾ ਸਿੰਘ ਸਿਪਾਹੀ ਨਰੈਣ ਸਿੰਘ ਸਿਪਾਹੀ ਗੁਰਮukh ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਗੁਰਮukh ਸਿੰਘ ਸਿਪਾਹੀ RAM ਸਿੰਘ ਸਿਪਾਹੀ ਭਗਵਾਨ ਸਿੰਘ ਇੱਕ ਹੋਰ ਭਗਵਾਨ ਸਿੰਘ ਬੂਟਾ ਸਿੰਘ ਜੀਵਨ ਸਿੰਘ ਤੇ ਨੰਦ ਸਿੰਘ 21 ਸ਼ਹੀਦ ਜਿਹੜੇ ਸਿੱਖ ਰਜiment ਦੇ ਉਹ ਸਨ ਸਾਰਾਗੜੀ ਦੀ ਇਸ ਚੌਂਕੀ ਤੇ ਇਸ ਬੈਟਲ ਆਫ ਸਾਰਾਗੜੀ ਤੇ ਹੁਣ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਇਹ ਜਿਹੜੀ ਕਿਰਤ ਹੈ ਇਹ ਸਾਨੂੰ ਸਾਡੇ ਪੁਰਖਿਆਂ ਤੋਂ ਚਮਕੌਰ ਦੀ ਗੜੀ ਤੋਂ ਸਾਰਾ ਗੜੀ ਦਾ ਇਤਿਹਾਸ ਬੜਾ ਲੰਮਾ ਹੈ ਇਸ ਏਰੀਏ ਦੇ ਵਿੱਚ ਖਾਲਸਾਈ ਜਰਨੈਲ ਖਾਲਸਾਈ ਫੌਜਾਂ ਦੇ ਜਰਨੈਲ ਹਰੀ ਸਿੰਘ ਨਲਵੇ ਨੇ ਧਾਂਕ ਜਵਾਈ ਤੇ ਨਲਵਾ ਜੂ ਜੋ ਨੂੰ ਲੋਕ ਡਰਾ ਕੇ ਸਲੋਂਦੇ ਹਲੇ ਵੀ ਇਹ ਗੱਲ ਚੱਲੀ ਹੈ ਕਿੰਨੇ ਦਿਨ ਸਿੰਘ ਸ਼ਹੀਦ ਹੋ ਗਿਆ ਨਿਤ ਕਰਕੇ ਗਿਲਕ ਸ਼ਹਿਰਾ ਬਾਹਰ ਧਾਰ ਤੇ ਸੁੱਕਣਾ ਪੈਂਦਾ ਰਿਹਾ ਤੇ ਦੁਸ਼ਮਣ ਡਰਦਾ ਰਿਹਾ ਜਮਰਾਉ ਦੇ ਕਿਲੇ ਦੀ ਗੱਲ ਤੇ ਆ ਕਿਲੇ ਵੀ ਜਿਹੜੇ ਗੁਲਸਤਾਨ ਲੋਖਾੜ ਤੇ ਸਾਰਾ ਗੜੀ ਇਹ ਵੀ ਉਸ ਸਮੇਂ ਉਸਾਰੇ ਗਏ ਤੇ ਇਸ ਏਰੀਏ ਦੇ ਵਿੱਚ ਗੋਰੀਆ ਨੇ ਜਦ ਆਪਣੇ ਆਪ ਨੂੰ ਵਧਾਉਣਾ ਸ਼ੁਰੂ ਕੀਤਾ ਉਹਨਾਂ ਦੇ ਵਸਦੀ ਗੱਲ ਨਹੀਂ ਸੀ ਫਿਰ ਸਿੱਖ ਰੈਜiment ਲਾਈ ਕਿ ਇਸੇ ਖਿੱਤੇ ਦੇ ਵਿੱਚ 25 ਸਾਲ ਦੀ ਉਮਰ ਦੇ ਵਿੱਚ 10 April 1921 ਨੂੰ ਹੈਦਰੀ ਕਸ਼ ਦੇ ਵਿੱਚ ਸਾਰੀਸ਼ਰ ਸਿੰਘ ਪਨਾਮ ਜਿਨ੍ਹਾਂ ਨੂੰ ਵਿਕਟੋਰੀਆ ਕ੍ਰਾਸ ਪਹਿਲੇ ਸਿੱਖ ਨੇ ਜਿਸ ਨੂੰ ਰਾਣੀ ਨੇ ਦਿੱਤਾ ਇਸ ਏਰੀਏ ਦੇ ਵਿੱਚ ਉਹਨਾਂ ਨੇ ਆਪਣੀ ਸੂਰਮ ਗਤੀ ਦੇ ਜੋਰ ਜਿਹੜੇ ਨੇ ਦਿਖਾਏ ਨੇ ਇਹ ਸਹੋਤਾ ਪ੍ਰਵਾਸ ਸਾਰੀਸ਼ਰ ਸਿੰਘ ਜੀ ਉਹਨਾਂ ਦਾ ਇੱਥੇ ਵਸਦਾ ਮੈਂ ਬਹੁਤ ਵਾਰ ਤੁਹਾਨੂੰ ਦੱਸਿਆ ਪਨਾਮ ਤੋਂ ਇੱਕ ਕੱਲੇ ਸਿੱਖ ਥੋੜਾ ਨੇ ਜਿਹੜੇ ਜਿਨ੍ਹਾਂ ਨੇ ਇਹ ਨਾਮ ਨੇ ਜੇ ਚਮਕੌਰ ਦੀ ਗੜੀ ਤੋਂ ਲੈ ਕੇ ਅਲੱਗ-ਅਲੱਗ ਜਾਂ ਸਾਡੀਆਂ ਹੁਣ ਦੀਆਂ ਲੜਾਈਆਂ ਦੇ ਵਿੱਚ ਚਮਕੌਰ ਦੀ ਗੜੀ ਤੋਂ ਲੈ ਕੇ ਸਾਰਾ ਗੜੀ ਤੋਂ ਲੈ ਕੇ ਹੈਦਰੀ ਕਛਦਾ ਜਿਹੜਾ ਇਹ ਗੱਲਾਂ ਆਰਡਰ ਆਫ ਮੈਰਿਟ ਵਿਕਟੋਰੀਆ ਕਰਾਸ ਤੇ ਪੰਵੀਤ ਚੱਕਰ ਤੇ ਪਹਿਲੇ ਸਿੱਖ ਸਰਾਇਸ਼ ਸਿੰਘ ਪਨਾਮ ਨੂੰ ਇਹ ਵਿਕਟੋਰੀਆ ਕਰਾਸ ਮਿਲਿਆ ਸੀ ਜਦੋਂ ਨਾ ਕੱਲਿਆਂ ਨੇ ਪਤਾ ਹੀ ਨਹੀਂ ਕਿੰਨੇ ਹਕੜੇ ਨਾਲ ਲੜਾਈ ਕੀਤੀ ਜਦ ਉਹ ਵੀ ਇਸ ਤਰ੍ਹਾਂ ਹੀ 28ਵੇਂ ਪੰਜਾਬੀ ਜਿਹੜੀ ਰੈਜiment ਸੀ ਉਸ ਤੇ ਉਹ ਸੁਪਾਇਸ ਸਨ ਅਫੇਰ ਆਨਰੇਰੀ ਉਹਨਾਂ ਨੂੰ ਦਾ ਜਿਹੜਾ ਆਨਰੇਰੀ ਕੈਪਟਨ ਬਣਾਇਆ ਗਿਆ ਸਰ ਬਹਾਦਰ ਈਸ਼ਵਰ ਸਿੰਘ ਵਿਕਟੋਰੀਆ ਕ੍ਰਾਸ ਉਹਨਾਂ ਨੂੰ ਕਿਹਾ ਜਾਂਦਾ ਸੀ 30 ਦਸੰਬਰ 1895 ਨੂੰ ਉਹਨਾਂ ਜਨਮ ਲੈਣਵਾ ਦਾ ਤੇ 2 ਦਸੰਬਰ 1963 ਨੂੰ ਉਸ ਵਰਗਵਾਸ ਹੋਏ ਨੇ ਪ੍ਰਮਾਤ ਬਿਲਕੁਲ ਗੜਸ਼ੰਕਰ ਦੇ ਵਿੱਚ ਪਹਿਲੇ ਵਿਕਟੋਰੀਆ ਕ੍ਰਾਸ ਦੇ ਉਹ ਸਿੱਖ ਸਨ ਜੀ ਨਾ ਵਿਕਟੋਰੀਆ ਕ੍ਰਾਸ ਮਿਲਿਆ ਸੋ ਸਾਰਾ ਗੜੀ ਦੀ ਇਸ ਚੌਂਕੀ ਦੀ ਦਾਸ ਤਾਂ 21 ਜਣੇ 10000 ਫੌਜ 600 ਬੰਦਿਆਂ ਦੀਆਂ ਲਾਸ਼ਾਂ ਕਿਲੇ ਦੇ ਵਿੱਚ ਪਈਆਂ ਜਿਹੜੀਆਂ ਬਾਹਰ ਗੋਲੀਆਂ ਨਾਲ ਬੰਦੇ ਮਰੇ ਨੇ ਉਹਦੀ ਗੱਲ ਨਹੀਂ ਹੈ ਅੰਦਰ ਬਰੂਦ ਬਹੁਤ ਘੱਟ ਹੀ ਫਾਇਰ ਘੱਟ ਕਰਦੇ ਸਿਆਣਪ ਵਰਸਦੇ ਪਰ 600 ਤਾਂ ਸਾਰਾ ਗੜੀ ਦੀ ਚੌਂਕੀ ਦੇ ਵਿੱਚ ਪਏ ਸੀ ਵਿੱਚ ਪਛਤੋ 21 ਤੇ 600 ਲਾ ਲਓ ਵੀ ਨੂੰ 30 30 ਆਉਂਦੇ ਤਨ ਜਿਗਰਾ ਇਸ ਖਾਲਸੇ ਦਾ ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੀਆਂ ਕਾਲਸ ਸਾਰਾ ਗੜੀ ਦੇਸ ਦਿਨ ਦੇ ਬਾਰੇ ਸਿੰਘਾਂ ਦੀ ਸਿੱਖਾਂ ਦੀ ਸੁਰਬਮਤੀ ਦੀ ਕਹਾਣੀ ਜਿਹੜੀ ਇਸ ਤੇ ਫਿਲਮਾਂ ਹੁਣ ਬਣਨ ਪਰ ਫਿਲਮਾਂ ਬਣਨ ਤੋਂ ਬਾਅਦ ਫਿਲਮ ਦਾ ਰੁਖ ਕਿ ਹੋ ਹੋਇਆ ਹੈ ਰੱਬ ਜਾਣਦਾ ਬਲੈਕ ਪ੍ਰਿੰਸ ਦੀਆਂ ਗੱਲਾਂ ਤੁਸੀਂ ਹੁਣੇ ਵੇਖ ਕੇ ਹਟਿਓ ਕਮੀਆਂ ਜਿਹੜੀਆਂ ਬਹੁਤ ਜਦ ਇਤਿਹਾਸ ਦੇ ਪੱਖ ਤੋਂ ਰਹਿ ਜਾਂਦੀਆਂ ਨੇ ਫਿਲਮਾਂ ਚੱਲਦੀਆਂ ਨਹੀਂ ਬਲੈਕ ਪ੍ਰਿੰਸ ਦੇਖੇ ਖਾਲਸਾਈ ਫੌਜ ਦੇ ਖਾਲਸਾਈ ਰਾਜ ਦੇ ਅਸਰੀਏ ਤੇ ਖਾਲਸਾਈ ਰਾਜੇ ਦਾ ਪੁੱਤ ਜਿਹੜਾ ਹੈ ਉਹ ਦੀ ਗੱਲ ਕਰਦਾ ਇਹ ਚੀਜ਼ਾਂ ਜਦ ਅੱਖੋਂ ਪਰੋਖੇ ਕੀਤੀ ਜਾਂਦੀਆਂ ਨੇ ਉਹ ਗੱਲ ਸਿਰੇ ਨਹੀਂ ਚੜਦੀ ਕਿਉਂਕਿ ਲੋਕਾਂ ਨੂੰ ਪਤਾ ਹੈ ਹੁਣ ਉਹ ਕੀ ਗੱਲ ਕਰ ਰਿਹਾ ਤੇ ਰਾਇਲਟੀ ਉਹਦੇ ਵਿੱਚ ਨਹੀਂ ਦਿਖਦੀ ਇਹ ਕਮੀਆਂ ਕੁਝ ਜਿਹੜੀਆਂ ਉਹਦੇ ਵਿੱਚ ਰਹੀਆਂ ਕਿ ਜਦੋਂ ਵਾਪਸ ਆਉਣ ਦੀ ਗੱਲ ਕਰਦਾ ਉਹ ਆਪਣੇ ਖਾਲਸਾ ਰਾਜ ਦੀ ਮੈਂ ਉਹਦੇ ਚ ਦੱਸਣਾ ਕਿ ਸਾਡੇ ਨਾਲ ਪਿੰਡ ਪੈਂਦਾ ਜੀ ਅਤਵਾਲ ਜਿਹੜੇ ਤੁਸੀਂ ਨਾਂ ਲਿਆ ਭਗਵਾਨ ਬਾਬਾ ਭਗਵਾਨ ਸਿੰਘ ਤੇ ਬਾਬਾ ਆਨੰਦ ਸਿੰਘ ਉਹ ਉਸ ਪਿੰਡ ਦੇ ਸੀਗੇ ਤੇ ਉਹਨਾਂ ਦੀ ਘਾ ਵੀ ਪਿੰਡ ਥੋੜੀ ਜਿਹੀ ਬਣਾਈਓ ਮਟੀ ਨਹੀਂ ਹੋਣੀ ਚਾਹੀਦੀ ਮਤਲਬ ਚਲੋ ਕੋਈ ਵੀ ਟੇਕਦਾ ਪਰ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਜਿੱਦਾ ਸਾਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਪਤਾ ਕਿ ਸਾਰਾ ਘੜੀ ਕਦੋਂ ਹੋਈ ਸੀ ਜਦੋਂ ਅਸੀਂ ਕਾਲਜ ਕੂਲ ਚ ਪੜ੍ਹਦੇ ਸੀ ਸਕੂਲ ਦੀ ਨੰੱਕੇ ਜਾਂਦੇ ਹੁੰਦੇ ਸੀ ਤੇ ਹੁਣ ਵੀ ਜਿਹੜੇ ਬਾਬਾ ਭਗਵਾਨ ਸਿੰਘ ਸੀ ਉਹਨਾਂ ਦਾ ਪਰਿਵਾਰ ਆਪਣੇ ਇੱਥੇ ਬੈਂਕੂਵਰ ਡੈਲਟਾ ਤੇ ਹੁਣ ਉਹਨਾਂ ਨੇ ਪਿੰਡ ਅਤਵਾਲ ਮਤਲਬ ਨਮਾ ਗੁਰਦੁਆਰੇ ਦੀ ਬਿਲਡਿੰਗ ਪਲੇਟ ਲਾ ਕੇ ਸਾਰੇ ਜਿਹੜੇ ਅਤਵਾਲ ਦੇ ਸ਼ਹੀਦ ਆ ਉਹਨਾਂ ਦੇ ਨਾਮ ਲਿਖੇ ਹੋਏ ਆ ਤੇ ਨਾਲੇ ਇਸੇ ਪਿੰਡ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਸ਼ਹੀਦ ਹੋਏ ਕੁਛ ਉਹਨਾਂ ਸਾਰਿਆਂ ਦੇ ਨਾਮ ਉੱਥੇ ਲਿਖੇ ਹੋਏ ਆ ਜਿੱਦਾਂ ਤੇ ਉਹ ਸਾਨੂੰ ਮੇਰੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚੋਂ ਮੇਰਾ ਫਰੈਂਡ ਵੀ ਰਿਹਾ ਮੁੰਡਾ ਜਿੱਦਾਂ ਸ਼ਾਇਦ ਉਹਨਾਂ ਦੇ ਪਰਦਾਦਾ ਜੀ ਦੇ ਸ਼ਾਇਦ ਬਾਪ ਸੀਗੇ ਉਹ ਜਿਹੜੇ ਬਾਬਾ ਭਗਵਾਨ ਸਿੰਘ ਸੀ ਮੈਂ ਤਾਂ ਇੰਨੀ ਕੁ ਗੱਲ ਕਰਨੀ ਸੀ ਧੰਨਵਾਦ ਥੈਂਕ ਯੂ ਸੋ ਮਚ ਔਰ ਵੀ ਉਹਨਾਂ ਪਰਿਵਾਰਾਂ ਨੂੰ ਕੋਈ ਜਾਣਦਾ ਹੋਵੇ ਦਾ ਪਤਾ ਕਰੋ ਉਹ ਕਿੱਥੇ ਹੁਣ ਵੱਸਦੀ ਹੈ ਇਹ 797 ਦੇ ਬਜ਼ੁਰਗ ਨੇ ਸੌਰੀ 1897 ਦੇ ਸ਼ਹੀਦ ਹੋਏ ਉਸ ਤੋਂ ਬਾਅਦ ਸਾਲ ਦਾ ਸਮਾਂ ਦੂਸਰੀ ਪੀੜ੍ਹੀ ਹੁਣ ਹੋਏਗੀ ਉਹਨਾਂ ਦੀ ਜਾਂ ਤੀਸਰੀ ਪੀੜ੍ਹੀ ਹੋਏਗੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਸਰਾ ਜਸਵੀਰ ਸਿੰਘ ਜੀ ਲਾਈਨ ਨੰਬਰ 4 ਦੰਦਰਾਜ ਸਾਰੇ ਜਿਹੜੇ ਸ਼ੂਰਮੇ ਸੀ ਇਹਨਾਂ ਤੋਂ ਦੀ ਸਾਨੂੰ ਜਿਹੜੀ ਤੁਸੀਂ ਦਾਸਤਾ ਮੈਂ ਲਿਖਿਆ ਜਿਆ ਮੇਰੇ ਬਾਬਾ ਜੀ ਸੈਕੰਡ ਵਰਲਡ ਵਾਰ ਲੜੇ ਨੇ ਉਹ 36 ਰਜiment ਦੇ ਵਿੱਚ ਸਨ ਅੱਛਾ ਜੀ ਤੇ ਉਹ ਮੈਨੂੰ ਇਹ ਕਹਾਣੀ ਜਿਹੜੀ ਦਾਸਤਾ ਸੀ ਉਹ ਸੁਣਾਇਆ ਕਰਦੇ ਸੀ ਤੇ ਉਦੋਂ ਉਹ ਕਿਉਂਕਿ ਆਮ ਵਰਲਡ ਵਾਰ ਸੈਕੰਡ ਦੀਆਂ ਗੱਲਾਂ ਸੁਣਾਉਂਦੇ ਸੀ ਤੇ ਮੈਨੂੰ ਇਹਦੀ ਕੋਈ ਅਹਿਮੀਅਤ ਦਾ ਉਦੋਂ ਗਿਆਨ ਨਹੀਂ ਸੀ ਤੇ ਬਾਅਦ ਦੇ ਵਿੱਚ ਮੈਂ ਵੀ ਸਰਵਿਸ ਕੀਤੀ ਐ ਬੱਸ ਤੋਂ ਲੈਣ ਜਾਂਦੇ ਸੀ ਮੇਰਾ ਝੋਲਾ ਉਹਨਾਂ ਨੇ ਚੱਕਣਾ ਤੇ ਫਿਰ ਮੈਨੂੰ ਜਿਹੜੀ ਕੁਇਤ ਹੁੰਦੀ ਆ ਨਾ ਇੱਕ ਫੌਜ ਵਿੱਚ ਰਹੇ ਹੋਏ ਵਿਅਕਤੀ ਦੀ ਉਹਦੇ ਮੁਤਾਬਕ ਸਾਰੇ ਰਹਾ ਗੱਲਾਂ ਪੁੱਛਣੀਆਂ ਫਿਰ ਉਹਨਾਂ ਦੇ ਵਿੱਚ ਨਸੀਬ ਦੇਣੀਆਂ ਇਹ ਕੈਨੇਡਾ ਆਉਣ ਤੋਂ ਬਾਅਦ ਪਤਾ ਲੱਗਿਆ ਵੀ ਇਹ ਜਿਹੜੇ ਸ਼ਹੀਦ ਹੋਏ ਸੂਰਮੇ ਨੇ ਇਹ ਸੀ ਕੌਣ ਔਰ ਮੈਂ ਇੱਕ ਗੱਲ ਇਹਦੇ ਜਿਵੇਂ ਸਰਦਾਰ ਪਹਿਲਾਂ ਬੋਲ ਕੇ ਗਏ ਨੇ ਕਿ ਨਗਰ ਵਿੱਚ ਉਹਨਾਂ ਦੀ ਯਾਦਗਾਰ ਹੈ ਜਿਹੜੇ-ਜਿਹੜੇ ਵੀ ਨਗਰ ਦੇ ਸੂਰਮੇ ਹੋਏ ਨੇ ਦੇਖੋ ਤੁਸੀਂ ਇੱਕ ਨਾ ਥੋੜਾ ਜਿਹਾ ਨਹੋਰਾ ਮਾਰਿਆ ਕਿ ਬਾਤ ਨਹੀਂ ਪੁੱਛੀ ਉਹਦਾ ਕਾਰਨ ਸਰਦਾਰ ਜੀ ਗੁਲਾਮਾਂ ਦੇ ਬੂਟੇ ਦੀ ਥਾਂ ਕੋਈ ਨੀ ਹੁੰਦੀ ਗੁਲਾਮਾਂ ਦੇ ਬੂਟੇ ਦੀ ਛਾਂ ਵੀ ਕੋਈ ਨਹੀਂ ਹੁੰਦੀ ਜਦੋਂ ਮੁੱਲਣਾ ਨਾ ਸਰਕਾਰੇ ਖਾਲਸਾ ਚ ਪੈਣਾ ਤੇ ਪਹਿਲਾਂ ਵੀ ਜਦੋਂ ਮੁੱਲ ਪੈਂਦਾ ਸੀ ਸਰਕਾਰੇ ਖਾਲਸਾ ਚ ਹੀ ਪੈਂਦਾ ਸੀ ਚਾਹੇ ਉਹ ਸਰਕਾਰ ਬੰਦਾ ਸਿੰਘ ਬਹਾਦਰ ਪਾਉਂਦੀ ਸੀ ਜਾਂ ਚਲੰਗੀ ਵਾਲਾ ਪਾਦਸ਼ਾਹ ਆਪਣੀ ਸਰਕਾਰ ਵਿੱਚ ਮੁੱਲ ਪਾਉਂਦਾ ਸੀ ਸੂਰਮਿਆਂ ਦੇ ਇਹ ਜਾਂ ਬਾਦ ਵਿੱਚ ਸਰਕਾਰੇ ਖਾਲਸਾ ਮੁੱਲ ਪਾਉਂਦੀ ਰਹੀ ਹੈ ਇਹ ਜਿੰਨੀ ਦੇਰ ਤੱਕ ਸਿੱਖ ਕੌਮ ਦੀ ਮਾਨਸਿਕਤਾ ਗੁਲਾਮ ਰਹੂਗੀ ਓਨੀ ਦੇਰ ਤੱਕ ਸੂਰਮੇ ਸ਼ਹੀਦੀਆਂ ਤਾਂ ਦੇਣਗੇ ਪਰ ਮੁੱਲ ਨਹੀਂ ਜੇ ਪਹਿਣਾ ਸੋ ਨਗਰਨ ਵਾਲੇ ਯੋਜੋ ਜਿਨ੍ਹਾਂ ਦੇ ਘਰਾਂ ਦੇ ਸ਼ਹੀਦ ਹੋਏ ਨੇ ਉਹ ਚੇਚੇ ਤੌਰ ਤੇ ਤੁਹਾ ਮੈਂ ਬੇਨਤੀ ਕਰ ਲਈ ਸੀ ਔਰ ਤੁਸੀਂ ਇਸ ਦਿਨ ਨੂੰ ਉਜਾਗਰ ਕੀਤਾ ਹੈ ਜਰੂਰ ਕਹਾ ਹੋਊਗੀ ਕਿਉਂਕਿ ਸਚਾਈ ਜਿਹੜੀ ਆ ਉਹ ਦੱਬੀ ਨਹੀਂ ਰਹਿੰਦੀ ਹੁੰਦੀ ਇਹਨੂੰ ਸ਼ਮਾਂ ਲੱਗਦਾ ਔਰ ਇੱਕ ਗੱਲ ਸਿੱਖ ਨੇ ਜਦੋਂ ਸ਼ਹੀਦੀ ਦਿੱਤੀ ਹੈ ਉਦੋਂ ਗੈਰਤ ਨੋਂ ਤੇਰੀ ਹੈ ਇਹ ਗੈਰਤ ਮਨੁੱਖ ਚ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਗੁਰੂ ਦੇ ਨਾਲ ਲੱਗਦਾ ਹੈ ਗੁਰੂ ਸਾਡਾ ਗਿਆਨ ਆ ਆਪਾਂ ਟੋਲਿਆਂ ਚੋਂ ਨਿਕਲ ਕੇ ਸੱਚੇ ਗਿਆਨ ਨਾਲ ਜੁੜੀਏ ਸਾਡੇ ਵਿੱਚ ਮਨੁੱਖਤਾ ਇਨਸਾਨੀਅਤ ਧਰਮ ਕੌਮ ਤੇ ਆਪਣੀ ਭਾਈਚਾਰੇ ਦੇ ਖਾਤਰ ਪਿਆਰ ਸਦਭਾਵਨਾ ਕ੍ਰੀਏਟ ਕਰੀਏ ਜਿਹੜੇ ਦੇ ਨਾਲ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮਤ ਦੇਣ ਮਿਹਰਬਾਨੀ ਸਰਦਾਰ ਜੀ ਧੰਨਵਾਦ ਜੀ ਸਰਦਾਰ ਸਾਹਿਬ ਸਿੰਘ ਲਾਈਨ ਨੰਬਰ 2 ਗੱਲ ਸਾਹਿਬ ਸਤਿ ਸ਼ਕਲ ਜੀ ਗੱਲ ਹਵਲਦਾਰੀ ਰਿਸਰਸਿੰਗ ਜਿਹੜਾ ਉਹਦਾ ਪਿੰਡ ਦਾ ਛੋੜਣਾ ਦੇ ਕੋਲੇ ਅੱਛਾ ਜੀ ਤੇ ਇਹ 1897 ਦਾ ਜਦੋਂ 100 ਸਾਲਾ ਮਨਾਇਆ ਪਤਾ ਸੀ ਕਿ ਜਾਂਦੇ ਹੁੰਦੇ ਸੀ ਕਿਉਂ ਕਾਰਨ ਤੇ ਉਦੋਂ ਦਾ ਸਾਡੇ ਇਹਨਾਂ ਦਾ ਹਵਲਦਾਰੀ ਰਿਸਰਸਿੰਗ ਦਾ ਬਹੁਤ ਲੱਗਿਆ ਹੋਇਆ ਛੋੜਣਾ ਪਿੰਡ ਦੇ ਵਿੱਚ ਉਹ ਉਸ ਗਾਹਾਂ ਉਹ ਉਹ ਪਰਿਵਾਰ ਦੇ ਵਿੱਚੋਂ ਕੋਈ ਹੁਣ ਬੰਦਾ ਨਹੀਂ ਪਤਾ ਆਪਾਂ ਨੂੰ ਪਰਿਵਾਰ ਦੇ ਵਿੱਚੋਂ ਜੀ ਇੱਕ ਤੇ ਉਹਨਾਂ ਦੇ ਘਰ ਬੱਚੇ ਗੋਦ ਲਿਆ ਵੈ ਇੱਕ ਅੱਛਾ ਜੀ ਹਾਂ ਤੇ ਉਹ ਰਹਿੰਦਾ ਪਿੰਡ ਦੇ ਵਿਚਾਲੇ ਸਾਡੇ ਬਣੀ ਹੋਈ ਜਗਾ ਛੋੜਾਂ ਦੇ ਹੂੰ ਤੇ ਨੇ ਆ ਕੇ ਉਹ ਬਣਵਾਈ ਸੀ 99 ਦੇ ਧੰਵਾਦ ਜੀ ਸਵਾਤ ਸਾਹਿਬ ਅਸੀਂ ਖਾਲਸਾ ਜੀ ਆਲੇ ਵਰ ਤੋਂ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਦੀ ਜਿੱਫਤ ਹੈ ਜੀ ਹੰਜੀ ਬਈ ਗੁਰੂ ਹਰਗੋਬਿੰਦ ਸਾਹਿਬ ਤੋਂ ਮੁਗਲਾਂ ਨਾਲ ਲੜਾਈਆਂ ਉਹ ਤੋਂ ਬਾਅਦ ਦਸਵੇਂ ਸਿੰਘ ਸੂਰਮਿਆਂ ਦੀਆਂ ਉਹ ਤੋਂ ਮਹਾਰਾਜਾ ਰਣਜੀਤ ਸਿੰਘ ਘੋੜਾ ਦੀਆਂ ਇੱਕ ਫੌਜੀਆਂ ਨੇ ਬੜੇ-ਬੜੇ ਮਾਰ ਕੇ ਮਾਰੇ ਔਰ ਜਿਹੜੀ ਸਾਰਾ ਗੜੀ ਦੀ 21 ਫੌਜੀਆਂ ਦੀ ਸ਼ਹੀਦੀ ਹੈ ਇਹ ਸਨਹਿਰੀ ਅੱਖਰਾਂ 'ਚ ਲਿਖੀ ਹੈ ਲਿਖੀ ਰਹੂਗੀ ਔਰ ਇੱਕ ਲਾ ਮਿਸਾਲ ਮੁਕਾਬਲਾ ਸੀਗਾ ਔਰ ਚਮਕੌਰ ਦੀ ਗੜੀ ਤੇ ਵੀ ਇਹੀ ਕੁਝ ਹੋਇਆ ਸੀ ਤੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਜਿਹਨਾਂ ਲੋਕਾਂ ਨੇ ਆਜ਼ਾਦੀ ਵਿੱਚ ਹਿੱਸਾ ਪਾਇਆ ਸੈਲੂਲਰ ਜੇਲ੍ਹ ਦੇ ਵਿੱਚ ਬੜੀ ਭਾਰੀ ਗਿਣਤੀ ਸਿੱਖਾਂ ਦਾ ਨਾਂ ਜਿਹੜਾ ਉੱਥੇ ਵੀ ਅਜੇ ਵੀ ਲਿਖਿਆ لیکن ਉਹਨਾਂ ਨੂੰ ਅੱਜ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਜਿਹੜੇ ਮਾਫੀ ਮੰਗ ਕੇ ਆਏ ਨੇ ਨਾ ਉਹਨਾਂ ਦਾ ਨਾਂ ਜਿਹੜਾ ਉਹ ਸਾਹਮਣੇ ਕਰ ਰਹੀ ਹੈ ਸਰਕਾਰ ਔਰ ਮਹਾਰਾਜਾ ਪ੍ਰਤਾਪ ਨੇ ਚਲੋ ਅਸੀਂ ਉਹਨੂੰ ਸਲੂਟ ਕਰਦੇ ਹਾਂ ਅਕਬਰ ਦੇ ਨਾਲ ਆਖਰੀ ਦਮ ਤੱਕ ਲੜਾਈ ਲੜੀ ਟੀਪੂ ਸੁਲਤਾਨ ਅੰਗਰੇਜ਼ਾਂ ਦੇ ਖਿਲਾਫ ਆਖਰੀ ਦਮ ਤੱਕ ਲੜਿਆ ਇਸੇ ਤਰ੍ਹਾਂ ਹੀ ਜੇ ਕਹਿ ਲਈਏ ਤੇ ਮਾਰਾਣਾ ਪ੍ਰਤਾਪ ਦਾ ਜਿਹੜਾ ਬੁੱਤ ਹਸ਼ਿਆਰਪੁਰ ਜੇ ਆਪਾਂ ਆਪਣੇ ਪਠਾਨਕੋਟ ਚ ਲਾਇਆ ਗਿਆ ਮੈਂ ਪੁੱਛਣਾ ਸਾਡੀ ਸਿੱਖ ਲੀਡਰਸ਼ਿਪ ਨੂੰ ਕਿ ਸਰਦਾਰ ਹਰੀ ਸਿੰਘ ਨਲਵਾ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਬੁੱਤ ਜਾ ਕੇ ਅੰਧੌਰ ਵਿੱਚ ਵੀ ਲੱਗਾ ਹੈ ਵਿੱਚ ਵੀ ਲੱਗਾ ਜਾ ਕੇ ਜਾਂ ਮੇਰੇ ਕਹਿਣ ਦਾ ਮਤਲਬ ਬਿਹਾਰ ਜੀ ਵੀ ਕਿਤੇ ਲੱਗਾ ਤੇ ਹੁਣ ਸਵਾਲ ਇਸ ਚੀਜ਼ ਹੈ ਕਿ ਸਾਡੀ ਸ਼ਹੀਦਿਆਂ ਨੂੰ ਸਾਡੀਆਂ ਕੁਰਬਾਨੀਆਂ ਨੂੰ ਲੁਕੋਇਆ ਜਾ ਰਿਹਾ ਹੈ ਔਰ ਸਾਡੀ ਲੀਡਰਸ਼ਿਪ ਆਪਰੇ ਆਪ ਨੂੰ ਜਿਹੜੇ ਆਗੂ ਸਮਝਦੇ ਆ ਚਾਹੇ ਉਹ ਬਣਾਉਟੀ ਅਕਾਲੀ ਦਲ ਹੈ ਜਿਹੜਾ ਅਸਲੀ ਅਕਾਲੀ ਦਲ ਜਿਹੜੀ ਆ ਬਣਾਉਟੀ ਅਕਾਲੀ ਦਲ ਹੈ ਜਿਹੜਾ ਇਹਨੇ ਕਦੇ ਮੰਗ ਨਹੀਂ ਕੀਤੀ ਇਸ ਚੀਜ਼ ਦੀ ਔਰ ਮੈਂ ਇਹ ਕਹਿਣ ਜਾਉਨਾ ਕਿ ਸਾਡਾ ਕੋਈ ਸ਼ਾਰਟ ਵੇਵ ਰੇਡੀਓ ਸਟੇਸ਼ਨ ਵੀ ਹੈ ਨਹੀਂ ਜਿਹਦੇ ਤੇ ਜਿਹੜੇ ਪੂਰੀ ਗਲੋਬ ਨੂੰ ਕਵਰ ਕਰ ਸਕੇ ਸਾ ਇਸੇ ਰੀਅਲ ਸਟੇਸ਼ਨ ਲਾਇਆ ਜਾ ਸਕਦਾ ਹੈ ਸਾਊਥ ਅਫਰੀਕਾ ਚ ਲਾਇਆ ਜਾ ਸਕਦਾ ਮਿਡਲ ਈਸਟ ਵਿੱਚ ਲਾਇਆ ਜਾ ਸਕਦਾ ਇੰਗਲੈਂਡ ਦੇ ਉੱਪਰ ਆਇਰਲੈਂਡ ਆਪਣੇ ਲਾਇਆ ਜਾ ਸਕਦਾ ਆਸਟ੍ਰੇਲੀਆ ਚ ਲਾਇਆ ਜਾ ਸਕਦਾ ਤੇ ਇਹਨੂੰ ਟਾਈਮ ਟਾਈਮ ਤੇ ਜਿਹੜੀ ਸਿੱਖ ਇਸਟਰੀ ਹੈ ਜਾਂ ਦੁਨੀਆ ਦੀ ਖਬਰਾਂ ਜਿਹੜੀ ਜਿੱਥੇ ਸਾਡੀ ਜਿਹੜੀ ਸਮਝੋ ਬੜੀ ਵੱਡੀ ਦੇਣ ਹੈ ਇੰਡੀਆ ਦੀ ਕੁਰਬਾਨੀ ਦੇ ਇੰਡੀਆ ਦੀ ਆਜ਼ਾਦੀ ਲੈਣ ਵਾਸਤੇ ਉਹਦਾ ਕਦੇ ਪ੍ਰਚਾਰ ਨਹੀਂ ਕੀਤਾ ਗਿਆ ਇਹ ਠੀਕ ਹੈ ਕਿ ਤੁਸੀਂ ਬੜਾ ਯਤਨ ਕਰਦੇ ਹੋ ਇਹ ਸ਼ਾਰਟ ਵੇਵ ਸਟੇਸ਼ਨ ਜਿਹੜਾ ਐਮ ਵਲ ਦੇ ਉਹਨੇ ਇਹਦੀ ਰੇਂਜ ਬੜੀ ਘੱਟ ਹੈ ਠੀਕ ਇੰਟਰਨੈਟ ਤੇ ਲੋਕ ਬਹੁਤ ਦੂਰ ਤੱਕ ਸੁਣਦੇ ਆ ਪਰ ਉਹੀ ਸੁਣਨਗੇ ਨਾ ਜਿਨ੍ਹਾਂ ਕੋਈ ਇੰਟਰਨੈਟ ਦੀ ਸਹੂਲਤ ਹੈ ਜਿਸ ਜਿਹੜੇ ਲੋਕ ਟਰਾਂਜ਼ਿਸਟਰ ਲਈ ਬੈਠੇ ਆ ਜੇ ਸ਼ਾਰਟ ਰੇਡੀਓ ਸਟੇਸ਼ਨ ਹੋਵੇ ਤਾਂ ਥਰੂਆਊਟ ਵਰਲਡ ਜਿਹੜਾ ਉਹ ਕਵਰ ਹੋ ਸਕਦਾ ਇੱਕ ਗੱਲ ਮੈਂ ਹੋਰ ਯਾਦ ਕਰਾਉਣਾ ਕਿ ਸਾਡਿਆਂ ਦਾ ਚਲੋ ਤਿੰਨ ਪੀੜੀਆਂ ਮਿਲਟਰੀ ਸੀ ਲੱਗੀਆਂ ਨੇ ਔਰ ਰਿਸ਼ਤੇਦਾਰ ਵੀ ਬੜੇ ਬੜੇ ਅਫਸਰ ਰਹੇ ਨੇ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਟਲੀ ਦੇ ਵਿੱਚ ਸੀਗੇ ਫੌਜੀ ਉਹ ਮੋਰਚੇ ਤੇ ਜਾ ਕੇ ਅੱਜ ਤੱਕ ਵੀ ਉਹਨਾਂ ਲੋਕਾਂ ਨੂੰ ਪਤਾ ਹੈ ਉਹਨਾਂ ਦੇ ਜਿਹੜੀ ਕਾਟਰੀ ਖਤਮ ਹੋ ਗਈ ਜਿਹੜੀ ਗੋਲੀਆਂ ਖਤਮ ਹੋ ਗਈ ਹੈ ਉਹਨਾਂ ਨੇ ਆਪਣੀਆਂ ਰਾਈਫਲ ਮਦਦ ਵਾਲੇ ਪਾਸਿਓਂ ਫੜ ਕੇ ਜੇ ਉਹ ਮਟਾਲਾ ਪਾਸਾ ਉਹਨਾਂ ਨੇ ਮੋਰਾ ਚ ਮਾਰਿਆ ਆਪਣੇ ਇਟਾਲੀਅਨ ਤੇ ਜਰਮਨੀ ਦੇ ਤਾਂ ਉਹ ਮੂੜੇ ਲਾਲੇ ਤੇ ਉਹ ਵੀ ਬਹੁਤ ਲੋਕਾਂ ਨੂੰ ਪੈਂਦੀ ਬਰਫ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਨ੍ਹਾਂ ਨੇ ਉਹ ਕਬਾਇਲੀਆਂ ਨੂੰ ਰੋਕਿਆ ਉਹਨਾਂ ਦੇ ਉਹਨਾਂ ਦੀ ਲੱਤਾਂ ਕੱਟੀਆਂ ਗਈਆਂ ਕੀ ਉਹਨਾਂ ਪਰਿਵਾਰਾਂ ਦਾ ਮੁੱਲ ਕਦੇ ਪਾਇਆ ਸਰਕਾਰ ਨੇ ਕਦੇ ਲਿਆ ਇਲੈਕਟ੍ਰੋਨਿਕਸ মিডিਆ ਇੰਡੀਆ ਦਾ ਇਨਾ ਹੈਗਾ ਕਦੇ ਉਹਨਾਂ ਦਾ ਨਾਮ ਲਿਆ ਕਦੇ ਸਾਡੇ ਸਿੱਖ ਲੀਡਰਾਂ ਨੇ ਕਿਹਾ ਉਹਨਾਂ ਨੂੰ ਵੀ ਸਾਨੂੰ ਪ੍ਰਚਾਰ ਉਹ ਜਾਂ ਕੋਈ ਮੇਰੇ ਕਹਿਣਾ ਮਤਲਬ ਕਰੇ ਇਤਰਾਜ਼ ਕੀਤਾ ਜਾਂ ਕਦੇ ਤੁਸੀਂ ਯਤਨ ਕਰ ਰਹੇ ਹੋ ਤੁਹਾਡੇ ਯਤਨ ਤੇ ਸ਼ਾਬਾਸ਼ ਹੈ ਵੈਜੀ ਕਖਲਸਾ ਵੈਜੀ ਫਤਿਹ ਜੀ ਆਪੋਲ ਜੀ ਲਾਈਨ ਸਸਿਕਲ ਜੀ ਕੋਈ ਮੈਂ ਕਹਿੰਦਾ ਵਸ ਜਿਹੜੇ ਆਪਣੇ ਸਿੰਘ ਸੂਰਮੇ ਹੈਗੇ ਚਾਹੇ ਉਹਨਾਂ ਨੇ ਕਿਸੇ ਰਿਲੀਜੀਅਸ ਜਿਹੜੀ ਸੁਪਰ ਪਾਵਰ ਨੂੰ ਉਹਨਾਂ ਨੇ ਚੈਲੰਜ ਕੀਤਾ ਚਾਹੇ ਕੋਈ ਇਕਨੋਮਿਕ ਬੇਸ ਜਿਹੜੀ ਗੱਲਾਂ ਵਧਾ ਕਰਨੀਆਂ ਤੇ ਗਾਣੇ ਗਾਉਣੇ ਬਹੁਤ ਸੌਖੇ ਪਰ ਉਹ ਜਿਹੜਾ ਸਮਾਜ ਸਿਰਜਣਾ ਉਹ ਉਹ ਅੱਜ ਕੱਲ ਆਪਾਂ ਕਿੰਨੇ ਕੋਈ ਐਸਜੀਪੀ ਐਸਜੀਪੀਸੀ ਆ ਜਾਂ ਬਾਦਲ ਹੋਣੀਆਂ ਜੋ ਉਹਨਾਂ ਨੇ ਕਿਹਾ ਵੀ ਆਪਣੀ ਬੜੀ ਜਿਹੜੇ ਪਾਰਕਾਂ 'ਚ ਬੈਠੀ ਜਾਂ 12 ਕਲਬਾਂ 'ਚ ਕੁਛ ਆਪਾਂ ਨੂੰ ਆਪਾਂ ਪ੍ਰੋਸ ਰਹੇ ਸਾਡੇ ਸਮਾਜ ਦਾ ਹਿੱਸਾ ਨਹੀਂ ਇਹ ਸਾਡੇ ਧਰਮ ਦਾ ਹਿੱਸਾ ਨਹੀਂ ਫਿਰ ਆਪਾਂ ਉਹਨਾਂ ਦੀ ਕੋਈ سپورਟ ਨਹੀਂ ਕਰਦੇ ਸੋ ਆਪਾਂ ਦੀ ਆਪਾਂ ਨੂੰ ਕਹਿੰਦੇ ਤੁਸੀਂ ਹੋਟਲ ਬਣਾਓ ਜੀ ਅਸੀਂ ਆਪਦੀਆਂ ਜੇਬਾਂ ਭਰਦੇ ਤੁਸੀਂ ਆਪਦੀਆਂ ਜੇਬਾਂ 'ਤੇ ਗਾਣਿਆਂ ਦੀ ਜਾਂ ਹੋਰ ਸਿਰ ਕੁਛ ਕਰਕੇ ਅੱਜ ਕੱਲ ਆਪਾਂ ਜੇਲਾ ਨਹੀਂ ਭਰਦੇ ਵੀ ਜੇਬਾਂ ਜਾਦਾ ਭਰਦੇ ਅੱਜ ਕੱਲ ਮੇਰੇ ਖਿਆਲ 'ਚ ਅੱਗੇ ਆਪਣੇ ਕਿੰਦੇ ਸੀ ਆਪਣਾ ਜੋ ਕਿ ਐਂਟਰਟੇਨਮੈਂਟ ਜਾਂ ਕਿ ਮੀਡੀਆ ਹੈ ਆਪਾਂ ਨੂੰ ਸਮਾਜ ਆਪਣਾ ਖਰਾਬ ਕਰ ਰਿਹਾ ਵੀ ਆਪਾਂ ਜਿੱਲਾਂ ਪਰ ਮਿੰਟ ਹੋਏ ਨੇ ਮੈਂ ਇਸ ਗੱਲ ਤੇ ਜ਼ੋਰ ਕਿਉਂ ਕਰਦਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਅਸੀਂ ਭੁੱਲੀ ਬੈਠੇ ਸਾਡਾ ਮਾਣ ਨੇ ਚਾਹੇ ਉਹ ਫੌਜ ਦੇ ਵਿੱਚੇ ਕੰਮ ਕਰਦੇ ਸੀ ਚਾਹੇ ਉਹ ਸਰਵਿਸ ਕਰਦੇ ਸੀ ਗੋਰਿਆਂ ਦੇ ਕੋਲ ਪਰ ਹੈ ਤਾਂ ਸਿੱਖ ਸੰਨ ਮਾੜਾ ਕੋਈ ਹੁੰਦਾ ਕੰਦਾ ਟੱਪ ਕੇ ਸਾਰਾ ਗੜੀ ਦੀਆਂ ਉਹਨਾਂ ਨੇ ਪਹਾੜਾਂ ਦੀਆਂ ਕੁੰਦਰਾ ਚ ਜਾ ਬੜਨਾ ਸੀ ਮਹਿਸੂਸ ਕਰ ਸਕਦੇ ਹੋ ਤੁਸੀਂ ਜਣੇ ਅੰਦਰ ਉਹ ਕਹਿੰਦੇ ਸਾਡੇ ਗੁਰੂ ਨੇ ਨਹੀਂ ਸਿਖਾਇਆ ਪਿੱਟ ਕਰਨੀ ਆਖਰੀ ਜਿਹੜਾ ਉਪਕਰਨ ਤੇ ਖੜਾ ਹੈ ਈਲੀਓਗ੍ਰਾਫਿਕ ਕਰ ਰਿਹਾ ਉਸਨੇ ਲਾਸਟ ਸਨੇਹਾ ਲਾਕਹਾਈਟ ਜਿਹੜਾ ਭੇਜਿਆ ਉਹਨੂੰ ਉਸ ਨੂੰ ਪੜ ਕੇ ਉਸ ਨੂੰ ਸੋਚ ਕੇ ਤਾਂ ਨਿਕਲਦੇ ਜਾ ਉਸ ਨੇ ਪੈਕ ਕਰਨ ਲੱਗਿਆ ਪੈਕ ਕਰਨ ਤੋਂ ਬਾਅਦ ਮੈਂ 20 ਦੇ ਨਾਲ ਰਲ ਜਾਣਾ ਬਹੁਤ ਵੱਡੀਆਂ ਗੱਲਾਂ ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਪਰਮਵੀਰ ਚੱਕਰ ਸਾਡੇ ਫੌਜ ਦੇ ਸਪੈਸਲਾਰਾਂ ਨੂੰ ਮਿਲੇ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਉਹ ਕਿਤੇ ਛੋਟੀ ਮੋਟੀ ਥੋੜਾ ਗੱਲ ਹੈ ਨੇ ਜਹਾਜ਼ ਜਿਉਂ ਸ਼੍ਰੀਨਗਰ ਤੋਂ ਉਡਾਇਆ ਪਿੱਛੇ ਜਾਵੜੇ ਉਹ ਸੈਵਰ ਜੈਟਾਂ ਦੇ ਤੇ ਕੀ ਕੀ ਕਹਾਣੀਆਂ ਇਹ ਇਹ ਯਾਦ ਕਰਨ ਵਾਲੀਆਂ ਗੱਲਾਂ ਦੁਸ਼ਮਣ ਬਹੁਤ ਵੱਡੀ ਗਿਣਤੀ 'ਚ ਉਹਨੂੰ ਵੇਖ ਕੇ ਭੱਜ ਜਾਂਦੇ ਨੇ ਸਰ ਆਈਸ਼ਰ ਸਿੰਘ ਪਨਾਮ ਉਹਨਾਂ ਨੇ ਲੂਇਸ ਗਨ ਉਹਨਾਂ ਦੇ ਕੋਲ ਪੂਰੇ ਜ਼ਖਮੀ ਨੇ ਪਾਣੀ ਲਿਆ ਲਿਆ ਕੇ ਲਾ ਰਹੇ ਨੇ ਦੁਆਰਾ ਪਟੀਆਂ ਕਰਕੇ ਪਿੱਛੇ ਇੰਚਾਰਜ ਕਰ ਰਿਹਾ ਪਿੱਛੇ ਆ ਜਾਏ ਤੇ ਉਸ ਵਾਰ ਪਟੀਆਂ ਕਰਾ ਕੇ ਦੁਆਰਾ ਘਰਾਂ ਦੇ ਵਿੱਚ ਨੇ ਉਹਨਾਂ ਦੇ ਤਮਗੇ ਘਰੇ ਪਏ ਨੇ ਬਾਬਾ ਜੀ ਵਰਲਡ ਵਾਰ ਦੂਸਰੀ ਦੇ ਵਿੱਚ ਗਏ ਨੇ ਉਹਨਾਂ ਦੇ ਤਮਗੇ ਘਰ ਪਏ ਨੇ ਪਰ ਪਤਾ ਹੀ ਨਹੀਂ ਸਾਰਾ ਕੁਝ ਗਾਂ ਤੋਂ ਗਾਂ ਉਹ ਗੱਲਾਂ ਬਸਰੇ ਬਗਦਾਦ ਉਹ ਕਹਿੰਦੇ ਅਸੀਂ ਜਾ ਕੇ ਆਏ ਆ ਜੀ ਕਿੱਥੇ ਲੁਧਿਆਣਾ ਜ਼ਿਲ੍ਹਾ ਕਿਤੇ ਬਸਰਾ ਬਗਦਾਦ ਉੱਥੇ ਦੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਤੇ ਬਜ਼ੁਰਗਾਂ ਨੂੰ ਤੇ ਬਹੁਤ ਵੱਡੀਆਂ ਇਹ ਗੱਲਾਂ ਹਨ ਸੰਦੂਖਾਂ ਤੇ ਨੌ ਲਿਖੇ ਹੋਏ ਉਹਨਾਂ ਦੇ ਟਰੰਕਾਂ ਤੇ ਉਸ ਤਰ੍ਹਾਂ ਹੀ ਸਾਂਭੇ ਪਏ ਨੇ ਇਹ ਇਹ ਜਿਹੜੇ ਪ੍ਰਕਾਰ ਨੇ ਇਹ ਸੀ ਕਿ ਸਾਨੂੰ ਹੀ ਸੀ ਪਤਾ ਪਰਿਵਾਰਾਂ ਨੂੰ ਹੀ ਪਤਾ ਸੀ ਬਾਹਰੋਂ ਕੀ ਅਸੀਂ ਲੈਣਾ ਸੀ ਸਿੰਘ ਜੀ ਲਾਈਨ ਨੰਬਰ 2 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਵਾ ਗੜੀ ਦੀ ਯਾਦ ਕਰਦੇ ਆਂ ਤੇ ਉਹਦੇ ਬਾਰੇ ਵਿਚਾਰ ਚਰਚਾ ਜੋ ਹੋ ਰਹੀ ਆ ਉੱਥੇ ਜਿਹੜੇ ਵੀ ਸਿੱਖ ਸ਼ਹੀਦ ਹੋਏ ਆ ਉਹਨਾਂ ਦੀ ਬਹਾਦਰੀ ਨੂੰ ਤੇ ਉਹਨਾਂ ਦੀ ਕੁਰਬਾਨੀ ਨੂ ਸਲਾਮ ਆ ਬਹੁਤ ਬਹੁਤ ਤੇ ਸਿੱਖ ਜਦੋਂ ਦਾ ਪੈਦਾ ਹੋਇਆ ਜਦੋਂ ਜਦੋਂ ਵੀ ਇਹਨੇ ਕੁਰਬਾਨੀ ਦਿੱਤੀ ਆ ਚਾਹੇ ਅੰਗਰੇਜ਼ਾਂ ਦੀਆਂ ਲੜਾਈਆਂ ਦਿੱਤੀ ਆ ਚਾਹੇ ਆਪਣੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ ਚਾਹੇ ਹੋਰ ਕਿਸੇ ਤੇ ਵੀ ਕਿਸੇ ਕੌਮ ਤੇ ਵੀ ਭੀੜ ਪਈ ਆ ਉਹਨਾਂ ਲਈ ਕੁਰਬਾਨੀ ਦਿੱਤੀ ਆ ਤੇ ਅੱਜ ਪੈਦਾ ਹੋਣ ਕੇ ਅੱਜ ਤੱਕ ਜਿੰਨੇ ਵੀ ਸਿੱਖ ਸ਼ਹੀਦ ਹੋਏ ਆ ਸਾਰਿਆਂ ਦਾ ਤੇ ਦੂਜੀ ਗੱਲ ਇੱਕ ਜ਼ਰੂਰ ਰੱਖਤੀ ਆ ਕਿ ਸਿੱਖ ਜਦੋਂ ਕਿਸੇ ਲਈ ਸ਼ਹੀਦੀ ਦਿੰਦਾ ਆ ਤੇ ਉਹਦੇ ਨਾਂ ਵੀ ਉਕਰੇ ਜਾਂਦੇ ਆ ਤੇ ਉਹਨੂੰ ਯਾਦ ਵੀ ਕੀਤਾ ਜਾਂਦਾ ਆ ਪਰ ਸਿੱਖ ਜਦੋਂ ਵੀ ਆਪਣੇ ਕਿਸੇ ਕੌਮ ਲਈ ਕੋਈ ਸ਼ਹੀਦੀ ਦਿੰਦਾ ਜਾਪੜੀਆਂ ਮੰਗਾ ਲਈ ਸ਼ਹੀਦੀ ਦਿੰਦਾ ਆ ਓਦੋ ਇਹਨੂੰ ਸਾਰੇ ਰਲ ਮਿਲ ਕੇ ਅੱਤਵਾਦੀ ਖਾੜਖੂ ਕਹਿੰਦੇ ਆ ਤੇ ਇਹਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਆ ਤੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਤੇ ਇਹਦੇ ਦਾਲ ਦੇ ਮਾੜੀ ਕੌਮ ਕੋਈ ਨੇ ਸੋ ਇਹਦਾ ਵੀ ਬਹਾਦਰੀ ਨੂੰ ਫੇਰ ਸਾਫ਼ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਸਾ ਥੈਂਕ ਯੂ ਫੇਸਬੁੱਕ ਤੇ ਮੈਂ ਪੰਜਾਬ ਆਰਡਰ ਕ੍ਰਾਈਸਿਸ ਸਰਦਾਰ ਬਦੇਸ਼ੇ ਵੱਲੋਂ ਇੱਕ ਉਹਨਾਂ ਨੇ ਆਰਟੀਕਲ ਭੇਜਿਆ ਮੈਂ ਉਹਨੂੰ ਸ਼ੇਅਰ ਕੀਤਾ ਸਾਰਾ ਗੜੀ ਦੀ ਲੜਾਈ ਦੇ ਵਿੱਚ ਝੋੜੜਾ ਪਿੰਡ ਦੀ ਉਹ ਹਦਾਸਤਾ ਜਿਹੜੀ ਸੁਰਾਰੀਸ਼ਰ ਦੇ ਵਿੱਚ ਜਰਨੈਲ ਹਰੀ ਸਿੰਘ ਨਲਵਾ ਸ਼ਹੀਦ ਹੁੰਦੇ ਨੇ ਜਬਰੌਦ ਤੇ 60 ਸਾਲਾਂ ਬਾਅਦ ਸਾਰਾ ਗੜੀ ਦੀ ਇਹ ਗੜੀ ਦੀ ਗੱਲ ਹੈ ਤੇ ਉਸ ਤੋਂ 32 ਸਾਲ ਬਾਅਦ 1925 ਦੇ ਵਿੱਚ ਇਸ ਹੈਦਰੀ ਕਚ ਦੇ ਰੀਚ ਬੀ ਵਜੀਰਪੁਰਸਤਾਨ ਦੀ ਕੈਂਪੇਨ ਦੇ ਵਿੱਚ ਸਰਾਰ ਈਸ਼ਰ ਸਿੰਘ ਗੋਣੀ ਨਾਮ ਹੋਣੀ ਇਸ ਖਿੱਤੇ ਚ ਲੜਿਆ ਕੱਲ ਦੀਆਂ ਗੱਲਾਂ ਕੌਮਪ ਆ ਹਰਦੀਪ ਸਿੰਘ ਜੀ ਲਾਈਨ ਨੰਬਰ 3 ਬਾਈ ਜੀ ਮੈਂ ਥੋੜਾ ਜਿਹਾ ਇਹ ਕਿ ਪਿੰਡ ਸੋਡਾ ਰੈਕੋਟਾ ਤੋਂ 12 ਕਿਲੋਮੀਟਰਾਂ ਤੇ ਜਗਰਾਉਂ ਤੋਂ ਹੈਗਾ 18 ਕਿਲੋਮੀਟਰ ਤੇ ਹੁਣ ਤਾਂ ਸਾਡੇ ਵੱਲੋਂ ਬਣਾਇਆ ਹੋਇਆ ਆਪਣਾ ਹਵਾਲਦਾਰੀ ਸਰ ਸਿੰਘ ਦਾ ਪਿੰਡ ਦੇ ਵਿਚਾਲੇ ਫੌਜ ਨੇ ਬਣਾਇਆ ਸੀ ਤੇ ਇਹ ਵਧੀਆ ਹੁਣ ਮੂੜੀਆਂ ਬਣਨ ਲੱਗੀਆਂ ਪਈਆਂ ਨਿਕਲਣ ਲੱਗੀ ਪਹਿਲਾਂ ਜਿੱਦਾਂ ਸਾਨੂੰ ਪਤਾ ਸੀ ਪਤਾ ਹੁਣ ਰਿਹਾ ਜੀ ਥੈਂਕ ਯੂ ਵੀਰ ਜੀ ਧੰਨਵਾਦ ਧੰਨਵਾਦ ਦੇ ਆ ਜਿਹੜੀਆਂ ਸਾਰਾ ਗੜੀ ਦੇ ਸ਼ਹੀਦਾਂ ਦੀਆਂ ਮੜਾਸੇ ਮਾਰੇ ਆ ਢਾੜੇ ਸਾਰਿਆਂ ਦੇ ਰੱਖੇ ਆ ਵਰਦੀਆਂ ਪਾਈਆਂ ਤੇ ਹੱਥ ਵਿੱਚ ਥੋੜੇ ਦਾ ਰਫਲਾ ਉਹਦਾ ਕੋਲ ਅਸਲਾ ਹੋਵੇਗਾ ਪਰ ਹੁਣ ਇਸ ਤੇ ਫਿਲਮਾਂ ਆਉਣਗੀਆਂ ਤੇ ਬਣ ਰਹੀਆਂ ہیں بیٹل ਆਫ ਸਾਰਾ ਗੜੀ ਤੇ ਸ਼ਾਇਦ ਕੋਈ ਵੱਡੀ ਫਿਲਮ ਵੱਡੇ ਬਜਟ ਦੀ ਬਣ ਵੀ ਰਹੀ ਸਰਗੜੀ ਦੀ ਇਸ ਲੜਾਈ ਦੀ ਦਾਸਤਾਂ ਤੁਹਾਨੂੰ ਸੁਣ ਕੇ ਹਟਿਆ ਜੀ ਤੁਸੀਂ ਸਾਰਿਆਂ ਨੇ ਇਸਦੇ ਬਾਰੇ ਗੱਲਬਾਤ ਕੀਤੀ ਤੇ ਇਹਦੇ ਬਾਰੇ ਹੋਰ ਲੱਭੋ YouTube ਤੇ ਬੈਟਲ ਆਫ ਸਾਰਾਗੜੀ ਪਾਓ ਵਿਕੀਪੀਡੀਆ ਤੇ ਇਸ ਦੀ ਇਨਫੋਰਮੇਸ਼ਨ ਸੂਚਨਾ ਸਦਾਰਤਰ ਸੇਮ ਸਿੰਘ ਕਾਂਗ ਉਮਰ 75 ਸਾਲ ਪਿਛਲਾ ਪਿੰਡ ਚੱਕ ਹਾਜੀਪੁਰ ਜ਼ਿਲ੍ਹਾ ਹਸ਼ਿਆਰਪੁਰ 6 ਸਤੰਬਰ ਨੂੰ ਸਵਰਗ ਸਦਾਰ ਗਏ ਨੇ ਉਹਨਾਂ ਦਾ ਅੰਤਿਮ ਸੰਸਕਾਰ 16 ਸਤੰਬਰ ਦਿਨ 11 ਦੇ ਨੇ 16 ਸਤੰਬਰ ਨੂੰ 11 ਵਜੇ ਸ਼ਨੀਚਰਵਾਰ ਨੂੰ ਡੈਲਟਾ ਵਿੱਚ ਤੇ ਫਾਈਬਰਫਿਊ ਨੋ ਹਾਲ ਦੇ ਵਿੱਚ ਤੇ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਰੌਸ ਸਟਰੀਟ ਵੈਂਕੂਵਰ 1 ਵਜੇ ਹੋਈ ਸਤੀ ਕੰਗ ਜਿਹੜੇ ਵਿਰਸਾ ਆਪਣਾ ਹੁੰਦਾ ਮਨਮੋਲ ਵਾਰਸ ਉਹਨਾਂ ਦਾ ਦੇ ਇਹ ਤੁਸੀਂ ਪਤਾ ਕਰ ਨਾਲ ਕਰ ਸੇ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਸਦਾ ਤਰਸੀਮ ਸਿੰਘ ਪੰਗ ਉਮਰ 75 ਸਾਲ ਪਿੰਡ ਚੱਕ ਹਾਜੀਪੁਰ ਸਾ ਹਰਦੀਪ ਸਿੰਘ ਜੀ ਲਾਈਨ ਨੰਬਰ 4 ਤੁਸੀਂ ਇਹ ਸਾ ਕੁਲਵੰਤ ਸਿੰਘ ਜੀ ਲਾਈਨ ਨੰਬਰ 5 ਸੀ ਗੱਲਬਾਤ ਕਰਨੀ ਚਾਹੁੰਦੇ ਸੀ ਜੀ ਤੇ ਫਿਰ ਫੋਨ ਕਰ ਸਕਦੇ ਹੋ ਇਸ ਵਿਸ਼ੇ ਤੇ ਇੱਕ ਦੋ ਕਾਲ ਮੈਂ ਹੋਰ ਲੈ ਸਕਦਾ ਜੇ ਤੁਸੀਂ ਫਿਰ ਨਵਾਂ ਵਿਸ਼ਾ ਸ਼ੁਰੂ ਕਰਾਂਗੇ ਇੱਥੇ ਹੀ ਮਿਲਬੋਰਨ ਦੇ ਵਿੱਚ ਸਾਡਾ ਪਰਿਵਾਰ ਵੱਸਦਾ ਹੈ ਜਸਮੀਤ ਸਿੰਘ ਟਿਲੋਂ ਤੇ ਉਹਨਾਂ ਦੀ ਸਰਦਾਰਨੀ ਸ੍ਰੀ ਦਵਿੰਦਰ ਕੌਰ ਟਿਲੋਂ ਨੂੰ ਵਧਾਈਆਂ ਦੇ ਉਹਨਾਂ ਦੀ ਬੇਟੀ ਸਮਰੀਨ ਕੌਰ ਟਿਲੋਂ ਦਾ ਅੱਜ 7ਵਾਂ ਜਨਮ ਦਿਨ ਹੈ ਵੇਖੋ ਇਸ ਰੇਡੀਓ ਨੇ ਅਸੀਂ ਕਿੰਨੇ ਨੇੜੇ ਕਰ ਦਿੱਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਪਰਿਵਾਰ ਸਾਡੇ ਵਸਦੇ ਐ ਤੇ ਜਿਹੜੇ ਹਰ ਰੋਜ਼ ਇਸ ਮੰਚ ਨੂੰ ਸੁਣਦੇ ਆ ਤੇ ਤੁਸੀਂ ਸਾਂਝ ਪਉਨੇ ਹੋ ਇਸ ਸਾਲ ਦੇ ਵਿਰਸਾ ਪਹਿਲਾਂ ਜਾਣ ਦੀ ਪਲਾਨਿੰਗ ਸੀ ਕੁਝ ਕਾਰਨਾ ਕਰਕੇ ਜਾ ਨਹੀਂ ਹੋਇਆ ਜੀ ਕੋਸ਼ਿਸ਼ ਕਰਾਂਗਾ ਛੇਤੀ ਕੁਝ ਯਾਰ ਦੋਸਤ ਗੁੱਸੇ ਵੀ ਹੋਗੇ ਪਰ ਮਾਫੀ ਹੈ ਕਈ ਵਾਰ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀ ਜਿਸ ਤਰ੍ਹਾਂ ਚਿਤਵੀ ਹੈ ਸ਼ਿਵਦੇਵ ਜੀ ਤੁਸੀਂ ਇਹ ਰਾਸ਼ਿਦ ਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਸਾਬ ਸਾਰਾ ਦੇ ਸ਼ਹੀਦਾਂ ਨੂੰ ਸਲਾਮ ਆ ਮੇਰੇ ਵੱਲੋਂ ਮੇਰੀ ਕੌਮ ਦੇ ਜਿੰਨੇ ਵੀ ਸ਼ਹੀਦ ਹੋਏ ਚਾਹੇ ਉਹ ਜਲਦੀ ਵੇਲੇ 47 ਵੇਲੇ ਉਹਨਾਂ ਨੂੰ ਵੀ ਸਲਾਮ ਆ ਇਹ ਦੀਆਂ ਸਾਡੇ ਪੁਰਖਿਆਂ ਨੇ ਕੀਤੀਆਂ ਉਹਦੇ ਕੁਰਸੀਆਂ ਚਾਚਾ ਦੇ ਬਾਪੂ ਲੈ ਕੇ ਰਹਿਦੇ ਲੋਕਾਂ ਦੇ ਮੇਰੇ ਨਹੀਂ ਉਦੋਂ ਬਾਅਦ ਬਾਈ ਜੀ 84 ਵੇਲੇ ਵੀ ਸੰਤ ਪਿੰਡਾਂ ਵਾਲਿਆਂ ਦੀ ਸ਼ਹੀਦੀ ਵੇਲੇ ਵੀ ਸ਼ਹੀਦ ਹੋਏ ਸੀ ਜਾਂ ਸ਼ਹੀਦ ਹੋਏ ਆ ਕੌਮ ਨੇ ਮੁੱਲ ਪਾਇਆ ਉਹਨਾਂ ਦਾ ਕੌਮ ਨੂੰ ਜਾਗਰਤੀ ਆਈ ਆ ਬਹੁਤ ਜ਼ਿਆਦੇ ਜੀ ਹੁਣ ਆਪਾਂ ਕਹੀਏ ਵੀ ਲੀਡਰਾਂ ਨੇ ਮੁੱਲ ਪਾਉਣਾ ਵਾ ਜਿਨ੍ਹਾਂ ਦੇ ਪੁਰਖਿਆਂ ਨੇ ਖੂਹਾਂ ਦੇ ਵਿੱਚ ਜ਼ਹਿਰ ਪਾਈਆ ਉਹਨਾਂ ਤੋਂ ਆਪਾਂ ਕੀ ਉਮੀਦ ਰੱਖਦੇ ਆਂ ਇਸ ਤੇ ਕੌਂਦੀ ਰਹੂਗੀ ਥੈਂਕ ਯੂ ਬਜੀ ਧੰਵਾਦ ਜੀ ਸਾਹ ਹਰਦੀਪ ਸਿੰਘ ਗਿਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਸਾਹ ਹਾਂਜੀ ਗਿਲ ਸਾਹਿਬ ਅੱਜ ਦੇ ਦਿਨ ਦੇ ਉੱਤੇ ਇਹਨਾਂ ਸ਼ਹੀਦਾਂ ਨੂੰ ਵੀ ਸਲੂਟ ਹੈ ਸਲਾਮ ਹੈ ਨਮਸਕਾਰ ਤੇ ਤੁਹਾਡੀ ਪੇਸ਼ਕਾਰੀ ਨੂੰ ਵੀ ਨਮਸਕਾਰ ਆ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਮੁਹੱਈਆ ਕਰਾਈ ਆ ਇੱਕ ਇਹਦੇ ਵਿੱਚ ਵਰਣਨਯੋਗ ਗੱਲ ਇਹ ਹੋਈ ਆ ਕਿ ਸ਼ਾਇਦ ਜਗਮੇਲ ਸਿੰਘ ਜੀ ਖਾਲਸਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਹਦੇ ਉੱਤੇ ਰੌਸ਼ਨੀ ਪਾਈ ਆ ਤੇ ਪਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਉਹਨਾਂ ਦੀ ਜਿਹੜੀ ਗੱਲ ਸੀਗੀ ਕਿ ਉਹ ਆਪਣਾ ਜਿਹੜਾ ਇਹ ਰੇਡੀਓ ਵਾਲੀ ਉਹਨਾਂ ਨੇ ਗੱਲ ਕਹੀ ਆ ਰੇਡੀਓ ਸਟੇਸ਼ਨ ਵਾਲੀ ਉਹ ਵੀ ਕਾਬਲੇ ਗੌਰ ਹੈ ਜੇ ਕਿਸੇ ਤੁਹਾਡੇ ਇਸ ਪਲੇਟਫਾਰਮ ਤੋਂ ਕੋਈ ਗੱਲ ਅਗਾਹ ਪਹੁੰਚਦੀ ਹੋਵੇ ਤੇ ਉਹਨੂੰ ਵੀ ਪਹੁੰਚਾਓ ਬਹੁਤ ਵਾਜਬ ਮੰਗ ਆ। ਇੱਕ ਗੱਲ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹਨਾ ਜਾਣਕਾਰੀ ਹਿੱਤ ਕਿ ਜਿਵੇਂ ਆਪਾਂ ਕਿਹਾ ਵੀ ਇਹਨਾਂ ਦਾ ਆਪਾਂ ਪੰਜਾਬੀਆਂ ਨੇ ਜਾਂ ਆਪਾਂ ਨੂੰ ਪਤਾ ਨਹੀਂ ਲੱਗਾ ਜਾਂ ਬਾਅਦ ਦੇ ਵਿੱਚ ਜਾਂ ਜਿਵੇਂ ਵੀ ਮਤਲਬ ਵੀ ਆਪਾਂ ਹੁਣ 5-10 ਸਾਲ ਤੋਂ ਇਹ ਕਰਨਾ ਸ਼ੁਰੂ ਕੀਤਾ ਉਹਨਾਂ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪਰ ਇੱਕ ਨਾ ਜੀ ਮੈਨੂੰ ਜਿੱਥੋਂ ਤੱਕ ਖਿਆਲ ਆ ਅੰਮ੍ਰਿਤਸਰ ਜਿੱਥੇ ਕਰਕੇ ਹੁਣ ਨਵੀਂ ਪਾਰਕਿੰਗ ਬਣੀ ਉਹਦੇ ਸਾਹਮਣੇ ਇੱਕ ਚਿੱਟੇ ਸੰਗ ਬਰਬਰ ਦੇ ਵਿੱਚ ਨਾ ਇੱਕ ਗੁਰਦੁਆਰਾ ਸਾਹਿਬ ਬਣਿਆ ਤੇ ਉਹਦੇ ਉੱਤੇ ਬੋਰਡ ਲੱਗਾ ਵਾ ਵੀ ਸਾਰਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਸ਼ਾਇਦ ਉੱਥੇ ਮਰਾਜ ਡਾਉਣ ਤੋਂ ਕਿੰਨੇ ਕੁਝ ਫੌਜੀਆਂ ਦੇ ਨਾਮ ਹੀ ਲਿਖੇ ਆ मैं ਜਾਣਕਾਰੀ ਇਹ ਚਾਹੁੰਦਾ ਸੀ ਕਿਉਂਕਿ ਐਵੇਂ ਜ਼ੈਨ ਦੇ ਵਿੱਚ ਗੱਲ ਆ ਗਈ ਸੁਣਦੇ ਆ ਸੁਣਦੇ ਆ ਵੀ ਉਹ ਸ਼ਹੀਦ ਭਲਾ ਇਹੀ ਸਾਰਾ ਗੜੀ ਵਾਲਿਆ ਕੋਈ ਹੋਰ ਇਨਸੀਡੈਂਟ ਆ ਕਿਉਂਕਿ ਸਿੱਖ ਇਤਿਹਾਸ ਭਰਿਆ ਪਿਆ ਨਾ ਮਤਲਬ ਸ਼ਹੀਦੀਆਂ ਨਾਲ ਵੀ ਕੋਈ ਹੋਰ ਇਨਸੀਡੈਂਟ ਆ ਕਿ ਉਹ ਇਹੋ ਏ ਸੋਢੀ ਸਾਹਿਬ ਇਹੀ ਇਹਨਾਂ ਦਾ ਗੁਰਦੁਆਰਾ ਸਾਰਾ ਗੜੀ ਇਹਨਾਂ ਸ਼ਹੀਦਾਂ ਦੀ ਯਾਦ ਚ ਇੱਕੋ ਹੀ ਇਵੈਂਟ ਹੁਣ ਤੱਕ ਹੋਇਆ ਗਿਆਨ ਮੈਨੂੰ ਦੇ ਬਾਰੇ ਨਹੀਂ ਪਤਾ ਮੈਂ ਪਤਾ ਕਰ ਲਾ ਕੋਈ ਨਾ ਕੋਈ ਨਾ ਬਾਅਦ ਚ ਬੰਗੂਗਲ ਕਰਕੇ ਜਾਂ ਕਿਵੇਂ ਵੇਖ ਲਵਾਂਗੇ ਬਸ ਧੰਨਵਾਦ ਜੀ ਤੁਹਾਡਾ ਤੁਹਾਡੇ ਪ੍ਰੋਗਰਾਮ ਨੂੰ ਸਲੂਟ ਤੇ ਉਹਨਾਂ ਸ਼ਹੀਦਾਂ ਨੂੰ ਵੀ ਸਲੂਟ ਥੈਂਕ ਯੂ ਧੰਨਵਾਦ ਸੋਢੀ ਸਾਹਿਬ ਸੁਣ ਲਈ ਗੁਰਿੰਦਰ ਸਿੰਘ ਲਾਈਨ ਨੰਬਰ ਜੇ ਤਾਂ ਸਸ਼ੀ ਕਾਂਨ ਨਿਰੰਦਰ ਬੋਲਦਾ ਜੀ ਹਾਂਜੀ ਸਸ਼ੀ ਕਾਂਨ ਨਿਰੰਦਰ ਸਿੰਘ ਜੀ ਮੈਂ ਕਹਾਂ ਜੀ ਇਹ ਦੀਆਂ ਰੂਹਾਂ ਨਹੀਂ ਆ ਜਿਹੜੇ ਕਹਾਣੀਆਂ ਸੁਣੀ ਨੇ ਇਦਾਂ ਲੱਗਦਾ ਹੀ ਨਹੀਂ ਕਿ ਆਪਾਂ ਕੋਈ ਦੁਨੀਆ ਤੇ ਹੋਏ ਹੋਗੇ ਇਦਾਂ ਲੱਗਦਾ ਵੀ ਮੂਵੀਆਂ ਜਿਹਦਾ ਮੂਵੀਆਂ ਹੁੰਦਾ ਪਰ ਇਹ ਅਸਲੀਅਤ ਹੈ ਜੀ ਸਿੱਖਾ ਸਿੱਖੀ ਸਾਨੂੰ ਮਾਰਿਆ ਸਿੱਖੋਂ ਦੇ ਇਦਾਂ ਤੇ ਆਪਣੇ ਜਿਵੇਂ ਇੱਕ ਜਿਹੜੀ ਮੂਵੀ ਬਣੀ ਸੀ ਬਾਰਡਰ ਫਰਨੀ ਜੋਲ ਦੀ ਉਹ ਉਹ ਵੀ ਇੱਕ ਆਪਣੀ ਏਨੀ ਕੋਈ ਦਾਸਤਾ ਸੀਗੀ ਹੈ ਨਾ ਕਿ ਟੈਂਕ ਆ ਰਹੇ ਸੀ ਸਿਰਫ 4 4 ਫੌਜੀ ਸੀਗੇ ਗੱਲ ਹੈ ਸਾਡੀ ਪਾਕਿਸਤਾਨ ਲੜਾਈ ਤੇ ਉਹ ਟੈਂਕ ਭੰਨੇ ਨਹੀਂ ਸੀ ਜਾਂਦੇ ਕਿਸੇ ਪਾਸਿਓਂ ਤੇ ਜਨ ਮਿਲਟਰੀ ਦੇ ਕਮਾਂਡਰਾਂ ਨੇ ਕਹਿ ਦਿੱਤਾ ਚੌਂਕੀ ਛੱਡ ਕੇ ਪਿੱਛੇ ਆਜੋ ਸਾਡੀ ਕੌਮ ਦੇ ਜਿਹੜੇ ਫੌਜੀ ਸਨ ਸਿੱਖ ਰਜiment ਦੇ ਉਹਨਾਂ ਨੇ ਛਾਤੀਆਂ ਨਾਲ ਬੰਬ ਬੰਨ ਕੇ ਉਹ ਪੈਟਰਨ ਟੈਂਕਾਂ ਦੇ ਥੱਲੇ ਜਾਵੜੇ ਤਾਂ ਉਹ ਪੈਟਰਨ ਟੈਂਕ ਜਿਹੜੇ ਨਕਾਰੇ ਸੀ ਉਹ ਸੋ ਬਹੁਤ ਲੰਮੀਆਂ ਚੀਜ਼ਾਂ ਪਰ ਦੁੱਖ ਦੀ ਕਹਾਣੀ ਇਹ ਹੈ ਇਹ ਅਸੀਂ ਬਹੁਤ ਜਲਦੀ ਭੁੱਲਦੇ ਹਾਂ ਇਵਨ ਸਾਡੇ ਸਿੱਖ ਐਮਪਾਇਰ ਦੀ ਗੱਲ ਜ 1750 ਦੀ ਗੱਲ ਕਰਦੇ ਹੋ ਤੁਸੀਂ ਸਾਲ ਕਿੰਨੇ ਹੋਏ 170 ਸਾਲ ਹੋਇਆ ਤੇ ਡੇਢ ਸਦੀ ਦੇ ਵਿੱਚ ਕੌਮ یوں ਗਫਲਤ ਹੋਈ ਤੇ ਰੁੜੀ ਫਿਰਦੀ ਹੈ ਕਿ ਸਾਨੂੰ ਪਤਾ ਨਹੀਂ ਕੋਈ ਉਹਨੂੰ ਖਾਲਸਾ ਰਾਜ ਕਹਿਣੋਂ ਰੁਕ ਤੇ ਉਂਝਿਆ ਕਰਦਾ ਕਹਿੰਦਾ ਕੋਈ ਕੁਝ ਪ੍ਰਚਾਰਦਾ ਹੈ ਅਖੌਤੀ ਬੁੱਧੀਜੀਵੀ ਬਹਿ ਕੇ ਜਕੜਾ ਮਾਰਦੇ ਹੈ ਤੇ ਇਹ ਇਹ ਜਿਹੜੀਆਂ ਜਿਹਦਾ ਜੀ ਕਰਦਾ ਉਹੀ ਆਪਣੇ ਮਨ ਦੀ ਗੱਲ ਕਰਦਾ ਵਿਧੀ ਵਿਵਧਾਨ ਹੈ ਨਹੀਂ ਕੋਈ ੁੰਡਾ ਜਦ ਤੱਕ ਹਾਥੀ ਤੇ ਨਾ ਹੋਵੇ ਉਹ ਜਦ ਤੱਕ ਹਾਥੀ ਕਿੱਦਰ ਸੁਰਤ ਹੈ ੁੰਡੇ ਨਾਲ ਇਹ ਹੋ ਸਕਦਾ ਕਿਸੇ ਮਹਿਮਮ ਚ ਹੋ ਸਕਦਾ ਕੁਝ ਬੰਦਿਆਂ ਕੋਲ ਹੋ ਸਕਦਾ ੁੰਡਾ ੁੰਡਾ ਹੀ ਹੈ ਉਹਦੇ ਨਾਲ ਫਿਰ ਸਿੱਧੀ ਰਹਿੰਦੀ ਦੋ ਪੈਸੇ ਦੇ ਬੰਦੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲਿਖਦੇ ਆ ਉਹ ਉਥੇ ਤੁਰੇ ਫਿਰਦੇ ਆ ਤੇ ਉਹਦੇ ਹੱਕ ਚ ਸਾਰਾ ਲਾਣਾ ਖੜਾ ਉਹਦੇ ਆਖੇ ਜੀ ਗੱਗਰੇ ਤਾਂ ਵਧੀਆ ਲਿਖਦਾ ਤੇ ਕਦੇ ਗਾਗਰਗਾ ਨੂਰ ਮਹਿਲੀਆਂ ਦੇ ਹੱਕ ਚ ਲਿਖਦਾ ਹੈ ਦੇ ਹੱਕ ਚ ਲਿਖਦਾ ਗੁਰੂ ਡੰਮ ਦੇ ਹੱਕ ਚ ਲਿਖਦਾ ਦੇ ਲਿਖਦਾ ਹੈ ਤੇ ਇਹ ਇਹ ਇੱਕ ਗੱਲ ਥੋੜਾ ਗੱਲ ਇਹ ਆ ਵੀ ਦੁਸ਼ਮਣ ਤਾਂ ਹੀ ਘਰੇ ਬੜੂ ਜੇ ਤੁਸੀਂ ਜਿੰਦੇ ਖੋਲ ਦਿੱਤੇ ਉਹਦੀ ਮਰਜ਼ੀ ਆ ਜਿਵੇਂ ਮਰਜ਼ੀ ਆ ਕੇ ਬੈਠੇ ਜਿਵੇਂ ਮਰਜ਼ੀ ਆ ਕੇ ਕਰੇ ਚਲੋ ਪਰ ਫੇਰ ਵੀ ਆਪਣੀ ਆਪਣੀ ਡਿਊਟੀ ਹੈ ਮੈਂ ਵੀ ਤੁਹਾਡੇ ਚੋਂ ਹੀ ਸਾਂ 5-4 ਸਾਲ ਪਹਿਲਾਂ ਸਾਰਾ ਗੜੀ ਦਾ ਆਪਾਂ ਨੂੰ ਵੀ ਨਾਉ ਨਹੀਂ ਸੀ ਪਤਾ ਇੱਕ ਦਿਨ ਬੈਠੇ ਗੱਲਾਂ ਬਾਤਾਂ ਚੱਲ ਰਹੀਆਂ ਖੋਜ ਜਿਹੜੀ ਹੈ ਉਹ ਤਜਿੰਦਰ ਸਿੰਘ ਬਹੁਤ ਉਹਦੇ ਨਾਲ ਤੇ ਗੁਲਸਤਾਨ ਤੇ ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਕੋਈ ਡਾਕੂਮੈਂਟਰੀ ਜਾ ਕੇ ਸਾਰਾ ਘੜੀ ਬਣਾਉਣੀ ਹੈ 5-7 ਸਾਲ ਅਣਸਤ ਵਰਿਆਂ ਦੀ ਪਹਿਲੀ ਗੱਲ ਹੁਣ ਇਸ ਤੇ ਵੱਡੀਆਂ ਫਿਲਮਾਂ ਬਣ ਰਹੀਆਂ ਜਰਵਜ ਕੇ 14 ਮਿੰਟ ਹੋਇਆ ਜੀ ਅਗਲੇ ਇਸ ਹਿੱਸੇ ਦੇ ਵਿੱਚ ਸੰਤ ਅ ਇੱਕ ਲੋਕਲ ਮੈਂ ਗੱਲ ਕਰਨੀ ਚਾਹੁੰਦਾ ਹਾਂ ਪਿਛਲੇ ਵਾਰ ਵੀ ਆਪਾਂ ਇਹ ਗੱਲ ਤੋਰੀ ਸੀ ਇਸ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਲਰ ਹੋਰ ਨੇ ਜਿਹੜੇ ਇਸਲੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਨੇ ਸਰਗੜੀ ਤੇ ਨਾਲ ਜਿਹੜੇ ਸ਼ਹੀਦਾਂ ਦੀ ਮੈਂ ਗੱਲਬਾਤ ਕੀਤੀ ਮੈਂ ਕੈਪਟਰ ਇਸ਼ੂ ਸਿੰਘ ਦੀ ਬੋਲ ਰਹੀ ਹਾਂ ਤੁਸੀਂ ਤੇ ਬਾਬਾ ਜੀ ਨੂੰ ਯਾਦ ਕਰਦੇ ਹੋ ਤੇ ਅਸੀਂ ਥੈਂਕ ਯੂ ਜਦੋਂ ਮੰਮੀ ਹਜੇ ਹੋਏ ਨਹੀਂ ਸੀਗੇ ਪਾਪਾ ਜੀ ਨੇ ਨਾਨੀ ਨੇ ਉਹਨੂੰ ਚੂਜ਼ ਸੀ ਤੇ ਅਸੀਂ ਉਸ ਡਿਸੀਜਨ ਦਾ ਬਹੁਤ ਅਪਰੀਸ਼ੀਏਟ ਕਰਦੇ ਹਾਂ ਕਿਉਂਕਿ ਅੱਜ ਸਾਡੀ ਜਿਹੜੀ ਫੈਮਿਲੀ ਆ ਸਾਰੀ ਉਹਨਾਂ ਨੇ ਸੰਭਾਲੀ ਹੋਈ ਆ ਸੈਡਲੀ ਉਹ ਵੈਡਿੰਗ ਦੇਖ ਨਹੀਂ ਪਾਈ ਸੀ ਕਿਉਂਕਿ 6 ਮੰਥਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਜਿਹੜਾ ਇਹ ਡਿਸੀਜਨ ਆ ਅਸੀਂ ਬਹੁਤ ਯਾਦ ਕਰਦੇ ਆ ਉਹਦੇ ਉਸ ਟਾਈਮ ਤੇ ਤੁਸੀਂ ਸਾਰੇ ਸ਼ਹੀਦਾਂ ਨੂੰ ਸਾਰੇ ਸੋਲਜਰਜ਼ ਨੂੰ ਯਾਦ ਕਰਦੇ ਆਂ ਵੈਰੀ ਗਰਲ ਪੁੱਤ ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਤੇ ਮੈਨੂੰ ਬਹੁਤ ਵੱਦਾ ਵਧੀਆ ਤੁਸੀਂ ਬੋਲੇ ਹੋ ਤੇ ਤੁਸੀਂ ਬਹੁਤ ਮਾਣ ਦਿੱਤਾ ਤੇ ਇਹ ਉਹ ਡਿਜ਼ਰਵ ਕਰਦੇ ਹੈ ਗਾਂ ਫੈਮਲੀ ਜਿਹੜੀ ਉਹਨਾਂ ਦੀ ਰੌ ਰੀਤਾਂ ਤੇ ਅੱਗੇ ਚੱਲ ਰਹੀ ਹੈ ਉਹ ਵੀ ਉਹਨੇ ਸਨਮਾਨ ਦੇ ਕਾਬਿਲ ਹੈ ਥੈਂਕ ਯੂ ਸੋ ਵੈਰੀ ਮੈਥ ਪੁੱਤ ਥੈਂਕ ਯੂ ਥੈਂਕ ਯੂ ਅੰਕਲ ਜੀ ਥੈਂਕ ਯੂ ਸੋ ਮੱਚ ਕਿ ਸੋ ਮੱਚ ਮਰੂਪ ਕੋ ਸੰਗਾ ਜਿਹੜੀ ਗੱਲ ਆਪਾਂ ਸਰ ਇਸ਼ੂ ਸਿੰਘ ਪਨਾਮ ਉਹਨਾਂ ਦੀ ਕੀਤੀ ਹੈ ਉਹ ਮਰੂਪ ਦੇ ਪਰਨਾਨਾ ਜੀ ਨਾਨਾ ਜੀ ਦੇ ਫਾਦਰ ਤੁਸੀਂ ਕਹਿ ਸਕਦੇ اے ਉਸ ਪਰਿਵਾਰ ਦੇ ਵਿੱਚ ਮਹਰੂਬ ਦੇ ਨੰਨੀ ਜੀ ਨਸਰਾਨੀ ਮਹਿੰਦਰ ਕੌਰ ਸਹੋਤਾ ਉਸ ਪਰਿਵਾਰ ਦੀ ਅੱਗੇ ਕਹਾਣੀ ਤੀਸਰੀ ਪੀੜੀ ਚੌਥੀ ਪੀੜੀ ਐ ਸਰਾਇਸ਼ਰ ਸਿੰਘ ਨਾਮ ਹੋਣਾ ਤੋਂ ਸੋ ਜਿਹੜੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਸਾਹਮ ਕੇ ਬੱਚਿਆਂ ਨੂੰ ਆਪਣੀਆਂ ਰੌ ਰੀਤਾਂ ਤੇ ਆਪਣੇ ਇਤਿਹਾਸ ਤੇ ਆਪਣੇ ਪਰਿਵਾਰ ਬਾਰੇ ਦੱਸਿਆ ਜਾਂਦਾ ਉਹ ਬੱਚੇ ਪਿਰਤ ਪਾਉਂਦੇ ਆ ਉਹ ਗੱਲਾਂ ਕਰਦੇ ਆ ਉਹ ਉਹਨਾਂ ਨੂੰ ਮਾਣ ਹੁੰਦਾ ਆਪਣੇ ਪੁਰਖਿਆਂ ਤੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਕਰ ਰਿਹਾ ਹਾਂ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਵੀ ਗੱਲ ਆਈ ਕਿਉਂਕਿ ਹਰ ਸਾਲ ਆਪਾਂ ਗੱਲ ਉਹਨਾਂ ਦੀ ਕਰਦੇ ਹਾਂ ਕਿ ਵੀ ਇਹੀ ਏਰੀਆ ਵਜੀਰਸਤਾਨ ਦਾ ਤੇ ਇਲਾਕਾ ਗੈਰ ਦਾ ਤੇ ਨਾਰਥ-ਵੈਸਟ ਫਰੰਟੀਅਰ ਦਾ ਹੈਦਰੀ કચ્છ ਦੇ ਵਿੱਚ ਉਹਨਾਂ ਨੇ ਲੜਾਈ ਕੀਤੀ 1925 ਚ ਫੇਰ ਉਹਨਾਂ ਨੇ ਆਪਣੀ ਉਮਰ ਪੂਕ ਕੇ ਉਸ ਵਰਗਵਾਸ ਹੋਏ ਨੇ ਵਿਕਟੋਰੀਆ ਕ੍ਰਾਸ ਪਹਿਲੇ ਸਿੱਖ ਨੂੰ ਮਿਲਿਆ ਉਦੋਂ ਪਹਿਲਾਂ ਆਰਡਰ ਆਫ ਮੈਰਿਟ ਜਿਹੜਾ ਸਾਰਾ ਗੜੀ ਵਾਲਿਆਂ ਨੂੰ ਮਿਲਿਆ ਦੇ ਉਹ ਵਿਕਟੋਰੀਆ ਬਹੁਤ ਮਾਣ ਦੇ ਨਾਲ ਇੰਗਲੈਂਡ ਦੇ ਵਿੱਚ ਲਿਜਾ ਕੇ ਸਰਦਾਰ ਜੀ ਨੂੰ ਸਤਿਕਾਰ ਦਿੱਤਾ ਗਿਆ ਉਹਨਾਂ ਦੀਆਂ ਫੋਟੋਆਂ ਨੇ ਸੂਟ ਦੇ ਨਾਲ ਤੇ ਪੂਰੀ ਤਿਆਰੀ ਦੇ ਨਾਲ ਲੁੱਕ ਉਹਨਾਂ ਦੀ ਜਿਹੜੀ ਸ਼ੇਰ ਗਮ ਮੋਹਰਾ ਬੜਾ ਇਹ ਪ੍ਰਾਣੇ ਖੂਨ ਆ ਜਿਹੜੀ ਬਲੱਡ ਲਾਈਨ ਜਿਹੜੀ ਤੁਰੀ ਆਉਂਦੀ ਐ ਪੁਰਖਿਆਂ ਤੇ ਆ ਹੁਣ ਸਾਰਾ ਗੜੀ ਦੇ ਵੀ ਇਹਨਾਂ 21 ਸ਼ਹੀਦਾਂ ਦਾ ਪੂਰਾ ਪਤਾ ਲੱਗਣਾ ਚਾਹੀਦਾ ਪਿੰਡਾਂ ਦੇ ਵਿੱਚ ਚੋਰੜਾ ਸਿੰਘ ਉਹਨਾਂ ਪਿੰਡ 'ਚ ਬਾਕੀਆਂ ਦਾ ਵੀ ਸਾਰਾ ਕੁਝ ਲੱਭਣਾ ਚਾਹੀਦਾ ਫਿਲਮਾਂ ਬਣਾਉਣ ਨਾਲ ਇਨਫੋਰਮੇਸ਼ਨ ਬਾਹਰ ਆਊਗੀ ਪਰ ਅਸਲ ਕਹਾਣੀ ਪਿੰਡਾਂ 'ਚੋਂ ਪਤਾ ਲੱਗਣੀ ਕਿਹੜੇ ਪਿੰਡਾਂ ਦੇ ਵਿੱਚ ਉਹ ਵੱਡੇ ਹੋਏ ਤੇ ਫੇਰ ਉਹਨਾਂ ਦੀ ਗਾਂ ਪੀੜੀ ਜਿਹੜੀ ਗੁੰਮਨਾਮ ਹੋਈ ਕਿਦ ਤੁਰੀ ਫਿਰਦੀ ਹੋ ਚੌਥੀ ਪੀੜੀ ਚ ਭੁੱਲ ਜਾਂਦੇ ਜਿਵੇਂ ਹੁਣ ਦੇ ਨਾਂ ਨਹੀਂ ਯਾਦ ਇਸ ਤਰ੍ਹਾਂ ਹੀ ਕਹਾਣੀ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਸਾਰਾ ਸਚਨ ਸਿੰਘ ਦੇਖੋ ਜੀ ਤੁਹਾਡੇ ਇੱਕ ਕਾਲ ਪੁੱਛਿਆ ਸੀਗਾ ਜਿਹੜੀ ਅੰਮ੍ਰਿਤਸਰ ਇੱਕ ਜਗ੍ਹਾ ਬਣੀ ਦੀ ਜਗ੍ਹਾ ਉਹਦੇ ਸਾਰਾ ਗੜੀ ਦੀ ਉਹਦੇ ਬਾਰੇ ਮੈਂ ਥੋੜਾ ਜਿਹਾ ਮੈਨੂੰ ਗਿਆਨ ਹੈਗਾ ਵਾ ਦਸੋ ਜੀ ਇਹ ਸਾਰਾ ਗੜੀ ਦੀ ਜਿਹੜੀ ਜਗਾ ਪਣੀ ਹੈ ਗਰੀਜਾਂ ਦੇ ਵੇਲੇ ਇਹ ਕੱਲੀ ਇੱਕ ਦੀ ਇੱਕ ਫਰੋਜ ਔਰ ਤੇ ਬਣੀ ਆ ਤੇ ਤੀਜੀ ਹੈਗੀ ਆ ਉੱਥੇ origianlly ਜਿੱਥੇ ਸਾਕਾ ਪਾਕਿਸਤਾਨ ਦੇ ਵਿੱਚ ਹੈਗੀ ਆ ਤਿੰਨਾਂ ਥਾਵਾਂ ਦੇ ਇਹਨਾਂ ਤਿੰਨਾਂ ਥਾਵਾਂ ਦੇ ਅੰਗਰੇਜ਼ਾਂ ਨੇ ਜ਼ਗੀਰ ਲਈ ਸੀਗੀ ਉੱਥੇ ਗੁਰਦੁਆਰਾ ਬੜਿਆ ਉਹ ਬਕੈਰਾ ਉੱਥੇ ਗੁਰਦਸਾਹ ਦਾ ਪਾਠ ਰਿਦਾ ਬਾਹਰ ਗਰੰਟੀ ਉੱਥੇ ਫੈਮਲੀ ਰਹੀ ਸੀ ਉਹ ਹੁਣ ਕੀਤਾ ਵਾ ਸੁਖਵੀਰ ਬਾਦਲ ਨੇ ਕਿਉਂਕਿ ਉਹ ਜਿਹੜੀ ਜਿਹੜੀ ਪਹਿਲਾਂ ਉਹਦਾ ਰਹੀ ਸੀ ਰਹਗੀ ਮਤਲਬ ਵਧੀਆ ਲੱਗਦੀ ਸੀ ਜਿਹੜੀ ਉਹ ਦਿਖ ਜਿਹੜੀ ਉਹਦੀ ਘੱਟ ਗਈ ਥੋੜੀ ਜੀ ਹੁਣ ਕਾਲੀਆਂ ਨੇ ਫੈਸਲਾ ਕੀਤਾ ਵੀ ਉਹਨਾਂ ਉਹ ਜਗ੍ਹਾ ਤਾਂ ਕੱਟ ਕੇ ਤਾਂ ਉੱਥੇ ਥੋੜੀ ਜੀ ਹੋਰ ਕਾਹੀ 50 ਗਾਜ ਤੇ ਪਾਸੇ ਕਰਕੇ ਵੀ ਉਹੋ ਜਿਹੀ ਉਸੇ ਤਰ੍ਹਾਂ ਦੀ ਜਗ੍ਹਾ ਬਣਾ ਦੇ ਉਹਦੇ 'ਚ ਕੋਈ ਫਰਕ ਨਹੀਂ ਆ ਤੇ ਹੀ ਰਹਿਣਾ ਵਾ ਸੋ ਇਹ ਗਰੀਜਾਂ ਦੇ ਵੇਲੇ ਦੀ ਬਣੀ ਆ ਹੋਣ ਸਖੀਰ ਬਾਦਲ ਨੇ ਗੱਲ ਕੀਤੀ ਆ ਉਹ ਜਿਹੜੀ ਉਹ ਸਿਟੀਜ਼ ਦਾ ਨਾਮ ਆਪਣੀ ਹੈਰੀਟੇਜ ਸਿਟੀਟ ਅੱਗੇ ਇਸੇ ਸਾਰਾ ਗੜੀ ਦੇ ਸਾਹਮਣੇ ਲੱਗੇ ਆਪਣੇ ਸ਼ਹੀਦ ਬਾਬਾ ਦੀਪ ਸਿੰਘ ਦਾ ਬੁੱਤ ਬਣਾ ਬਹੁਤ ਬਹੁਤ ਹੀ ਸ਼ਾਨਦਾਰ ਦੇਖਣ ਵਾਲਾ ਬੁੱਤ ਆ ਸਭ ਤੋਂ ਜ਼ਿਆਦਾ ਅਸੀਸ ਹੈ ਸਿਟੀ ਦੇ ਵਿੱਚ ਜੋ ਵਧੀਆ ਚੀਜ਼ ਦੇਖਣ ਆਲੀ ਆ ਤੇ ਉਹ ਵੀ ਆ ਤੇ ਉਹਦੇ ਸਾਹਮਣੇ ਸਾਰਾ ਗੜੀ ਦੇ ਸਾਹਮਣੇ ਪਿੰਡਾਂ ਦੇ ਤੇ ਉਹਦੇ ਅੱਗੇ ਇਹ ਬਾਦਲ ਨੇ ਇਹਨਾਂ ਦੇ ਬਹੁਤ ਵੀ ਬਣਾਇਆ ਬੜੀ ਸ਼ਾਨਦਾਰ ਜਗ੍ਹਾ ਫਿਰ ਬਣਾਤੀ ਉਹਨਾਂ ਨੇ ਥੋੜਾ ਪੈਸਾ ਖਰਚਿਆ ਤੇ ਵਧੀਆ ਚੀਜ਼ ਬਣ ਸੋ ਮੈਂ ਇਹਨਾਂ ਨੋਟ ਕਰ ਲੈਣਾ ਅੰਗਰੇਜ਼ਾਂ ਵੇ ਵੇ ਬੜੀ ਜਗੀ ਲੱਗੀ ਆ ਉਥੇ ਘਰ ਸਾਡਾ ਪਾਸ 24 ਦੇ ਹੁੰਦਾ ਰਹਿੰਦਾ ਉਥੇ ਬਜ਼ੁਰਗਾਂ ਦੀਆਂ ਫੋਟੋਆਂ ਨੇ ਜਿਹੜੀਆਂ ਤੁਸੀਂ ਸਾਹਮਣੇ ਰੱਖੀਆਂ ਇਹ ਕਪਤਾਨ ਪਿਆਰਾ ਸਿੰਘ ਜੀ ਆਜ਼ਾਦ ਹਿੰਦ ਫੌਜ ਵਾਸੀ ਪਿੰਡ ਲਖਣ ਲਖਣਾ ਤਪਾ ਤਹਿਸੀਲ ਪੱਟੀ ਉਹਦੇ ਵਿੱਚ ਹੁਣ ਆ ਨੇਤਾ ਜੀ ਬੋਸ ਜਿਹੜੇ ਨੇ ਕਮਾਂਡਰ ਇਨ ਚੀਫ ਜਨਤ ਦੇ ਤੇ ਵੀਰੇ ਹਿੰਦ ਖਿਤਾਬ ਨਾਲ ਕੈਪਟਨ ਪਿਆਰਾ ਸਿੰਘ ਉਹਨਾਂ ਦੀ ਫੋਟੋ ਸਾਂਭੀ ਹੋਈ ਹੈ ਕਿਸੇ ਨੇ ਤੇ ਜਦੋਂ ਆਸਾਮ ਬਰਮਾ ਦੇ ਵਿੱਚ ਜ਼ਖਮੀ ਹੋ ਗਏ ਤੇ ਫਿਰ ਠੀਕ ਜਦ ਹੋਏ ਨਿਤੈਸ਼ਵਾ ਚੰਦਰ ਬੋਸ ਜਿਹੜਾ ਉਹਨਾਂ ਨੂੰ ਅਵਾਰਡ ਦੇ ਰਹੇ ਨੇ ਉਹ ਜਿਹੜਾ ਵੀ ਰਹੇ ਉਹ ਇਹ ਜਿਹੜੀ ਹੁਣ ਫੋਟੋਆਂ ਪੁਰਾਣੀਆਂ ਸਾਂਭ ਕੇ ਰੱਖੀਆਂ ਤੇ ਉਹਨਾਂ ਦੀਆਂ ਫੋਟੋਆਂ ਨੇ 9 9 40 ਦੀ ਜਿਹਦੇ ਵਿੱਚ ਉਹ ਬੈਠੇ ਨੇ ਸਾਰੇ ਸਿੱਖ ਸਰਦਾਰ ਨੇ ਬੜੀਆਂ ਉਹਨਾਂ ਕੋਲ ਰਾਈਫਲਾਂ ਨੇ ਤੇ 9 ਜਣਿਆਂ ਦੀ ਫੋਟੋ ਆ ਸਾਰਿਆਂ ਦੇ ਦਸਤਾਰਾਂ ਸਜਾਈਆਂ ਗਾੜੇ ਪ੍ਰਕਾਸ਼ ਬੰਨੇ ਹੋਏ ਨੇ ਤੇ ਇਹ ਪੁਰਾਣੀ ਫੋਟੋ ਆ 9940 ਮੈਨੂੰ ਹੁਣੇ ਆਪਣੇ ਕਿਸੇ ਲਿਸਨਰ ਨੇ ਭੇਜੀ ਹੈ ਥੈਂਕ ਯੂ ਹਰਮਨਜੀਤ ਦੀ ਦੀ ਦੇ ਕੁਝ ਬੋਲ ਨੇ ਸਿਰਾਂ ਦੀਆਂ ਵੇਲਾਂ ਜਦ ਖਾਲਸਾ ਕਰਾਉਂਦਾ ਏ ਜੰਗ ਦੇ ਮੈਦਾਨਾਂ ਵਿੱਚ ਤੂੰ ਹੀ ਤੂੰ ਹੀ ਗਾਉਂਦਾ ਏ ਇੱਕੋ ਹਲੇ ਵੈਰੀਆਂ ਨੂੰ ਜਾਂਦਾ ਏ ਪਿਛਾੜਦਾ ਜੱਕ ਤੱਕ ਨਾਲ ਮੇਲ ਕਾਦਾ ਤਾੜ ਦਾ ਹੋਵੇ ਸਾਰਾ ਗੜੀ ਭਾਵੇਂ ਗੜੀ ਚਮਕੌਰ ਦੀ ਖਾਲਸੇ ਦਾ ਰਾਜ ਨੱਚੇ ਧਰਤੀ ਲਾਹੌਰ ਦਾ ਜੱਕ ਤੱਕ ਨਾਲ ਮੇਲ ਕਾਦਾ ਤਾੜ ਤਾੜਦਾ ਇਹ ਹਰਮਨਜੀਤ ਰਾਣੀ ਤਾਦੀ ਪੋਇਮ ਤੁਹਾਨੂੰ ਬਹੁਤ ਵਾਰ ਸੁਣਾਈ ਅਗਲੇ ਹਿੱਸੇ 'ਚ ਕੱਲ ਗੱਲ ਕਰਦੇ ਟਿਕਟਾਂ ਦੀ ਮੈਨੂੰ ਬਜ਼ੁਰਗਾਂ ਦੀ ਪੈਸੇ ਥੇਲੇ ਦੀ ਗੱਲ ਯਾਦ ਆ ਗਿਆ ਜਿਉਂ ਉਹਨਾਂ ਦੇ ਹੱਕ ਦੀ ਗੱਲ ਮੈਂ ਇਹ ਕਰਨੀ ਚਾਹੁੰਦਾ ਕਿ ਜਿਹੜੀ ਉਹਨਾਂ ਨੂੰ ਪੈਨਸ਼ਨ ਲੱਗਦੀ ਹੈ ਦੇਖੋ ਸਾਰਿਆਂ ਨੂੰ ਪਤਾ ਹੈ 65 ਸਾਲ ਦੀ ਉਮਰ ਤੇ 10 ਸਾਲ ਇੱਥੇ ਆਇਆਂ ਨੂੰ ਹੋਣੇ ਚਾਹੀਦੇ ਹੈ 올ਡ 에ਜ ਪੈਨਸ਼ਨ 100 150 ਡਾਲਰ ਹੈ ਨਾਲ ਸਪਲੀਮੈਂਟ 950 ਡਾਲਰ ਹੈ ਉਹ ਕੰਮ ਦੇ ਹਿਸਾਬ ਨਾਲ ਜੇ ਤੁਸੀਂ ਨਹੀਂ ਕੰਮ ਕਰਦੇ ਵੱਧਾ ਘਟਦਾ ਐਵਰੇਜ 1000 ਡਾਲਰ ਬਜ਼ੁਰਗਾਂ ਨੂੰ ਕੱਲਿਆਂ ਨੂੰ ਪੈਨਸ਼ਨ ਆਉਂਦੀ ਹੈ ਵੱਧ ਵੀ ਹੋ ਸਕਦੀ ਹੈ ਕੰਮ ਦੀ ਆਉਂਦੀ ਹੈ ਹੁਣ ਕਿਉਂਕਿ ਸਾਡੇ ਇਹ ਬਜ਼ੁਰਗ ਜਿਹੜੇ ਨੇ ਪੰਜਾਬ ਤੋਂ ਆਏ ਨੇ ਉਹ ਬੈਂਕਾਂ ਦੇ ਜਾਂ ਪੜ੍ਹਾਈ ਦੇ ਜਾਂ ਜਾ ਕੇ ਸਾਰੇ ਉੱਥੇ ਜਾਣ ਦੇ ਕਾਬਿਲ ਨਹੀਂ ਸਾਰੇ ਜਾਂਦੇ ਵੀ ਨਹੀਂ ਹੋਣ ਗਿਆ ਅੱਧ ਦਾ ਫਰਕ 50% ਤਾਂ ਜਾ ਖੜ ਜਾਂਦੇ ਜਾ ਕੇ ਲੈਨ ਚ ਉੱਥੇ ਵੀ ਪੰਜਾਬੀ ਬੋਲਣ ਵਾਲੀ ਬੰਦਿਆਂ ਨੂੰ ਅੱਗੇ ਤੋਰੀ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਪੰਜਾਬੀ ਬੋਲਣ ਵਾਲੀ ਉਹ ਉਹ ਬੋਲਣ ਵਾਲਾ ਤੇ ਜਾਂ ਬੋਲਣ ਵਾਲੀ ਲੜਕੀ ਹੈ ਬੈਂਕਾਂ ਨੇ ਸਾਰੀਆਂ ਸਹੂਲਤਾਂ ਦੇਤੀਆਂ ਬੱਚਿਆਂ ਫੇਰ ਬਾਬਾ ਜੀ ਕਹਿ ਕੇ ਪੁੱਛਦੀਆਂ ਤੁਸੀਂ ਕਿੰਨੇ ਪੈਸੇ ਲੈਣੇ ਨੇ 20 ਬੀ ਦੇ ਬਿੱਲ ਦੇ ਦੇਵਾ ਫੇਰ ਉਹ ਹੌਲੀ-ਹੌਲੀ ਬੋਲ ਕੇ ਹਾਂ ਭਾਈ ਦੇ ਦੇ ਫੇਰ ਉਹ ਤਾਂ ਹੈ ਅੱਛਾ 50% ਉਹ ਨੇ ਜਿਨ੍ਹਾਂ ਨੇ ਜੋਇੰਟ ਅਕਾਊਂਟ ਕਰਾ ਲੇ ਓਕੇ ਅਕਾਊਂਟ ਲਈ ਕੋਈ ਸ਼ਰਤ ਨਹੀਂ ਕੋਈ ਵੀ ਦੋ ਜਣੇ ਰਲ ਕੇ ਜੋਇੰਟ ਅਕਾਊਂਟ ਕਰਵਾ ਸਕਦੇ ਜੋਇੰਟ ਅਕਾਊਂਟ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਕਾਰਡ ਵਗੈਰਾ ਜਿਹੜੀ ਇਨਫਰਮੇਸ਼ਨ ਹੋਣੀ ਆ ਉਹ ਘਰ ਚਾਹਣੀ ਤੇ ਘਰ ਦੀ ਮੇਲ ਘਰ ਦੇ ਮੈਂਬਰਾਂ ਲਈ ਆ ਹੁਣ ਮੈਂ ਉਹਦੇ ਚ ਪੁੱਤ ਜਾਂ ਧੀ ਜਾਂ ਜਵਾਈ ਅਲੱਗ-ਅਲੱਗ ਨਹੀਂ ਕਹਿ ਸਕਦਾ ਕਿ ਕੋਈ ਇਉਂ ਨਾ ਸੋਚੇ ਕਿ ਸਾਨੂੰ ਟਾਰਗੇਟ ਕਰ ਰਿਹਾ ਉਹ ਪੈਨਸ਼ਨਾਂ ਜਿਹੜੀਆਂ ਬਜ਼ੁਰਗਾਂ ਨੂੰ ਉਹਦੇ ਵਿੱਚੋਂ ਦੁਆਨੀ ਨਹੀਂ ਦਿੱਤੀ ਜਾਂਦੀ ਇੱਕ ਤਾਂ ਗੱਲ ਇਹ ਹੈ ਕਿ ਉਹ ਪੈਸੇ ਇਕੱਠੇ ਬਜ਼ੁਰਗ ਆਪਣੇ ਕੋਲ ਰੱਖਦੇ ਐ ਉਹ ਆਪਣੇ ਧੀ ਪੁੱਤਾਂ ਨੂੰ ਦਿੰਦੇ ਆ ਜਦ ਇਕੱਠੀ ਹੋ ਰਹੀ ਆ ਮੀਆਂ ਬੀਬੀ ਦੀ 22200 ਪੈਨਸ਼ਨ ਆ ਦੇ ਵਿੱਚੋਂ ਖਰਚਾ ਬੱਚੇ ਖੋਦਾਰੀ ਦੇ ਵਿੱਚ ਨੇ ਉਹ ਸਾਲ ਦਾ 20-25000 ਹੈ ਤਾਂ ਤੁਹਾਡੀ ਦੇ ਲਈ ਦੇ ਵਿੱਚੋਂ 5-4 ਕਢਾ ਕੇ ਪੰਜਾਬ ਨੂੰ ਚਲੇ ਜਾਂਦੇ ਆ ਉੱਥੇ ਜ਼ਮੀਨ ਜਾਇਦਾਦ ਦਾ 10 ਵੀ ਜਮਾ ਲਾ 5 ਸਾਲਾਂ ਬਾਅਦ ਲੱਖ ਡਾਲਰ ਇਕੱਠਾ ਹੋ ਜਾਂਦਾ ਉਹ ਕੋਈ ਘਰ ਲੈਣਾ ਬੱਚੇ ਨੇ ਕੋਈ ਗੱਡੀ ਲੈਣੀ ਜਾਂ ਪੁੱਤੇ ਦੋ ਧੀਆ ਕੋਈ ਪਰਨਚਰਲੇ ਨੇ ਉਹਨਾਂ ਦੀ ਮਦਦ ਕਰ ਦਿੰਦੇ ਆ ਇੱਕ ਤਾਂ ਗੱਲ ਹੈ ਇਹ ਇੱਕ ਮੈਨੂੰ ਭਾਈਚਾਰੇ ਚੋਂ ਨੇ ਉਹ ਆਪਣੇ ਮਾਪਿਆਂ ਦਾ ਸ਼ੋਸ਼ਣ ਕਰ ਰਹੇ ਆ ਉਹਨਾਂ ਨੂੰ ਕੁਝ ਨਹੀਂ ਦੇ ਰਹੇ ਨਾ ਤਾਂ ਕੋਈ ਜਾਣਕਾਰੀ ਦਿੰਦੇ ਆ ਨਾ ਮਾਪਿਆਂ ਨੂੰ ਇਹ ਪਤਾ ਵੀ ਕਿਹੜੀ ਬੈਂਕ ਦੇ ਵਿੱਚ ਸਾਡੇ ਅਕਾਊਂਟ ਨੇ ਕਿੰਨੇ ਪੈਸੇ ਸਾਨੂੰ ਆਉਂਦੇ ਆ ਉਹ 20 50 100 ਡਾਲਰ ਉਹਨਾਂ ਦੇ ਕਿਸੇ ਪਾ ਦਿੰਦੇ ਆ ਉਹ ਬੈਠੇ ਆ ਤੇ ਉਹ ਜਿਹੜੇ ਨਾ ਫਰੀਦਕ ਤੌਰ ਤੇ ਜਿਨ੍ਹਾਂ ਨੂੰ ਜਾਣਾ ਔਖਾ ਲਾ ਲੋ ਤੇ ਜਾਂ ਜਿਨ੍ਹਾਂ ਨੂੰ ਬੈਂਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਨੀ ਔਖੀ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਹੁਣ ਸਰਕਾਰੀ ਦਵਾਰੇ ਕੋਈ ਅਜਿਹੀ ਗੱਲ ਨਹੀਂ ਮੈਂ ਪਤਾ ਕੀਤਾ ਜਿਸ ਨਾਲ ਉਹ ਸ਼ੋਰ ਕਰ ਸਕਣ ਕਿ ਇਹ ਜਿਹੜੀ ਜਿਹਨੂੰ ਪੈਨਸ਼ਨ ਮਿਲਦੀ ਆ ਉਹਨੂੰ ਹੀ ਇਸ ਇਸ ਤੇ ਕੰਟਰੋਲ ਚਾਹੀਦਾ ਇਹੋ ਜਿਹਾ ਕੁਝ ਹੈ ਨਹੀਂ ਇਹ ਹੋਣਾ ਚਾਹੀਦਾ ਇਹ ਕਾਫੀ ਗੱਲ ਬਾਹਰ ਚੱਲ ਰਹੀ ਹੈ ਕਿ ਜਿਹੜੇ ਮਾਪਿਆਂ ਨੂੰ ਪੈਨਸ਼ਨ ਲੱਗੀ ਹੈ ਤੇ ਉਹਨਾਂ ਦੀ ਪੈਨਸ਼ਨ ਤੇ ਕੰਟਰੋਲ ਕੰਟਰੋਲ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾਗਾ ਹਾਂ ਧੀ ਪੁੱਤ ਦੋਤੇ ਕੋਈ ਵੀ ਹੋ ਸਕਦੇ ਆ ਕਰਦਾ ਉਹ ਤਾਂ ਫਿਰ ਬਹੁਤ ਨੂੰ ਖਰਚੇ ਨੂੰ ਕੋਈ ਪੈਸਾ ਨਹੀਂ ਮੰਨਦਾ ਹਾਲੀ ਹੋ ਰਹੇ ਰਹ ਰਹੇ ਨੇ ਬੈਠਿਆ ਜਿਹੜੇ ਮੰਜੇ ਤੇ ਬਿਸਤਰੇ 'ਚ ਬੈਠੇ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਜਿਹੜੇ ਤਾਂ ਆਪ ਕੰਟਰੋਲ ਕਰਦੇ ਆ ਉਹਨਾਂ ਦੀ ਤਾਂ ਚੜਸ ਹੈ ਉਹਨਾਂ ਤਾਂ ਖੀਸੇ ਭਰੇ ਹੋਏ ਨੇ 20-20 ਦੇ ਤੇ ਭੂਰੀ ਰੰਗੇ ਭੂਰੀ ਕੀੜੀ ਰੰਗੇ ਨੋਟਾਂ ਨਾਲ ਤੇ ਚਿਕੰਦਰ ਰੰਗੇ ਨੋਟਾਂ ਨਾਲ ਉਹ ਨਹੀਂ ਕਿਸੇ ਨੇ ਵੀ ਅੱਜ ਗਰਮੀ ਬਹੁਤ ਆ ਫਿਰਾਂਗੇ ਬਈ ਅਸੀਂ 4 ਵਜੇ ਪੀਨੇ ਆ ਸੀ 3 ਵਜੇ ਪੀਨੇ ਆ ਸੇ ਪਊਆ ਲੈ ਕੇ ਬਾਥਰੂਮ ਚ ਜਾ ਵਰਦੇ ਆ ਇਹ ਜਾ ਕੁਝ ਬਹੁਤ ਮਾਨ ਨਾਲ ਦੱਸਦੇ ਆ ਦਿਨੇ ਪੀਦੀ ਆ ਸੀ ਸ਼ਰਾਬ ਦਾ ਹੀ ਨਹੀਂ ਰੌਲਾ ਮੁੱਕਿਆ ਹਲੇ ਤੱਕ ਤੇ ਕਈ ਵੈਲ ਡਰੈਸਡ ਬਜ਼ੁਰਗ बहुत ਵਧੀਆ ਕੱਪੜੇ ਪਾ ਕੇ ਰੂਹ ਖੁਸ਼ ਹੁੰਦੇ ਆ 1000 ਡਾਲਰ ਤੁਹਾਨੂੰ ਖਰਚਣ ਨੂੰ ਮਿਲਿਆ ਉਹਨੂੰ ਖਰਚੋ ਸ਼ਰਾਬ ਇਹ ਪੀਣ ਨੂੰ ਤਾਂ ਨਹੀਂ ਮਿਲਦਾ ਉਹ ਉਹਨੂੰ ਖਰਚੋ ਧੀਆਂ ਪੋਤਾਂ ਨੂੰ ਦਿਓ ਜੇ ਦੇਣ ਦੇਣੇ ਤਾਂ ਆਪਣੀ ਜੇਬ ਚ ਰੱਖੋ ਪਿੱਛੇ ਜੇ ਪੈਲੀ ਹੈ ਉਹ ਇਹ ਜਿਹੜਾ 5-5 ਮਹੀਨੇ ਬਾਅਦ ਆ ਕੇ ਜਮ੍ਹਾਂ ਹੋਈ ਹੁੰਦੀ ਆ ਨਾ ਵੀ ਆ ਕੇ 11-12000 ਜਮ੍ਹਾਂ ਹੋ ਗਿਆ ਨਜ਼ਾਰਾ ਲੈਨੇ ਹੋ ਤੇ ਪੈਸਿਆਂ ਦੀ ਕਮੀ ਉਹ ਕੋਈ ਨਹੀਂ ਠੀਕ ਹੈ ਮੈਂ ਕੀਤੀਆਂ ਹੋਰਾਂ ਨੂੰ ਵੀ ਮਿਲਦੀ ਆ ਕਿ ਸਾਡੇ ਬਜ਼ੁਰਗਾਂ ਨੂੰ ਨਹੀਂ ਮਿਲਦੀ ਇਹਦੀ ਮੈਨੂੰ ਕੋਈ ਤੰਗੀ ਨਹੀਂ ਤੇ ਗੱਲ ਇਹ ਹੈ ਵੀ ਜਿੱਥੇ ਤੁਹਾਡੇ ਮਿਲੇ ਪੈਸਿਆਂ ਦਾ ਤੁਹਾਡੇ ਤੇ ਕੰਟਰੋਲ ਹੈ ਨਹੀਂ ਉਹਦਾ ਹੀਲਾ ਕੀ ਹੋਵੇ ਸਰਕਾਰ ਕਹਿੰਦੀ ਅਸੀਂ ਤਾਂ ਲਾਤੇ ਫਲਾਣੇ ਬੰਦੇ ਨੂੰ ਲਾਤੇ ਉਹਨੂੰ ਮਿਲ ਗਏ ਉਹਨੂੰ ਅਕਾਊਂਟ ਦੇ ਵਿੱਚ ਉਹਨੇ ਖੋਲਿਆ ਜਾ ਕੇ ਤੇ ਉਹ ਅਕਾਊਂਟ ਤੇ ਜਮ੍ਹਾਂ ਹੋ ਰਹੀ ਹੈ ਪੈਨਸ਼ਨ ਹੁਣ ਅਕਾਊਂਟ ਤੇ ਇਸ ਗਰੇ ਏਰੀਆ ਚ ਰੈੱਡ ਤੇ ਗਰੀਨ ਦੇ ਵਿੱਚ ਅਕਾਊਂਟ ਦੇ ਉੱਪਰ ਬਾਅਦ ਫਿਰ ਸ਼ਰਾਰਤੀ ਬੰਦੇ ਜਿਹੜੇ ਕਹਿੰਦੇ ਲੈ ਬਾਪੂ ਕਾਰਡ ਤਾਂ ਫੜਾ ਕਈਆਂ ਨੂੰ ਤਾਂ ਕਾਰਡ ਹੀ ਨਹੀਂ ਪਤਾ ਵੀ ਕੋਈ ਕਾਰਡ ਆਇਆ ਕਿਉਂਕਿ ਕਾਗਜ਼ ਪੱਤਰ ਸਾਰਾ ਬੈਂਕਾਂ ਚੋਂੜਾ ਜਾਂ ਕਈ ਕਾਰਡ ਬਣਾ ਕੇ ਆ ਸ਼ਪਾ ਕੇ ਆਪਣੀਆਂ ਚੈੱਕ ਨੇ ਜਿਹੜੀਆਂ ਜਿਹੜੇ ਨੇ ਪੰਜਾਬੀਆਂ ਦੇ ਉਹਨਾਂ ਤੇ ਦਸਕਤ ਜਾਂ ਕੂਠੇ ਲਵਾ ਲੈਂਦੇ ਨੇ ਬਜ਼ੁਰਗਾਂ ਦੇ ਉਹਦੇ ਬਾਅਦ ਚਾਰੇ ਚੜੇ ਮਹੀਨੇ 800 900 ਕੱਢ ਕੇ ਆਪਣੇ ਅਕਾਊਂਟ 'ਚ ਤੇ ਬਜ਼ੁਰਗਾਂ ਕੋ 200 ਰਹਿ ਜਾਂਦਾ ਉਹ 'ਚ ਕੱਢ ਕੇ ਦੇ ਦਿੰਦੇ ਹੋਣਗੇ ਮੈਨੂੰ ਲੱਗਦਾ ਉਹ ਵੀ ਨਹੀਂ ਦਿੰਦੇ ਹੋਣ ਜਿਹੜੇ ਕਰਦੇ ਆ ਧੱਕਾ ਉਹਨਾਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਸਾੰਬਦੇ ਆ ਉਹਨਾਂ ਪੈਸਿਆਂ ਨਾਲ ਚਾਹੇ ਉਹ ਕਢਾਉਂਦੇ ਆ ਪਰ ਉਹ ਜੇ ਨਹੀਂ ਜਾ ਸਕਦੇ ਮਾਵਾ ਨਹੀਂ ਜਾਂਦੀਆਂ ਬਹੁਤਾਤ 'ਚ ਮਾਵਾ ਨਹੀਂ ਜਾਂਦੀਆਂ ਉਹਨਾਂ ਦੇ ਜਿ ਕਢਾ ਕੇ ਉਹਨਾਂ ਨੂੰ ਮਾਣ ਦਿੰਦੇ ਐ ਜਾਂ ਉਹਨਾਂ ਦੇ ਪੈਸੇ ਸਾਹਮਣੇ ਪਏ ਐ ਉਹਨਾਂ ਨੂੰ ਸਲੂਟ ਐ ਜਿਹੜੇ ਖੁਦ ਕਰਦੇ ਆ ਉਹ ਤਾਂ ਖੁਦਬਖਤਿਆਰੀ ਕੰਟਰੋਲ ਕਰ ਰਹੇ ਨੇ ਨਾ ਮਿਰਦਾ ਮਾਪਿਆਂ ਨੂੰ ਤੇ ਵਰਤ ਤੁਸੀਂ ਰਹੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਇਹ ਤਾਂ ਮਰਜ਼ੀ ਐ ਫਿਰ ਕੋਈ ਦੁੱਖ ਨਹੀਂ ਉਹਨਾਂ ਨੇ ਕਢਾ ਕੇ ਲਿਆ ਤੇ ਤੁਸੀਂ ਕਢਾ ਲੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਜਿਹੜਾ ਤੁਸੀਂ ਧੱਕਾ ਕਰਦੇ ਹੋ ਇਹ ਬਹੁਤ ਘਾਤਕ ਹੋਊਗਾ ਯਾਦ ਰੱਖਿਓ ਇਹ ਪੁੰਨ ਤੇ ਪਾਪ ਚ ਨਹੀਂ ਮੈਂ ਵਰਦਾ ਪਰ ਇਹ ਗੱਲ ਸੱਚ ਐ ਇਸ ਦੁਨੀਆ ਚ ਹੁਣ ਕੀਤੀਆਂ ਇੱਕ ਹੱਥ ਨਾਲ ਦੂਜੇ ਹੱਥ ਨਾਲ ਜਿਹੜੀਆਂ ਦੇਣੀਆਂ ਹੀ ਪੈਣੀਆਂ ਬਾਹਲਾ ਲੰਮਾ ਸਮਾਂ ਨਹੀਂ ਇਹ ਜਾਂਦਾ ਦੇਖੋ ਵਿਆਹ ਸ਼ਾਦੀ ਉਹਨਾਂ ਨੇ ਕੀਤੀ ਉਹਨਾਂ ਨੇ ਮੂੰਹ ਨਾਲ ਹੋਈ ਉਸ ਤੋਂ ਬਾਅਦ ਜੇ ਪੜ੍ਹੇ ਹੋ ਪੁਆਇੰਟ ਸਿਸਟਮ ਤੇ ਉਹਨਾਂ ਨੇ ਪੜ੍ਹਾਈ ਕੀਤੀ ਜਾਇਦਾਦ ਤੁਹਾਡੀ ਉਹਨਾਂ ਦੇ ਪਿੱਛੇ ਤੁਹਾਡੇ ਨਾਂ ਲੱਗੀ ਹੋਈ ਹੈ ਹੁਣ ਇੱਥੇ ਦੀ ਸਰਕਾਰ ਤੁਸੀਂ ਤਾਂ ਕੁਝ ਦੇਣਾ ਨਹੀਂ ਫਰਜ਼ ਤਾਂ ਪੁੱਤਾਂ ਦਾ ਬਣਦਾ ਵੇ ਬਪੂ ਜਿਹੜੀ ਆਉਂਦੀ ਆ ਪੈਨਸ਼ਨ ਆਉਂਦੀ ਆ ਆ ਫਿਰੋ 500 ਡਾਲਰ ਅੱਡ ਇਹ ਜੇਬ ਚ ਰੱਖਿਆ ਕਰੋ ਆਉਂਦੇ ਜਾਂਦੇ ਕੋਈ ਸਮਾਨ ਲਿਉਣਾ ਹੋਵੇ ਘਰ ਦਾ ਤੇ ਤੁਸੀਂ ਜਿੰਦਾ ਘਰ ਦਾ ਇਹ ਜਿੰਦੇ ਨੇ ਜਿਹੜੇ ਜਨ ਉਹਨਾਂ ਦੀਆਂ ਚਾਬੀਆਂ ਆਪ ਰੱਖ ਲੈਨੇ ਹੋ ਆਪ ਖੋਲਦੇ ਹੋ ਇਹ ਤੱਕਾ ਹੈ ਸਰਾਸਰ ਤੱਕਾ ਮੈਂ ਤਾਂ ਚਾਹੁੰਦਾ ਸਰਕਾਰ ਨੂੰ ਚਾਹੀਦਾ ਵੀ ਜਿੰਨੇ ਇਹ ਪੈਨਸ਼ਨਾਂ ਵਾਲੇ ਆ ਉਹਨਾਂ ਦੇ ਨਾਲ ਡਾਇਰੈਕਟ ਗੱਲ ਕਰਕੇ ਉਹਨਾਂ ਨੂੰ ਪੁੱਛਿਆ ਜਾਵੇ ਪੈਸਾ ਤੇਲਾ ਤੁਹਾਨੂੰ ਪਤਾ ਕਿੰਨਾ ਆਉਂਦਾ ਤੁਹਾਨੂੰ ਬਹੁਤਾਤ ਬਜ਼ੁਰਗਾਂ ਨੂੰ ਇਹ ਵੀ ਨਹੀਂ ਪਤਾ ਪੈਨਸ਼ਨ ਕਦ ਲੱਗੀ ਆ ਮੈਨੂੰ ਤੇ ਕਿੰਨੀ ਮੈਨੂੰ ਮਿਲਦੀ ਉਹਨਾਂ ਦਾ ਕੰਟਰੋਲ ਧੀਆ ਪੁੱਤਾਂ ਕੋਲ ਆ ਜੇ ਧੀ ਨੇ ਕਿਸੇ ਨੇ ਮਾਪੇ ਰੱਖੇ ਹੋਏ ਨੇ ਉਹਨਾਂ ਕੋਲ ਆ ਜੇ ਪੁੱਤ ਕੋਲ ਨੇ ਤਾਂ ਪੁੱਤ ਕੋਲ ਉਹ ਕਹਿੰਦਾ ਬਾਪੂ ਤੈਂ ਕੀ ਕਰਨਾ ਕਾਰ ਯਾਰ ਉਰੇ ਫੜਾ ਬੇਬੀ ਤਾਂ ਬੇਬੀ ਤੂੰ ਕੀ ਕਰਨਾ ਕਾਰ ਅੱਛਾ ਇੱਕ ਤਾਂ ਇਹ ਹੋ ਗਈ ਦੂਜੀ ਇਹ ਜਿਹੜੇ ਬਜ਼ੁਰਗ ਨੇ ਉਹ ਮਾਮਾ ਨੂੰ ਦੁਆਨੀ ਨਹੀਂ ਦਿੰਦੇ ਬਰਾਬਰ ਦੀ ਉਹਨਾਂ ਨੂੰ ਪੈਨਸ਼ਨ ਆਉਂਦੀ ਆ ਆ ਆਇਆ ਕੱਖ ਨਹੀਂ ਤੈਨੂੰ ਕੀ ਦੇ ਜਾਣਾ ਹੁਣ ਬੈਂਕਾਂ ਬਣਵਾਉਣ ਘਰੇ ਬੈਠ ਆਰਾਮ ਨਾਲ ਹਲੇ ਵੀ ਬੋਲਦੇ 22300 ਡਾਲਰ ਤੇ ਜੁਆਇੰਟ ਅਕਾਊਂਟ ਚ ਕੰਟਰੋਲ ਆਪਣਾ ਹੀ ਐ ਲੈ ਫਰਸਾ ਬਹੁਤ ਹੈ ਜਾ ਕੇ ਦੇਈ ਨਹੀਂ ਜਿਹੜਾ ਦੇਣਾ ਐਉਂ ਕਹੀ ਜਾਂਦੇ ਉਹਨਾਂ ਦਾ ਜੇ 1000 ਮਿਲਦਾ ਤਾਂ 1000 ਉਹਨਾਂ ਦਾ ਹੱਕ ਹੈ ਤੇ 100 ਤੇ ਕਿਉਂ ਹੱਕ ਹੈ ਤੁਸੀਂ ਲਾਲੇਦਾਰ ਵੱਡੇ ਜਿਹੜੇ ਬਣੇ ਆ ਉੱਥੇ ਵੀ ਉਹਦਾ ਕੁਝ ਨਹੀਂ ਬਣਦਾ ਪਹਿਲਾਂ ਮਾਪਿਆਂ ਦੇ ਘਰੇ ਕੱਖ ਨਹੀਂ ਜਵਾਨ ਹੋ ਕੇ ਸਹੁਰਿਆਂ ਦੇ ਘਰੇ ਆ ਗਈ ਜੁਆਕ ਜੰਮ ਤੇ ਵੱਡੇ ਹੋ ਗਏ ਵਿਆਹੇ ਗਏ ਸਹੁਰਿਆਂ ਦੇ ਘਰ ਉਹਦੀ ਮਲਕੀਅਤ ਨਹੀਂ ਹੁਣ ਇੱਥੇ ਆ ਗਏ ਇੱਥੇ ਫੇਰ ਮਲਕੀਅਤ ਨਹੀਂ ਉਹਦੀ ਮਲਕੀਅਤ ਕਦ ਹੋਊ ਗਈ ਜਿਹੜੀ ਸਾਰਾ ਘਰ ਦੀ ਮਾਲਕਣਾ ਜਿਹਨੇ ਸਾਰਾ ਕੁਝ ਕੀਤਾ ਮਾਪਿਆਂ ਦੇ ਘਰੇ ਉਹਨੂੰ ਤਾਂ ਨਹੀਂ ਵਿਚਾਰੀ ਨੂੰ ਮਿਲਦਾ ਉਹਨੂੰ ਕਹਿੰਦੇ ਤੈਨੂੰ ਤੇਰਾ ਵਿਆਹ ਹੋ ਗਿਆ ਹੁਣ ਤੇਰੇ ਘਰ ਵਾਲਾ ਦਊ ਘਰ ਵਾਲਾ ਕਹਿੰਦਾ ਬੁੜੀਆਂ ਦੇ ਨਾਂ ਥੋੜਾ ਕੁਝ ਕਰਾਈ ਦੇ ਮੁੰਡਿਆਂ ਨੂੰ ਸਿੱਧੀ ਦੇ ਦੇ ਤੇਰੇ ਨਾਂ ਕਿੰਨੇ ਬਹੁਤ ਘਰਾ ਚ ਇਹ ਹੋਇਆ ਜਿਹਦੇ ਮਾਂ ਦੇ ਕੁਛ ਨਾਉ ਨਹੀਂ ਰੱਬ ਨਾ ਕਰੇ ਪਿਤਾ ਦੀ ਡੈਥ ਹੋ ਗਈ ਕਿਸੇ ਦੀ ਮਾਮਾ ਰੁਲਦੀਆਂ ਫਿਰਦੀਆਂ ਜਿਹਦੇ ਨਾਉ ਨਹੀਂ ਕੁਛ ਜਿਹਦੇ ਨਾਉ 5 7 ਕਿਲੇ ਨੇ ਉਹ ਫਿਰ ਬੈਠ ਕੇ ਟੋਕ ਮਾਂ ਨਾਲ ਖਾਂਦੀ ਆ ਵੀ ਮੈਂ ਤਾਂ ਦਊ ਅਖੀਰ ਚ ਮੇਰੀ ਵਸੀਅਤ ਲਿਖਿਆ ਫੇਰ ਮਿਲੂ ਜਿਹੜੇ ਵਿਗੜੇ ਹੋਏ ਆ ਜਿਹੜੇ ਦਾਨੇ ਪੁੱਤਾਂ ਦੀ ਦਾਸਤਾਂ ਉਹਨਾਂ 'ਚ ਕੋਈ ਕਹਾਣੀ ਉਹ ਹੈ ਨਹੀਂ ਕੋਈ ਫਰਕੇ ਹੈ ਇਹ ਪੈਨਸ਼ਨ ਵਾਲਾ ਜਿਹੜਾ ਰੇਟ ਕਹੇ ਭਾਈ ਦੇ ਵਿੱਚ ਬਜ਼ੁਰਗਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਜਿਨ੍ਹਾਂ ਦੀ ਪੈਨਸ਼ਨ ਉਹਨਾਂ ਦੇ ਬਾਲ ਬੱਚੇ ਜਾਂ ਧੀਆ ਪੁੱਤ ਜਵਾਈਆਂ ਦੇ ਜਾਂ ਕਿਸੇ ਦੇ ਭਤੀਜਿਆਂ ਦੇ ਕਿਸੇ ਦੇ ਹੱਕ 'ਚ ਕਈਆਂ ਨੇ 50 50 60 70 70 ਹਜ਼ਾਰ ਇਕੱਠੀ ਹੋਈ ਪੈਨਸ਼ਨ ਕਢਾ ਕੇ ਮਾਵਾ ਘਰੋਂ ਕੱਢਤੀਆਂ ਦੂਜੇ ਸ਼ਹਿਰਾਂ 'ਚ ਬੈਠੀਆਂ ਗਾਂ ਪੋਤੇ ਪੋਤ ਜਵਾਈਆਂ ਕੋਲ ਇਹ ਵੀ ਭਾਈਚਾਰੇ 'ਚ ਗੱਲ ਚੱਲਦੀ ਹੈ। ਇਹ ਬਹੁਤ ਮੁਸ਼ਕਲ ਦੀ ਕਹਾਣੀ ਹੈ। ਇਹ ਧੱਕਾ ਤੁਸੀਂ ਬੰਦੇ ਜਿਹੜੇ ਆਪਾਂ ਕਰ ਰਹੇ ਆਂ ਜਿਹੜੇ ਕਰ ਰਹੇ ਪਹਿਲੀ ਤਾਂ ਗੱਲ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਆ ਤੁਹਾਡਾ ਉਹਦੇ ਤੇ ਹੱਕ ਆ। ਤੁਸੀਂ ਉਹ ਚੋਂ 100 ਕਢਾਓ, ਤੁਸੀਂ 5 ਕਢਾਓ, ਤੁਸੀਂ 7 ਕਢਾਓ। ਖੁਸ਼ੀ 'ਚ ਉਹਦੇ ਨਾਲ ਉਹਦੇ ਚੋਂ ਤੁਸੀਂ ਆਪਣੇ ਬੱਚਿਆਂ ਨੂੰ ਦਓ ਇਹ ਤੁਹਾਡੀ ਖੁਸ਼ੀ ਹੈ। ਨੰਬਰ 2 ਮਾਮਾ ਦਾ ਬਰਾਬਰ ਦਾ ਹੱਕ ਹੈ ਬਜ਼ੁਰਗੋ ਤੁਸੀਂ ਮਾਮਾ ਨੂੰ ਜਿਹੜੀਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਆਈਆਂ ਪਾੜੀਆਂ ਪੈਰਾਂ ਤੇ ਹੱਥ ਦੀਆਂ ਸੁਆਹ ਮਲਦੀਆਂ ਭਾਂਡਿਆਂ ਤੇ ਪੋਚੇ ਫੇਰਦੀਆਂ ਉਹਨਾਂ ਦਾ ਵੀ ਹੱਕ ਬਰਾਬਰ ਹੈ ਉਹਨਾਂ ਦੇ ਹੱਥ ਤੇ ਹੱਤ ਮਾਰ ਕੇ ਤੁਸੀਂ ਕਹਿੰਦੇ ਤੈਂ ਕੀ ਕਰਨਾ ਪੈਸਾ ਤੁਸੀਂ ਕਿੱਧਰ ਨੂੰ ਚੰਦ ਤੇ ਜਾਣਾ ਹੁਣ ਬਈ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਨੰਬਰ 2 ਨੰਬਰ 3 ਜਿਨ੍ਹਾਂ ਨੇ ਬਿਲਕੁਲ ਹੀ ਖਾਤੇ ਸਾਂਝੇ ਕੀਤੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਦ ਪੈਨਸ਼ਨ ਆਉਂਦੀ ਹੈ ਕਿੰਨੀ ਆਉਂਦੀ ਹੈ ਹੁਣ ਸਪਲੀਮੈਂਟ ਕਿੰਨਾ ਆਉਂਦਾ ਤੇ ਕੀ ਕਹਾਣੀ ਹੈ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵਪਾਰਕ ਸਨੇਸ਼ਰ ਬਾਅਦ ਤੁਹਾਡੇ ਕੋਈ ਸੁਝਾਅ ਤੁਹਾਨੂੰ ਇਸ ਗੱਲ ਦਾ ਤੁਹਾਡੇ 'ਚ ਪਤਾ ਹੋਵੇ ਕਈ ਫੋਨ ਕਾਲਸ ਪਿਛਲੇ 1 ਮਹੀਨੇ 'ਚ ਆਏ ਇਸ ਸੰਬੰਧੀ ਉਹ ਗੱਲ ਕਰਨ ਔਰ ਆਪਾਂ ਨੂੰ ਪਤਾ ਵੀ ਹੈ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਹ ਚੀਜ਼ਾਂ ਉੱਥੇ ਵੀ ਨਹੀਂ ਸੀ ਇੱਥੇ ਵੀ ਨਹੀਂ ਸੀ ਮਾਪਿਆਂ ਦੇ ਘਰੇ ਵੀ ਨਹੀਂ ਸੀ ਇੱਥੇ ਵੀ ਆਕੇ ਨਾ ਹੋਈਆਂ ਜਿਹੜੇ ਕਰਦੇ ਐ ਕਈ ਘਰਾਂ ਦੇ ਵਿੱਚ ਬੰਦੇ ਕੰਮ ਕਰਦੇ ਐ ਤੇ ਸਰਕਾਰੀਆਂ ਕੋਲੇ ਸਾਰਾ ਖਾਤਾ ਐ ਉਹਨਾਂ ਨੇ ਕਢਾਉਣਾ ਉਹਨਾਂ ਨੇ ਕਰਨਾ ਐ ਕਈ ਤਾਂ ਉਸ ਤਰ੍ਹਾਂ ਕਹਾਣੀ ਠੀਕ ਐ ਘਰ ਬੰਨੇ ਹੋਏ ਨੇ ਕਈਆਂ ਦਾ ਜਿੱਥੇ ਕੰਟਰੋਲ ਐ ਉਥੇ ਪੁੱਠੇ ਸਿੱਦੇ ਜੇ ਨੌਂ ਨੇ ਪਰਸਾਂ ਦੇ ਖਾਣੇ 1000 11 1100 ਦਾ ਆਉਂਦਾ ਉਧਰ ਬਟਾਨ ਸ਼ਟਾਨ ਪਤਨੀ ਕੀ ਨੌਂ ਨੇ ਮੈਨੂੰ ਤਾਂ ਕਈ ਵਾਰ ਬੋਲਣਾ ਵੀ ਨਹੀਂ ਆਉਂਦਾ ਇਹ ਜੇ ਨੌਂ ਨੇ ਉਹ ਫਿਰ ਹੱਥ 'ਚ ਲਮਕਦਾ ਪਰਸ ਤੋਰੀ ਵਾਂਗੂ ਉਹਦੇ ਤੇ ਬਾਹਰਲੇ ਬੰਨੇ ਨੌਂ ਲਿਖਿਆ ਉੱਥੋਂ ਪਤਾ ਲੱਗਦਾ ਵੀ ਇਹ 1100 ਦਾ ਹੈ ਜਿਹੜਾ ਟਰੱਕ ਤੋਂ ਆਇਆ ਪੰਜਵੇਂ ਦਿਨ ਉਹਨੂੰ ਪੁੱਛ ਕੇ ਦੇਖਿਓ ਵੀ 1100 ਬੰਦਾ ਕਿਵੇਂ ਨੰਬਰ 2 ਤੇ ਜਿਨ੍ਹਾਂ ਨੂੰ ਇਹ ਪੈਨਸ਼ਨ ਤੇ ਨੌ ਤੇ ਜਿਨ੍ਹਾਂ ਨਾਲ ਐਕਸਪਲੋਇਟੇਸ਼ਨ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਆ ਸਰਕਾਰ ਨੂੰ ਇੱਥੇ ਦਖਲ ਅੰਦਾਜ਼ੀ ਕਰਨੀ ਚਾਹੀਦੀ ਆ ਮੈਂ ਤਾਂ ਲੋਕਲ ਐਮਐਲਏ ਨੂੰ ਕਿਹਾ ਵੀ ਇਹ ਸਿੱਧ ਕਰਵਾਓ ਬੈਂਕ ਦੇ ਨਾਲ ਗੱਲ ਕਰਦਾਂਗੇ ਸਾਨੂੰ ਤਾਂ ਕੁਝ ਨਹੀਂ ਹੈ ਸਾਡਾ ਕੋਈ ਪ੍ਰੋਬਲਮ ਨਹੀਂ ਜੁਆਇੰਟ ਅਕਾਊਂਟ ਆ ਸਰਕਾਰਾਂ ਨੂੰ ਜਿਹੜੇ ਪੈਸੇ ਵਿਚਾਰ ਨੇ ਤੁਹਾਡੇ ਬੰਦੇ ਆ ਹਾਂ ਬਹੁਤ ਘਟਿਆ ਇਹ ਹੁੰਦੀ ਹੈ ਹਾਂ ਮੈਂ ਉਹੀ ਕਹਿ ਰਿਹਾ ਜਿਹੜਾ ਹੈ ਇੰਡੀਆ ਆ ਜਾਂ ਇੱਕ ਦੀ ਇੱਥੇ ਦੂਜੀ ਦੀ ਇੰਡੀਆ ਆ ਉਹ ਚਾਰ ਪੈਸੇ ਜੋੜਨੇ ਚਾਹੁੰਦਾ ਨੂੰ ਪੱਜੀ ਜਾਵੇ ਨਾ ਉਹ ਕਹਿੰਦਾ ਆ ਉਹ ਬੁਢੇ ਬਾਕੀ ਵਾਲੇ ਘਟਿਆ ਗਿਆ ਹੁਣ ਹੁੰਦੀ ਨਿਆਣੇ ਲਾਲਚ ਹੁੰਦਾ ਆ ਜਿਹੜਾ ਵੀ ਕਮਰੇ ਤੋਂ ਕਮਰਾ ਬੰਦਾ ਵੀ ਉਹ ਅੱਜ ਕੱਲ ਆਪਣੇ ਪੰਜਾਬੀ ਬੰਦੇ ਹਰ ਇੱਕ ਬੈਂਕ ਵਿੱਚ ਹੈਗੇ ਆਪਣੇ ਜਗ੍ਹਾ ਦੇਖ ਸਕਦੇ ਪੁੱਛ ਸਕਦੇ ਆ ਇਹ ਰਲਦਾ ਹੀ ਇਦਾਂ ਕਿ ਉਹ ਇਹਨਾਂ ਨੂੰ ਥੋੜੀ ਸੋਚ ਨਹੀਂ ਬਾਰੇ ਜਿਹੜਾ ਬੰਦਾ ਰੋਦਾ ਹੁਣ ਦੱਸੋ ਜਰੂਰ ਇੱਕ ਵਾਰ ਮਹੀਨੇ ਕੋਈ ਬੰਦਾ ਗੱਲ ਕਰ ਲਾ ਪਿਆ ਮੈਂ ਕਿਹਾ ਵੀ ਤੂੰ پیسے ਕਿਵੇਂ ਕਮਾਉਂਦੇ ਕਿੰਨੇ ਮੈਂ 1500 1600 ਕਮਾਣਾ ਘੱਟੋ ਘੱਟ ਲੈ ਕੇ ਉਹ ਰੋਦਾ ਕਹਿੰਦਾ ਵੀ ਲੋਕੀ ਕਰਨਗੇ ਇੰਡੀਆ ਤੋਂ ਆਇਆ ਆ ਲਈ ਰੋਟੀ ਨੂੰ ਕੋਈ ਪਕਵਾਉਂਦਾ ਮੈਂ ਕਿਹਾ ਫਿਰ ਹੋਈ ਜਾ ਇਹ ਗੰਮ ਤੱਕ ਹੋਣੀ ਰੋਈ ਜਾ ਮੈਂ ਕਿਹਾ ਮੈਂ ਕਿਹਾ ਮੇਰੇ ਉਹ ਕੱਲ੍ਹ ਰਹਿਣਾ ਨਹੀਂ ਨਹੀਂ ਇਹਦਾ ਚੰਗਾ ਲਾ ਮਰ ਜਿਹੜੇ ਇਦਾਂ ਨੇ ਕੱਢ ਦਿੱਤੀ ਨੇ ਕੱਢ ਦਿੱਤੀ ਇਹ ਉਹ ਮਾਰਦੀ ਸਾਨੂੰ ਜੀ ਬਿਲਕੁਲ ਜਿੱਥੇ ਇਹ ਗੱਲ ਹੁੰਦੀ ਹੈ ਖਰਚਾ 1011 ਤੁਹਾਨੂੰ ਬਚੂ ਤੁਰਨ ਸੰਧ ਧੀਆਂ ਪੁੱਤਾਂ ਨੂੰ ਜੇ ਸਾਂਭਦੇ ਥੋੜੀ ਹੈ ਬੈਂਕਾਂ ਚ ਪੰਜਾਬੀ ਬੋਲਣ ਵਾਲੇ ਲੜਕੇ ਲੜਕੀਆਂ ਨੇ ਸਰਦ ਜੀ ਪਰ ਜਿਹੜੇ ਬੈਂਕ ਜਾਣ ਯੋਗ ਹੀ ਨਹੀਂ ਜਿਨ੍ਹਾਂ ਕੋਲ ਲਾਇਸੈਂਸ ਹੈ ਨਹੀਂ ਧੀ ਪੁੱਤ ਕੋਈ ਲੈਂਦਾ ਹੈ ਨਹੀਂ ਉਹ ਕਿਹੜੀ ਬੈਂਕ ਚ ਜਾਣਗੇ ਉਹ ਵੀ ਗਿਣਤੀ ਹੈ ਸਾਰ ਰਜਿੰਦਰ ਸਿੰਘ ਲਾਈਨ ਨੰਬਰ ਸਤਿ ਸ੍ਰੀ ਅਕਾਲ ਜੀ ਉਹ ਜਨਾਬ ਬਾਬੇ ਵੀ ਘਟ ਨਹੀਂ ਇਹ ਬਾਬੇ ਵੀ ਦੀ ਮੈਂ ਗੱਲ ਨਹੀਂ ਜੀ ਕਰ ਰਿਹਾ ਮੈਂ ਵਿਗੜਿਆਂ ਦੀ ਗੱਲ ਨਹੀਂ ਕਰ ਰਿਹਾ ਵਿਗੜੇ ਨਹੀਂ ਹੋਏ ਉਹਨਾਂ ਦੇ ਸ਼ੌਕ ਨੇ ਪੂਰੇ ਕਰਦੇ ਨੇ ਜੇ ਪੈਸੇ ਜੀ ਗਾਜੀ ਬਾਬਿਆਂ ਦੇ ਸ਼ੌਂਕ ਆ ਪਰ ਬਾਬਿਆਂ ਨੂੰ ਵੀ ਤੇ ਚੰਗੇ ਰੱਖਣੀ ਚਾਹੀਦੀ ਨਾ ਕਈ ਬਾਬੇ ਬਾਬੇ ਵੀ ਪੈਨਸ਼ਨਾਂ ਲੈਂਦੇ ਚਲੋ ਉਹ ਸਾਡਾ ਕੰਮ ਨਹੀਂ ਜੀ ਫੰਡਣਾ ਉਹ ਸਰਕਾਰ ਦਾ ਕੰਮ ਹੈ ਤੇ ਉਹ ਟੈਕਸੇਬਲ ਮਨੀ ਆ ਤੇ ਉਹਨਾਂ ਨੂੰ ਟੈਕਸ ਚੋ ਦੱਸਣੀ ਚਾਹੀਦੀ ਉਹ ਗੱਲ ਮੈਂ ਇਹ ਕਰ ਰਿਹਾ ਹਾਂ ਹਾਂ ਵੀ ਨਾ ਹੋਵੇ ਜੇ ਉਹਨਾਂ ਦੀ ਚੀਜ਼ ਹੈ ਹੁਣ ਮੈਂ ਕੰਮ ਕਰਦਾ ਮੇਰਾ ਚੈੱਕ ਮੇਰੇ ਮੁੰਡੇ ਨੂੰ ਕਿਉਂ ਮਿਲੇ ਬਈ ਮੇਰਾ ਹੱਕ ਨਹੀਂ ਉਹ ਜਿਹਾ ਹੀ ਉਹਨਾਂ ਦਾ ਦਿਲ ਹੈ ਸੋ ਇਹ ਇਹ ਗੱਲ ਹੈ ਵੀ ਠੀਕ ਹੈ ਉਹ ਜਦ ਜਿਹੜੀਆਂ ਗੱਲਾਂ ਸਿੱਧ ਕਰਨ ਵਾਲੀਆਂ ਉਹਨਾਂ ਨੂੰ ਗੱਲ ਉਹਨਾਂ ਬਾਰੇ ਉਹਨਾਂ ਦੀ ਬੇਨਤੀ ਤਰਲਾ ਕਰਦੀ ਹੈ ਮੈਂ ਕੋਈ ਇਨਸਟਰਕਸ਼ਨ ਨਹੀਂ ਦੇਣਾ ਚਾਹੁੰਦਾ ਵੱਡੇ ਨੇ ਔਰ ਸਾਰੇ ਸਨਮਾਨ ਦੇ ਕਾਬਲ ਨੇ ਔਰ ਸਾਰਿਆਂ ਦੇ ਮੈਂ ਸਨਮਾਨ ਵੱਡਿਆਂ ਦਾ ਕਰਦਾ ਮੈਂ ਜੇ ਕੋਈ ਗੱਲ ਕਰਦਾ ਹੁੰਦਾ ਉਹਨਾਂ ਦੇ ਸਤਕਾਰ ਲਈ ਤੇ ਉਹਨਾਂ ਤੇ ਕੋਈ ਤਵੇ ਵਾਲੀ ਗੱਲ ਨਹੀਂ ਤੇ ਮੈਂ ਹੱਥ ਬੰਨ ਕੇ ਉਹਨਾਂ ਨੂੰ ਬੇਨਤੀ ਉਹ ਕਰਦਾ ਹੁੰਦਾ ਕਿ ਆਹ ਕਰ ਲਿਓ ਆਹ ਕਰ ਲਿਓ ਇਸ ਤਰ੍ਹਾਂ ਕਰ ਲਿਓ ਇਹ ਠਾਠੀ ਬੰਨੀ ਬਜ਼ੁਰਗਾਂ ਜਾਣ ਆ ਸੋਮਵਾਰ ਨੂੰ ਮੈਂ ਉਹਨਾਂ ਨੂੰ ਗੱਡੀ ਰੋਕੇ ਮੈਂ ਕਿਉਂ ਬੰਨੀ ਐ ਇਹ ਕਹਿੰਦੇ ਮੇਰੀ ਕਿਡਨੀਆਂ ਫੇਲ ਹੋ ਗਈਆਂ ਤੁਸੀਂ ਬੰਨੀ ਫਿਰਦੇ ਹੋ ਇਹਦੇ ਨਾਲ ਕਿਡਨੀ ਆ ਦਾ ਕੀ ਮਤਲਬ ਹੈ ਜੇ ਤੁਸੀਂ ਸਾਹ ਜਿਹੜਾ ਹੈ ਵੀ ਅੰਦਰ ਸਾਫ਼ ਜਾਵੇ ਫਿਰ ਉਹ ਟੋਪਾ ਜਿਹੜੇ ਚੀਨੀ ਚੜਾਉਂਦੇ ਆ ਬੰਦੇ ਉਹ ਨੱਕ ਤੇ ਚੜਾਓ ਤੁਸੀਂ ਤਾਂ ਮੁੱਛਾ ਤੇ ਦਾੜ੍ਹੀ ਬੰਨੀ ਹੋਈ ਹੈ ਨੱਕ ਤਾਂ ਫੇਰ ਖਾਲੀ ਹੈ ਗੱਲ ਤਾਂ ਕੋਈ ਔੜ ਨਹੀਂ ਐਉਂ ਕਹਿ ਗਏ ਉਹ ਇਹ ਪਰ ਉਹਨਾਂ ਦਾ ਸ਼ੋਸ਼ਣ ਨਾ ਹੋਵੇ। ਸਹੀ ਗੱਲ ਹੈ ਜੀ ਕਈਆਂ ਦਾ ਵਿਚਾਰਾ ਨਾ ਮਾੜਾ ਹਾਲ ਹੈ। ਇਹ ਤਾਂ ਵਿਚ ਵੜ ਕੇ ਦੇਖਣਾ ਸਾਡੇ ਤਾਂ ਵੀ ਦੱਸ ਬਹੁਤ ਮਾੜਾ ਹਾਲ ਹੈ। ਤੇ ਜਾਂ ਮੈਂ 1 ਸਾਲ ਬਸ ਚਲਾਈ ਸੀ ਪੂਰੇ ਬਾਰੋ ਫਾਰਮ ਤੇ ਉਦੋਂ ਫਿਰ ਇਹਨਾਂ ਦੇ ਵਿਚੋ ਹੜ ਕੇ ਦੇਖੇ ਵੀ ਕੀ ਹਾਲ ਵਿਚਾਰਿਆਂ ਦਾ। ਉਹ ਕਹਿੰਦੇ ਬਾਹਰ ਗੱਡ ਕੇ ਨਾ ਜਦੋਂ ਮੁਰਗ ਲੌਕ ਲਾ ਦਿੰਦੀ ਅੰਦਰ ਦੁਬਾਰਾ ਇਹਦਾ ਗੁਰਦੁਆਰੇ ਦਾ ਜਾਵੇ ਮਾੜਾ ਹਾਲ ਠੀਕ ਹੈ ਜੀ ਥੈਂਕ ਯੂ ਤਾਂ ਮੀਨਾਰਗੈਂਡ ਕੰਪਨੀ 60486461 31 ਨੰਬਰ ਹੈ ਅਮਰੀਕ ਨਾਰੰਗ ਤੇ ਰਾਜਨ ਦੇ ਕੇਸ ਲੜਦੇ ਐ ਤੁਸੀਂ ਕੋਈ ਵੀ ICBC ਨਾਲ ਸੰਬੰਧਤ ਕੋਈ ਮਾਮਲਾ ਤਾਂ ਆਮੀਨਾਰਗੈਂਡ ਕੰਪਨੀ ਗੱਲਬਾਤ ਕਰ ਸਕਦੇ ਹੋ 60486446131 ਅਮਨ ਖਟਕੜ ਮਾਰਗੇਜ ਦੇ ਵਿੱਚ ਵੱਡਾ ਨੰਬਰ 6048251314 ਸਰੀਆ ਬੈਂਕ ਉਪਰ ਚ ਦਫ਼ਤਰ ਨੇ ਰੈ residențial ਕਮਰਸ਼ੀਅਲ ਤੁਸੀਂ ਮਾਰਗੇਜ ਲੈਣੀ ਹੈ ਜਾਂ ਲਾਈਨ ਆਫ ਕ੍ਰੈਡਿਟ ਕੋਈ ਲੈਣੀ ਹੈ ਸਿਕਿਉਰਡ ਜਾਂ ਅਨਸਿਕਿਉਰਡ ਕੋਈ ਵੀ ਵਿੱਤੀ ਮਦਦ ਹੈ ਜਿਹੜੀ ਬੈਂਕਾਂ ਤੋਂ ਕ੍ਰੈਡਿਟ ਯੂਨੀਅਨ ਤੋਂ ਚਾਹੀਦੀ ਹੈ ਜਾਂ ਪਰਸਨਲ ਤੋਂ ਫਾਈਨਾਂਸ ਕਰਵਾਉਣਾ ਕੁਝ અમਨ ਖਟਖਟ 6048251314 88 ਟਰੱਕ ਬੋਡੀ ਐਂਡ ਪੇਂਟ 604940 10 CC ICBC 3 ਐਕਸਪ੍ਰੈਸ ਸ਼ੌਟ ਤੇ ਐਕਸਪ੍ਰੈਸ ਗਲਾਸ ਸ਼ੌਟ ਪਰ ਟਰੱਕਾਂ ਤੇ ਰੇਅਪੇ ਵਰਕ ਦਾ ਕੰਮ ਕੀਤਾ ਜਾਂਦਾ ਹੈ। ਤੁਸੀਂ 88 ਟਰੱਕ ਬਾਡੀ ਐਂਡ ਪੇਂਟ ਤੇ ਗੱਲਬਾਤ ਕਰ ਸਕਦੇ ਹੋ ਵੱਡੀ ਫੈਸਿਲਿਟੀ ਦੇ ਵਿੱਚ। ਵੱਡੀ ਜਿਹੜੀ ਗੱਡੀਆਂ ਖੜ ਜਾਂਦੀਆਂ ਤੇ ਉਹਦਾ ਬਾਡੀ ਵਰਕ ਦਾ ਕੰਮ ਤੁਸੀਂ ਕਰਾ ਸਕਦੇ ਹੋ। ਗ੍ਰੈਂਡ ਤਾਜ ਸਰੀ ਦਾ ਤਾਜ ਅਕਲਤਾ ਸਿੰਘ ਖਿਆੜਾ ਹਰਪਾਲ ਸਿੰਘ ਸੂਜ ਤੇ ਸੁਚੇਆ ਸਿੰਘ ਪੱਡਾ 604 617 8484 604 599 43 42 ਗ੍ਰੈਂਡ ਤਾਜ ਸਰੀ ਦਾ ਤਾਜ ਅਦਿੱਤਿਆ ਡਾਂਸ ਸਕੂਲ ਤੇ ਭੰਗੜਾ ਤੁਸੀਂ ਆਪਣੇ ਬੱਚਿਆਂ ਨੂੰ ਤੇ ਬਾਲੀਵੁੱਡ ਡਾਂਸ ਜਿਹੜੀਆਂ ਡਾਂਸ ਸਿਖਾ ਸਕਦੇ ਹੋ 55 ਡਾਲਰ ਇੱਕ ਮਹੀਨੇ ਦੀ ਉਹਦੀ ਫੀਸ ਹੈ 6045034444 ਅਦਿੱਤਿਆ ਜੀ ਡਾਂਸ ਸਕੂਲ ਭੰਗੜਾ ਤੇ ਬਾਲੀਵੁੱਡ ਡਾਂਸ ਦੇ ਤੋ ਇਹ ਕੁਝ ਕਿ ਚੀਜ਼ਾਂ ਜੀ ਜਿਹੜੀਆਂ ਖਿਆਲ ਧਿਆਨ ਮੰਗਦੀਆਂ ਕਿ ਤੁਸੀਂ ਜੇ ਪੈਨਸ਼ਨ ਹੈ ਜਿਹੜੀ ਤੁਹਾਡੀ ਤੁਹਾਡਾ ਹੱਕ ਹੈ ਤੁਹਾਨੂੰ ਮਿਲਣੀ ਚਾਹੀਦੀ ਹੈ ਮਰਜ਼ੀ ਨਾਲ ਤੁਸੀਂ ਜਿਵੇਂ ਮਰਜ਼ੀ ਦੇ ਦਿਓ ਜਿਹੜੀਆਂ ਮਾਵਾਂ ਜਾਂ ਜਿਹੜੇ ਬਜ਼ੁਰਗ ਜਿਹੜੇ ਜਾਣ ਨਹੀਂ ਬੈਂਕ ਸਕਦੇ ਉਹਨਾਂ ਦਾ ਇਸ ਤੇ ਅਧਿਕਾਰ ਇੱਕ ਕਿਸਮ ਦਾ ਖਤਮ ਹੋ ਗਿਆ ਉਹਨਾਂ ਦੀ ਜਿਹੜੀ ट्रांजੈਕਸ਼ਨ ਜਿਹੜੀ ਸਾਰੀ ਉਹਨਾਂ ਦੇ ਬਾਲ ਬੱਚੇ ਜਾਂ ਕੋਈ ਵੀ ਰਿਸ਼ਤਾ ਜਿਹੜਾ ਰਹਿੰਦਾ ਉਹ ਕਰਦਾ ਬੈਂਕ ਕਾਰਡ ਉਹਨਾਂ ਕੋਲ ਨੇ ਬੈਂਕਾਂ ਨੂੰ ਪਤਾ ਨਹੀਂ ਹੈ ਇਸ ਗੱਲ ਦਾ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਪੈਨਸ਼ਨ ਪਰ ਉਹਨਾਂ ਤੱਕ ਨਹੀਂ ਪਹੁੰਚ ਰਹੀ ਜਿੰਨੇ ਪਰਸੈਂਟ ਵੀ ਕੇਸ ਹੋ ਜਵੇ 10 15 20 ਪਰਸੈਂਟ ਵੀ ਅਲੱਗ-ਅਲੱਗ ਬਣ ਗੀਆਂ ਮੈਂ ਦੱਸੀਆਂ ਕੁਝ ਕੰਟਰੋਲ ਕਰਦੇ ਆ ਕੁਝ ਜਿਹੜੇ ਉਹ ਕੰਟਰੋਲ ਆਪ ਕਰਦੇ ਚਾਹੇ ਧੀਆਂ ਪੁੱਤਰ ਨੂੰ ਦੇਈ ਜਾਣ ਉਹਨਾਂ ਦੀ ਮਰਜ਼ੀ ਹੈ ਪਰ ਜਿਨ੍ਹਾਂ ਤੋਂ ਧੱਕੇ ਨਾਲ ਖੋਈ ਜਾ ਰਹੀ ਪੈਨਸ਼ਨ ਹੈ ਉਹ ਬਹੁਤ ਦੁੱਖ ਦੀ ਗੱਲ ਹੈ ਉਸ ਤੇ ਕੰਟਰੋਲ ਹੋਣਾ ਚਾਹੀਦਾ ਇਹ ਮਾਪੇ ਨੇ ਜੇ ਕਰਦੇ ਮੀਆਂ ਬੀਵੀ ਦੇ ਜਾਂ ਦੋ ਬੰਦਿਆਂ ਦੀ ਕਮਾਈ ਸਾਤ ਅਠ ਹਜ਼ਾਰ ਨਾਲ ਘਰ ਦਾ ਕੁਛ ਨਾ ਬਣ ਰਿਹਾ ਇਹਨਾਂ ਦੇ 1000 1500 ਨਾਲ ਕੱਖ ਨਹੀਂ ਬਣਨਾ ਇਹ ਇਹਨਾਂ ਦੇ ਸਰਕਾਰਾਂ ਦਿੰਦੀਆਂ ਤੇ ਉਹਨਾਂ ਦਾ ਇਹਨਾਂ ਦਾ ਉਹਨਾਂ ਤੇ ਹੱਕ ਕਦੇ ਆਪਣੇ ਹੱਥ ਰੱਖ ਕੇ ਕਾਲਜੇ ਤੇ ਵੇਖੋ ਵੀ ਤੁਹਾਡੀ ਕਮਾਈ ਤੁਹਾਡਾ ਜਵਾਕ ਹੈ ਉਰੇ ਫੜਾਵਾ ਪੁੱਛਿਆਕ ਤੈਨੂੰ ਨਹੀਂ ਪਤਾ ਕਿਵੇਂ ਖਰਚੀਦਾ ਕਰੋਗੇ ਕੀ ਫਿਰ ਜਿਹੜੇ ਕਰ ਰਹੇ ਨੇ ਸਾਮ ਰਹੇ ਨੇ ਉਹਨਾਂ ਨੂੰ ਸਲੂਟ ਆ ਜਿਹੜੇ ਕੋਈ ਤੱਕਾ ਕਰ ਰਹੇ ਨੇ ਹਟਜੋ ਇਹ ਗੱਲ ਗਲਤ ਹੈ ਇਹ ਗੱਲ ਬਾਹਰ ਨਿਕਲੇ ਹੋਣੀ ਹੈ ਸਰਕਾਰ ਦੇ ਐਮ ਐਲ اے ਇਸ ਤੇ ਆਲਰੇਡੀ ਕੰਮ ਕਰ ਰਹੇ ਨੇ ਦੇਖਦੇ ਹਾਂ ਕੁਝ ਜਿਹੀ ਚੀਜ਼ ਹੋਵੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪਤਾ ਕੀਤਾ ਜਾਵੇ ਸਰਕਾਰ ਵੱਲੋਂ ਸਪੈਸੀਫਿਕਲੀ ਬੰਦੇ ਨਾਲ ਫੋਨ ਕਰਕੇ ਵੀ ਤੁਸੀਂ ਖੁਸ਼ ਹੋ ਪੈਸਾ ਤੇ ਤੁਹਾਨੂੰ ਮਿਲਦਾ ਜੇ ਉਹਦੇ ਤੇ ਵੀ ਬਾਅਦ ਵਿੱਚ ਉਹ ਡਰਦੇ ਧੀਆਂ ਪੁੱਤਾਂ ਤੋਂ ਕੁਝ ਹੋਰ ਕਹਿ ਦਿੰਦੇ ਆ ਫਿਰ ਫਿਰ ਇਦੋਂ ਵੱਧ ਕੁਝ ਨਹੀਂ ਹੋਰ ਹੋ ਸਕਦਾ ਰਾਸਮਾਨ ਦੇ ਸ਼ੋਅ ਸੰਬੰਧੀ ਦੇਵ ਸੰਧੂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 60477831900 6047831900 ਉਹ ਤੁਹਾਡੇ ਲਈ ਸ਼ੋਅ ਲੈ ਕੇ ਆ ਰਹੇ ਨੇ ਤੇ 30 ਸਤੰਬਰ ਨੂੰ ਇਹ ਸ਼ੋਅ ਹੋਣਾ ਦੇਵ ਸੰਧੂ 6047831900 ਅਖੀਰ ਦੇ ਵਿੱਚ ਜਲਦੀਪ ਮਾਨਕ ਦਾ ਸਦਾ ਬਹਾਰ ਗੀਤ ਤੇ ਕੱਲ ਨੂੰ 11 ਵਜੇ ਫੇਰ ਮਿਲਦਾ ਜੀ ਰੱਬ ਰੱਖ